ਅਗਾਦ अनुत आद अद्वैख सुभूत भुक्त भगवान अपहै ओ परमेश्वर आद है शब्दा सृष्टि दा आद हो सृष्टि दा आद जो दादरी है जो तो पहले ही सी की सृष्टि दा आद अनंत अनंत ਉਦਾ ਆਪਣਾ ਅੰਤ ਕੋਈ ਨਹੀਂ ਆਭੀ ਜੋ ਸਰੂਪ ਹੈ ਇਹ ਅਨੰਤ ਅਗਾਧ ਅਦਵਾਤ ਅਗਾਧ ਹੈ ਬੁਰਖੀ ਬੁੱਧੀ ਤੋਂ ਪਰੇ ਹੈ ਬੁਰਖੀ ਬੁੱਧੀ বুঝ ਲੈਵੇ ਆਪਣੇ ਆਪ ਸਮਝ ਲਵੇ ਕਿਉਂਕਿ ਗਿਆਨ ਅੰਤਰ ਗਿਆਨ ਅੰਤਰ ਤੋਂ ਪਰੇ ਹੈ ਇਸ ਕਰਕੇ ਬੁਰਖੀ ਬੁੱਧੀ ਦੇ ਪਕੜ ਤੋਂ ਪਰੇ ਹੀ ਹੈ ਨੂੰ ਨਹੀਂ ਬਰਾ ਦੱਸਦਾ ਕੀ ਹੈ ਕਹਿੰਦਾ ਹੀ ਨਹੀਂ ਪਤਾ ਬੁੜਾਈ ਕੋਈ ਦੁਐਸ਼ੀ ਨਹੀਂ ਕਿ ਕਿਸੇ ਨਾਲ ਬੈਰ ਵਿਰੋਧ ਨਹੀਂ ਕਰਦਾ ਕਿਸੇ ਨਾਲ ਨਫ਼ਰਤ ਨਹੀਂ ਕਰਦਾ ਸੁਪੂਤ ਪਵਿੱਕਤ ਪਵਾਹ ਨਾ ਪੈ ਉਹ ਪੈ ਰਹਾਂਦਾ ਹਮੇਸ਼ਾ ਪੂਤ ਵਿੱਚ ਵੀ ਇਹ ਸੀ ਉਹ ਸ੍ਰਿਸ਼ਟੀ ਪੈਦਾ ਹੋਣ ਤੋਂ ਜਦ ਪੈਦਾ ਕੀਤੀ ਉਹ ਤੋਂ ਪਹਿਲਾਂ ਵੀ ਇਹ ਸੀ ਪੈਦਾ ਕੀਤੀ ਉਹ ਵੀ ਇਹ ਹੁਣ ਵੀ ਇਹ ਪਾਇਆ ਹੈ ਗਾਹਾਂ ਵੀ ਹੈ ਉਹ ਬੈ ਹੈ ਤਿੰਨ ਗਾਲਾਂ ਚ ਪੈ ਰਹੇ ਨੇ ਅੰਤਬਹੀਨ ਅਨਾਤਮ ਆਪ ਅਦਾਗ ਅਦਾਗ ਅਦੂਗ ਅਛਿਦਰ ਅਛੈ ਹੈ ਅੰਤਬਹੀਨ ਹੈ ਉਹ ਤਾਂ ਤਹਿ ਹੋ ਦੀ ਅਨਾਤਮ ਹਪ ਆਪ ਅਨਾਤਮ ਹੈ ਅਨਾਤਮ ਹੈ ਕੋਈ ਉਹ ਇੱਕ ਤਾਂ ਹੁੰਦਾ ਆਤਮ ਆਤਮ ਤੋਂ ਵੱਧ ਹੈ ਨਾ ਆਇਆ ਦੇ ਵਿੱਚ ਆਤਮ ਆਤਮ ਦੇ ਵਿੱਚ ਮੈਂ ਹਾਂ ਮੈਂ ਮੇਰਾ ਆਤਮ ਦੇ ਵਿੱਚ ਹੈ ਜਦੋਂ ਮੈਂ ਮੇਰਾ ਨਹੀਂ ਭਇਆ ਆਤਮ ਆਤਮ ਨਹੀਂ ਰਹਿੰਦੀ ਫਿਰ ਆਤਮ ਨਹੀਂ ਰਹਿੰਦੀ ਕੋ ਆਤਮਾਂ ਔਰ ਪ੍ਰਾਤਮ ਦੋ ਨੇ ਹਾਦੇ ਤੇ ਜੇ ਆਤਮਾ ਤਾਂ ਪ੍ਰਾਤਮਿਕ ਹੈ ਫਿਰ ਦਾੜ ਹੈ ਫਿਰ ਤਾਂ ਦਾੜ ਨਹੀਂ ਆਉਦੇ ਵਿੱਚ ਅਨਾਤਮਾ ਮਤਲਬ ਧਾੜ ਦਾ ਅੰਸ਼ ਨਹੀਂ ਆਉਂਦਾ ਦਾੜ ਨੇ ਹੈ ਜੇ ਆਤਮਾ ਤਾਂ ਪ੍ਰਾਤਮਿਕ ਹੈ ਫਿਰ ਤਾਂ ਦਾੜ ਅਨਾਤਮਾ ਦਾੜ ਨੇ ਹੈ ਜੇ ਦਿੱਤੀ ਨਹੀਂ ਆਉਦੇ ਵਿੱਚ ਅਨਾਤਮ ਖੈਨ ਫਿਰ ਅਦਾ ਆਤਮਾ ਆਪਣਾ ਬਣਾਉਂਦਾ ਮੈਂ ਵੱਖਰਾ ਕੁਝ ਵਖਰਾ ਨਿਕੋ ਜੁਦਾ ਜੇ ਵਖਰਾ ਹੋਵੇ ਸੱਚਖੰਡ ਦੇ ਵਿੱਚ ਇੱਕ ਤੱਕ ਵੀ ਹੋਵੇ ਵਖਰਾ ਸੰਸਾਰ ਚ ਸਾਡਾ ਵਖਰਾ ਵਖਰਾ ਕੋਈ ਸੰਸਾਰ ਚ ਜਿੱਤੇ ਆਤਮਾ ਉਥੇ ਤੱਕ ਦੋਨਾਂ ਰੈਮੈਰੀ ਮਿਲਦੀ ਉਥੇ ਤਾਂ ਮੈਮਰੀ ਹੈ ਨਾ ਆਤਮਾ ਦਾ ਉਹਨਾਂ ਮੈਮਰੀ ਹੁੰਦਾ ਮੈਮਰੀ ਨਹੀਂ ਉਹ ਦਾਗ ਅਦੋਖ ਹੈ ਕੋਈ ਦਾਗ ਨਹੀਂ ਹੈ ਤਾਰਾ ਵਕਾਰ ਦਾ ਲਗਣਾ ਵਕਾਰ ਕੋਈ ਹੈ ਦੀ ਦਾ ਹੈ ਦੀ ਅਦੋਖ ਦੋਖ ਨਹੀਂ ਕੋਈ ਕਬੀਰੀ ਕੋਈ ਕਿਸੇ ਗੱਲ ਦੀ ਕੋਈ ਕਬੀਰੀ ਹੈ ਭੁੱਖ ਨਹੀਂ ਕੋਈ ਲੋਭ ਨਹੀਂ ਕਾਰ ਨਹੀਂ ਅਛਿਦਰ ਅਛ ਹੈ ਅਛਿਦਰ ਹੈ ਕੋਈ ਉਹਦਾ ਜਿਹੜਾ ਹੈ ਨਾ ਜੋਤ ਘੜਦੀ ਵੱਧ ਨਹੀਂ ਨੀ ਤੇ ਤਾਰਾ ਵੱਧਣੀ ਕੋਈ ਐਸਾ ਵੱਡਾ ਪ੍ਰਭਾਵ ਨਹੀਂ ਉਹ ਤੇ ਪਾਸ ਕਰਾ ਕੇ ਉਹਨੂੰ ਡਰਾ ਦੇ। ਜਦ ਤੇ ਆਪਣਾ ਪ੍ਰਭਾਵ ਪਾ ਕੇ ਉਹ ਤੇ ਹੋਰ ਕੁਝ ਕਰਾ ਲਵੇ ਆਪਣੀ ਮਰਜ਼ੀ ਦਾ। ਐਦਾਂ ਨਹੀਂ ਹੁੰਦਾ। ਅਛਾ ਹੈ। ਅਛੇਦਰ ਅਛਾ ਹੈ। ਅਛੇਦਰ ਹੀ ਰਹਿ ਉਹ ਛੇਦ ਨਹੀਂ ਕੀਤਾ ਜਾ ਸਕਦਾ। ਨੁਕਸ ਕੱਟ ਕੇ ਉਹਨੂੰ ਝੂਠਾ ਨਹੀਂ ਕੀਤਾ ਜਾ ਸਕਦਾ। ਜਿਵੇਂ ਚੋੜ ਲਊਗਾ ਸੀ ਨੁਕਸ ਕੱਟ ਕੇ ਝੂਠੀ ਦੱਤਾਂ ਨੂੰ ਗਰਮ ਪੱਤਾਂ ਨੂੰ ਉਹ ਨੁਕਸ ਕੱਟ ਕੇ ਉਹ ਤੇ ਪ੍ਰਭਾਵ ਪਾ ਲੈਂਦਾ। ਸత్య ਇਹ ਤੇ ਸੱਚ ਤੇ ਪ੍ਰਭਾਵ ਤਾਂ ਪਊ ਜੇ ਚ ਨੁਕਸੈ ਨਹੀਂ ਕੋਈ ਪ੍ਰਭਾਵੇ ਤੇ ਕੀ ਫਰਕ ਹੈ ਛੇਦਰ ਛੇਦਰ ਉੱਥੇ ਹੋਣਾ ਜਿੱਥੇ ਕੋਈ ਕੱਚ ਕੇ ਕਰਤਾ ਹਰਤਾ ਜਲਮੈ ਥਲਮੈ ਭਰਤਾ ਪ੍ਰਭ ਵਹਿ ਲੋਗਨ ਕੇ ਕਰਤਾ ਹਰਤਾ ਸੁਝਾ ਦੇ ਜਿਹੜੇ ਲੋਕ ਨੇ ਉਹਨਾਂ ਦਾ ਕਰਤਾ ਵੀ ਹੈ ਹਰਤਾ ਵੀ ਹੈ ਇਹ ਸਰੀਰ ਨਾਲ ਆਤਮਾ ਨੂੰ ਜੋੜ ਵੀ ਦਿੰਦਾ ਹੈ ਸਰੀਰ ਨੂੰ ਆਤਮਾ ਨੂੰ ਰੰਗ ਵੀ ਕਰ ਦਿੰਦਾ ਹੈ ਹਰਤਾ ਪ੍ਰਾਣ ਹਰ ਲੈਣੇ ਪ੍ਰਾਣ ਪਾ ਦੇਣ ਸਰੀਰ ਕਰਕੇ আর মন ਕਰਕੇ জ্ঞান ਦੇਣਾ buddhi ਜੋ ਦੀ ਕਮੀਆਂ ਨੂੰ ਕਾਟ ਨੂੰ ਪੂਰਾ ਕਰਨਾ ਪਰ ਲੋ ਜਲ ਮੈਂ ਚਾਹੇ ਚਾਹੇ ਥਲ ਮੈਂ ਜੀਵਣ ਪਰਤਾ ਪਰ ਵਾਹ ਹੈ ਪਰ ਲੋੜ ਸਰੀਰ ਕਰਕੇ ਵੀ भूख पूरी करदा गांधी भूख भी पूरी है आत्मा दी भूख भी पूरी करदा शरीर दी भूख भी पूरी करता परता प्रभु है उप्रावो आप है वे ओ प्रावो प्राव है प्रभु है दीन दयाल दयाकर श्रीपत सुंदर श्रीपत महापत वै है ओसे नु असि उतली उतले सभिये च सुंदर श्रीपत महापत के ਉਸਨੂੰ ਉਤਲੇ ਸਭਈਏ ਵਿੱਚ ਸੁਭਦਰ ਸ੍ਰੀਪਦਮੋ ਪਦ ਕੇ ਹਸੀ ਕਿਤੇ ਸਮਝ ਲਓ ਵੀ ਪਦਮੋ ਪਦਨੂ ਸ੍ਰੀਪਦਮੋ ਪਦ ਵੀ ਪਦਮੋ ਪਦ ਦੀ ਗੱਲ ਕਰਤੀ ਅਦਵਾਰਾ ਫੇਸ ਪਰ ਤਾਂ ਕਿ ਉਹ ਪਹਿਲੇ ਸਭਈ ਵਾਲਾ ਪਲੇਖਾ ਨੂੰ ਪਾਏ বিষ্ণੂ ਵਾਲਾ ਹਾਂ ਦੇਨ ਦੇ ਆਲ ਦਇਆ ਕਰ ਸ੍ਰੀਪਦ ਦਇਆ ਕਰ ਇਹ ਤੂੰ ਦੇਨ ਦੇ ਦਇਆ ਕਰਨ ਵਾਲਾ ਮੇਰੇ ਤੇ ਵੀ ਦਇਆ ਕਰ ਸੁੰਦਰ ਸ੍ਰੀ ਪਦਮਾਪਤ ਵਾਹਿ ਤੂੰ ਸੁੰਦਰ ਸ੍ਰੀ ਪਦਮਾਪਤ ਸ੍ਰੀ ਪਦਮਾਪਤ ਕਾ ਇਹ ਨਾ ਵੇਖ ਬੁੱਧੀ ਨੂੰ ਪਦਮਾ ਨੂੰ ਵੇਖ ਬੁੱਧੀ ਦਾ ਨਾਮ ਜਿਹੜੇ ਗੁਰ ਕੇ ਚਰਣਾ ਨੇ ਹਿਰਦੇ 'ਚ ਇਹ ਚਰਣਾ ਤੋਂ ਹੀ ਪੈਦਾ ਹੋਈ ਹੋਈ ਚਰਣਾ ਦੀ ਆਵਾਜ਼ ਦਾ ਨਾਮ ਪਦਮ ਚੜਲੂ ਕਹਿੰਦਾ ਰੋ ਉਹ ਖੁਰਾਸਾਨ ਵੀ ਇਸ ਨੂੰ ਕਹ ਖੁਰਾਸਾਨ ਫਸਬਾਨਾ ਕੀਆ ਆਪਣੇ ਪੈਰਾਂ ਦੀ ਆਵਾਜ਼ ਮੇਰੇ ਹਿਰਦੇ 'ਚ ਕੀਤੀ ਖੁਰ ਪੈਰਾਂ ਨੂੰ ਆਦਣ ਇਹ ਉਹਦੇ ਚੱਲਣਾਂ ਦੀ ਆ ਇਹ ਪਦਮਾ ਪੈਰ ਨੂੰ ਕਹਿੰਦੇ ਪਦਮਾ ਪਤੀ ਜਿਹਦੇ ਚੱਲਣ ਨੇ ਉਹ ਹੀ ਹੈ ਗੁਰਕੇ ਚਾਲੂ ਬਸੇ ਰਹੀਏ ਇਹ ਚੱਲਣਾਂ ਦਾ ਮਾਲਕ ਹੈ ਚੱਲਣ ਕੀ ਨੇ ਚੱਲਣ ਉਹਦੇ ਗੁਰਨੇ ਚੱਲਣ ਉਹਦੇ ਸ਼ਬਦ ਨੇ ਉਹਦਾ ਇਹਦਾ ਗੁਰਨੇ ਉਹ ਚਾਣਦੇ ਨੇ ਉਹ ਜਿਹੜਾ ਉਪਦੇਸ਼ ਆ ਉਹਦੇ ਚੱਲਦੇ ਨੇ ਸੁੰਦਰ ਸ੍ਰੀਮਤ ਉਹਦੇ ਚੱਲਦੇ ਨੇ ਵਵੇ ਖੁੱਦੀ ਉਹਦੇ ਚੱਲਦੇ ਨੇ ਤਾਂ ਹੀ ਕਹੇ ਚੱਲਣ ਛੱਡ ਕੇ ਵਸਤ ਪਵਾਨੀ ਇਹਨਾਂ ਨੂੰ ਹੀ ਪਤਾ ਆ ਅਰਥ ਕੀ ਬਣਦਾ ਚੱਲਣ ਛੱਡ ਕੇ ਵਸਤ ਪਵਾਨੀ ਉਹ ਚੱਲਾਂ ਦੇ ਵਿੱਚ ਹੀ ਵਸਦੀ ਹੈ ਪਵਾਨੀ ਉਹਦੇ ਚੱਲਾਂ ਦੀ ਬਾਤ ਚੱਲਾਂ ਦੇ ਵਿੱਚ ਹੀ ਵਸਦੀ ਹੁੰਦੀ ਔਰ ਕਿੱਥੇ ਵਸਦੀ ਹੁੰਦੀ ਹੈ ਚੱਲਾਂ ਜਦੋਂ ਆਵਾਜ਼ ਨਿਕਲਦੀ ਆ ਉਹਦੇ ਇਹ ਉਹਦਾ ਚੱਲਣਾ ਦੀ ਆਵਾਜ਼ ਹੈ ਬੜਕੇ ਉਸ ਜਿਹੜੇ ਹਿਰਦੇ ਚੋਂ ਆਉਂਦਾ ਉਹਦੀ ਆਵਾਜ਼ ਹੈ ਜਦੋਂ ਪਤੁਰਦਿਆਂ ਛੱਡ ਜੇ ਵਸਤ ਭਵਾਨੀ ਓਏ ਵਿਦਵਾਨ ਹੋ ਰਹੀਆਂ ਮੈਂ ਰੋਲੇ ਫਰੀਜਾ ਤੇ ਹਾਤਾ ਜੀ ਆ ਲਿਖਿਆ ਹੋਇਆ ਇਹਨਾਂ ਨੂੰ ਕੀ ਪਤਾ ਵੀ ਚੱਲਣ ਛੱਡ ਕੀ ਹੁੰਦੀ ਹੈ ਇਹਨਾਂ ਕੋਲ ਚੱਲਣ ਛੱਡਣਾ ਉਹ ਭਾਈ ਗੁਰਦਾਸ ਵਾਲੀ ਹੈ ਅਸਰ ਛ ਉਪਾਈ ਗੁਰਦਾਸ ਦੇ ਨੂੰ ਨਹੀਂ ਚੱਲ ਸੰਸਾਰੀ ਬੋਲੀ ਦੀ ਚੱਲ ਛੱਲਣਾ ਉਹ ਹੈ ਉਹ ਸੰਸਾਰੀ ਬੋਲੀ ਦੀ ਚੱਲ ਛੱਲਣਾ ਹੋਰ ਹੁੰਦਾ ਹੈਗਾ ਹੋਰ ਗੁਰਬਾਣੀ ਵਿੱਚ ਹਰ ਨਾਮ ਸਮਾਇਆ ਸੁੰਦਰ ਸ੍ਰੀ ਪਦਮਾਪਤ ਵਾਹਿ ਸੁੰਦਰ ਸ੍ਰੀ ਪਦਮਾਪਤ ਉਹ ਸੁੰਦਰ ਸ੍ਰੀ ਪਦਮਾਪਤ ਆ ਉਹ ਜੋਤ ਸਰੂਪ ਹੈ ਉਹਦੀ ਗੱਲ ਕਰਦੇ ਹਾਂ ਸੀ ਉਹ ਹੈ ਸੁੰਦਰ ਸ੍ਰੀ ਪਦਮਾਪਤ ਜਿਹਦੇ ਚ ਉੱਪਰਲੇ ਗੋਲਡੇ ਸਾਰੇ ਬਿਸ਼ਰੂ ਚ ਨਹੀਂ ਗੁਣ ਹੈਗੇ ਲੋਕਣ ਕੇ ਹਰਤਾ ਕਰਤਾ ਲੋਕਣ ਕੇ ਹਰਤਾ ਕਰਤਾ ਬਿਸ਼ਰੂ ਇੱਥੇ ਹੈ ਲੋਕਣ ਕੇ ਹਰਤਾ ਉਹ ਤਾਂ ਆਮਾੜਾ ਫੈਲਦਾ ਸ੍ਰੀ ਪਰਮਾਪਤ ਦੀ ਪਾਦਵਾ ਪਤ ਨੂੰ ਤਾਂ ਕਹਿੰਦੇ ਨੇ ਜਿਵੇਂ ਖਾਲਸਾ ਸੀ ਆਪਣੇ ਆਪ ਨੂੰ ਕਹਿਣ ਲੱਗੇ ਖਾਲਸਾ ਸੱਚ ਪਰਮੇਸ਼ਰ ਹੈ ਜਿਹੜੇ ਖਾਲਸਾ ਬਣ ਕੇ ਪਰਮੇਸ਼ਰ ਨੂੰ ਪੂਜਾ ਕਰਦੇ ਨੇ ਬੰਦੇ ਨੇ ਉਹ ਉਹਨਾਂ ਨੂੰ ਉਹੀ ਪੈ ਜਾਂਦੇ ਜਿਵੇਂ ਜਿਹੜੇ ਸ਼ਿਵ ਸ਼ਿਵ ਕਰਕੇ ਤੇ ਸੀ ਉਹਨਾਂ ਦਾ ਉਹਨਾਂ ਨੂੰ ਵੀ ਸਿੱਖ ਪੈ ਗਿਆ ਜਿਹੜੇ ਸਿੱਖਿਆ ਲੈਂਦੇ ਤੇ ਉਹਨਾਂ ਨੂੰ ਸਿੱਖ ਪੈ ਗਿਆ ਇਹ ਉਹ ਜਾਂ ਨਾ ਪੈ ਜਾਂਦਾ ਅਲ ਪੈ ਜਾਂਦੀ ਐ ਨਾ ਹੋਣੀ ਤਾਂ ਅਲ ਹੁੰਦੀ ਐ ਅਲ ਪਈ ਹੋਈ ਐ ਕੋਈ ਕੁਝ ਕਹਿਣ ਲੱਗ ਜਾਂਦੇ ਨੇ ਲੋਕ ਉਹਨਾਂ ਨੂੰ ਪਦਵਾ ਫਤਿਹ ਦੀ ਤਾਂ ਅਲ ਲੱਭਈ ਹੋਈ ਇਹਨੂੰ ਮੰਨਣ ਵਾਲੇ ਨੂੰ ਮੈਂ ਪਦਵਾ ਬਤਕਾਣ ਲੱਗ ਗਿਆ ਵੀ ਇਹੀ ਐ ਜਿਹੜਾ ਨਾਰ ਗੁਰ ਰਹਿਤਾਰ ਕਰਨ ਲੱਗੇ ਸਖ ਇਹ ਲੱਗੇ ਜਾਂਦੇ ਉਦੋਂ ਕਹਿਣ ਜਿਨ੍ਹਾਂ ਦੀ ਬੁੱਧੀ ਜਿਨ੍ਹਾਂ ਦੇ ਅਸਲ ਚੀਜ਼ ਸਮਝ ਨਹੀਂ ਆਉਂਦੀ ਉਪਦੇਸ਼ ਤਾਂ ਸੁਣਦੇ ਹੈ ਜੋ ਚੱਲ ਛੱਡੋ ਪਰੇ ਇਹ ਹੈ ਇਹ ਕਹਿ ਲੋ ਆਪਾਂ ਕਾਮਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈ ਹੈ ਹੁਣ ਸ੍ਰੀ ਪਦਮਾ ਪਤਨੂ ਨਾ ਤਾਂ ਕੋਈ ਇੱਛਾ ਪਰ ਵੀਰ ਨੂੰ ਤਾਂ ਇੱਛਾ ਸੀ ਜੇ ਇੱਛਾ ਸੀ ਤਾਂ ਹੀ ਠੱਗੀ ਮਾਰੀ ਉਹਨਾਂ ਨਾਲ ਰੱਖਿਆ ਨਾ ਰੱਖਿਆ ਨਾ ਸੁਬਦ ਲੜਕੇ ਠੱਗੀ ਕਾਤੇ ਮਾਰੀ ਆਪ ਕਾਤੇ ਰੱਖੀਆਂ ਵਿੱਚੋਂ ਚੀਜ਼ਾਂ ਇੱਛਾ ਸੀ ਉਹਦੇ ਵਿੱਚ ਕਾਮਨਾ ਕ੍ਰੋਧ ਨਾ ਲੋਭ ਨਾ ਕਾਮਨਾ ਸੀ ਉਹਦੇ ਵਿੱਚ ਲੋਭ ਵੀ ਸੀਗਾ ਕ੍ਰੋਧ ਵੀ ਸੀਗਾ ਸਭ ਕੁਝ ਸੀ ਇਹ ਜਿਹੜੀ ਕਾਮ ਕ੍ਰੋਧ ਕਾਮ ਨਾ ਕ੍ਰੋਧ ਨਾ ਲੋਭ ਨਾ ਬੋਨ ਉਧਰ ਦੇਵਤਾਂ ਨਾਲ ਬਹੁ ਸੀ ਦੇਵਤਿਆਂ ਨੂੰ ਦੇ ਦਿੱਤਾ ਜਿਆਦਾ ਕੋਈ ਰਾਖਾ ਨੂੰ ਦਿੱਤਾ ਨਹੀਂ ਉਹ ਸੀ ਤਾਂ ਹੀ ਦਿੱਤਾ ਹੋਰ ਨਹੀਂ ਅਗੇ ਵਚੇ ਕੋਲ ਕਾਮਨਾ ਕਰੋ ਤਾਂ ਲੋਭ ਨਾ ਮੋਹ ਨਾ ਸੋਗ ਨਾ ਰੋਗ ਨਾ ਸੋਗ ਨਾ ਭੋਗ ਨਾ ਪਾਇਆ ਨਾ ਰੋਗ ਹੈ ਨਾ ਸੋਗ ਹੈ ਨਾ ਭੋਗ ਨਾ ਪਾਇਆ ਨਾ ਕੋਈ ਖਾਂਦਾ ਸਰੀਰ ਲਈ ਹੈਗਾ ਖਾਣਾ ਕੀ ਹੈ ਵਿਸ਼ਨੂੰ ਤਾਂ ਦੇ ਹੈ ਉਹ ਤਾਂ ਉਂਗਲੀ ਤੇ ਚੱਕਰ ਹੁੰਦਾ ਉਹਦੇ ਪਰ ਮੈਸ਼ਲ ਦੀ ਉਂਗਲੀ ਕਿੱਥੇ ਦਿਖਾਈਏਗਾ ਤੇ ਉਹ ਵੀ ਕਦੇ ਫੋਟੋ ਹੀ ਨਹੀਂ ਕਿਸੇ ਨੇ ਦਿਖਾਈ। ਉਹ ਤਾਂ ਕਦੇ ਮੂਰਤੀ ਹੋਣੀ ਬਣੀ। ਜਿਨ੍ਹਾਂ ਦੀਆਂ ਮੂਰਤੀਆਂ ਬਲਦੀਆਂ ਨੇ ਉਹ ਨਹੀਂ ਹੁੰਦੇ ਉਹ। ਉਹ ਤੇ ਮੂਰਤੀਆਂ ਨਹੀਂ ਬਣ ਸਕਦੀ। ਜਿਹੜਾ ਬਿਰੁਖੀ ਬੁੱਧੀ ਤੇ ਪਰੇ ਆਵੀ ਮੂਰਤੀ ਕੇ ਵਾਂਡ ਜਿਹੜਾ ਅੱਖਾਂ ਨੂੰ ਦੇਦਾ ਹੀ ਨਹੀਂ ਉਹਦੀ ਮੂਰਤੀ ਕੀ ਮੂਰਤੀ ਬਣਾਵਾਂਗੇ ਅੱਖਾਂ ਨੂੰ ਦੇਖਣ ਵਾਲੀ ਮੂਰਤੀ ਬਣਾਵਾਂਗੇ। ਫੋਟੋ ਹੋਈ ਬਣਾਵਾਂਗੇ ਜਿਹੜਾ ਅੱਖਾਂ ਨੂੰ ਦੇਖੇ। ਜੋ ਖਰਚੀ ਦੇਂਦੀ ਹੋਈ ਨਹੀਂ ਹੈ। ਉਹਦੇ ਕੀ ਫੋਟੋ ਬਣਾਵਾਂਗੇ? ਉਹਦੀ ਮੂਰਤੀ ਬਣਾਣਾ ਉਹਦੀ ਫੋਟੋ ਉਹ ਬਣਦੀ ਨਹੀਂ ਅਸੀਂ ਮੂਰਤੀ ਪੂਜਕ ਨਹੀਂ ਹੈਗੇ ਸਿੱਖ ਉਹ ਮੂਰਤੀ ਪੂਜਕ ਤਾਂ ਹੋ ਜੀ ਉਹਦੀ ਮੂਰਤੀ ਬਣਦੀ ਨਹੀਂ ਹੈ ਅਕਾਲ ਮੂਰਤ ਬੜਾ ਹੋਗੇ ਮੈਂ ਬਣਾਉਂਗੇ ਮੂਰਤੀ ਤਾਂ ਹੈਗੀ ਅਕਾਲ ਮੂਰਤ ਉਹ ਮੂਰਤੀ ਤਾਂ ਅਸੀਂ ਪੂਜਦੇ ਆ ਪਰ ਮੂਰਤੀ ਉਹਦੀ ਦੇਂਦੀ ਨਹੀਂ ਹੈ ਮੂਰਤੀ ਹੈਗੀ ਹੈ ਤੂੰ ਸਹੀ ਜੀ ਉਹ ਕਹਿੰਦੇ ਹੈ ਤਾਂ ਸਹੀ ਮੂਰਤੀਆਂ ਦੀ ਅਕਾਲ ਮੂਰਤ ਹੈ ਉਹ ਵਜੂਤ ਤਾਂ ਹੈਗਾ ਮੂਰਤੀ ਤਾਂ ਹੈ ਅਕਾਲ ਮੂਰਤੀ ਆ ਜਿਹੜੇ ਸਰੀਰ ਨੇ ਸਾਰੇ ਕਾਲ ਵਸਨੇ ਅੱਖਰੂ ਦਿਖਾਣ ਵਾਲੀ ਮੂਰਤੀ ਬਾਹਾਂ ਤਾਂ ਕਾਲ ਵਸੇ ਸਾਰੀ ਸਾਡੀ ਮਜਬੂਰੀ ਇਹ ਹੈ ਕਿ ਉਹ ਮੂਰਤੀ ਉਹਦੀ ਵੱਧਦੀ ਨਹੀਂ ਜਿਹਦੇ ਜੀਰੂ ਅਸੀਂ ਬੰਦ ਨੇ ਵੱਢੀ ਸਕਦੀ ਜੇ ਬਣਾਉਣਿਆ ਤਾਂ ਝੂਠੀ ਹੈ ਉਹ ਹੋਰ ਕਿਸੇ ਦੀ ਹੈ ਫਿਰ ਉਹਦੀ ਹੈ ਨਹੀਂ ਮੂਰਤੀ ਦੋਨੇ ਨਾ ਵਰਦਾ ਸਾਨੂੰ ਉਹਦਾ ਰੂਪ ਹੈ ਰੂਪ ਹੈ ਪਰ ਤੇਰਾ ਰੂਪ ਅਗਮ ਹੈ ਰੂਪ ਤੇਰਾ ਦਰਸਾਰਾ ਬਣਾਉ ਮੂਰਤੀ ਕਿਵੇਂ ਬਣਾਓਗੇ ਬਣਦੀ ਹੋਈ ਨਹੀਂ ਹੈ ਮੂਰਤੀ ਜਿਹੜੇ ਮੂਰਤੀਆਂ ਦੀ ਗੱਲਾਂ ਕਰਦੇ ਨੇ ਹਿੰਦੂ ਨਾ ਸਾਰੇ ਉਹ ਜਿਹੜੀਆਂ ਬਣਾਉਂਦੇ ਗੁਰੂਆਂ ਦੀਆਂ ਮੂਰਤੀਆਂ ਬਣਾਉਣ ਲੱਗੇ ਕਿ ਦੁਬਤ ਲੋ ਪ੍ਰਭਾਵਤ ਨਾ ਲੋਕ ਇੱਕ ਉਹ ਵੀ ਬਣਾਉਂਦੇ ਨੇ ਪੈਸੇ ਦੇ ਤੁਸੀਂ ਮੂਰਤੀਆਂ ਬਣਾਉਂ ਸਾਡੇ ਨਾਲ ਰਲ ਜਾਣੇ ਹੈ ਆਈ ਕਦਾ ਰਹਿੰਦੀ ਸੀ ਇਹਨਾਂ ਦੇ ਵਿੱਚ ਮੂਰਤੀ ਪੂਜਾਦੀ ਹੋਰ ਤਾਂ ਬਾਕੀ ਸਭ ਕੁਝ ਠੀਕ ਐ ਸਿੱਧੂ ਐ ਨਾ ਸਿੱਖ ਉਹਦੀ ਪੂਜਾ ਤਾਂ ਕੜੇ ਹੋਈ ਨਹੀਂ ਹਲੇ ਉਹ ਵੀ ਉਹਦੀ ਦੇਹੂ ਦਾ ਮੂਰਤੀ ਬਣੂ ਦੇਬਹੀਨ ਸਨੇਹ ਸਭੋਤਨ ਸਨੇਹ ਸਭੋਤਨ ਪਰ ਸਾਰੇ ਜਿੰਨੇ ਸਰੀਰ ਨੇ ਜੁਦੀਆਂ ਨੇ ਉਹਨਾਂ ਨਾਲ ਸਨੇਹ ਪ੍ਰੇਮ ਰੱਖਦਾ ਉਹਨਾਂ ਦੀ ਭਲਨਾ ਕਰਦਾ ਆਪਣਾ ਸਰੀਰ ਕੋਈ ਨਹੀਂ ਬਾਕੀ ਜਿੰਨਾ ਸਰੀਰ ਨੇ ਆ ਵੀ ਮੇਰਾ ਸਰੀਰ ਨਹੀਂ ਹੈ ਸਰੀਰ ਹੈ ਇਹਦਾ ਨਫ਼ਰਤ ਕਰਾਂ ਮੈਂ ਉਹਨੂੰ ਵੀ ਮੈਂ ਤਾਂ ਬਿਨਾਂ ਸਰੀਰ ਵਾਲੇ ਨਾਲ ਰੱਖੂਗਾ ਬਿਲ ਮਲਾਬ ਸਰੀਰ ਵਾਲੇ ਨਾਲ ਮੇਰਾ ਕੋਈ ਮਿਲਲਾਬ ਨਹੀਂ ਇਹ ਨਹੀਂਗਾ ਸਗੋਂ ਸਵੇ ਹੈ ਬਾਕੀ ਸਾਰੇ ਸਰੀਰਾਂ ਦਾ ਉਹਨਾਂ ਦੀ ਪਾਲਣਾ ਕਰਨੀ ਹੈ ਸਨੇ ਸਭੋਤਨ ਨਹੀਂ ਹੈ ਬਰਕਤ ਪਰ ਉਹ ਹੈ ਦੀ ਦੇਖੋ ਸਨੇ ਉਹ ਨੇ ਦੋ ਚੀਜ਼ਾਂ ਨੇ ਨਹੀਂ ਬਰਕਤ ਸਨੇ ਨੇ ਹੁੰਦਾ ਸਨੇਤਾ ਹੈ ਪ੍ਰੇਮਤਾ ਹੈ ਨੇਦੀ ਹੈ ਉਹ ਨਹੀਂ ਹੈ ਕਿਸੇ ਨਾਲ ਨਹੀਂ ਜੇ ਬੋ ਹੋਵੇ ਫਿਰ ਸਨੇ ਨਹੀਂ ਹੋ ਸਕਦਾ ਸਾਰੇ ਲੋਕ ਜਿਹੜਾ ਸਾਰਿਆਂ ਨਾਲ ਦਸਰੇ ਹੁੰਦਾ ਹੈ ਜਿਹੜਾ ਥੋੜ੍ਹਾ ਨਾਲ ਹੁੰਦਾ ਉਹ ਨੇ ਦੇ ਹੋ ਜਾਂਦਾ ਕਿਸੇ ਦਾ ਵਧ ਵੱਧ ਘਟ ਵੀ ਹੁੰਦਾ ਕਿਸੇ ਦਾ ਵੱਧ ਕਿਸੇ ਦਾ ਘਟ ਸਨੇਹ ਕੋ ਜਾ ਹੁੰਦਾ ਸਾਰਿਆਂ ਨੂੰ ਸਨੇਹ ਨੇ ਦਾ ਹੀ ਸ਼ੁੱਧ ਰੂਪ ਸਨੇਹ ਦੇ ਦਾ ਨੇ ਜਿਹੜਾ ਹੈ ਲੋ ਉਹਦਾ ਸ਼ੁੱਧ ਰੂਪ ਸਨੇਹ ਹੈ ਇਹ ਸਨੇਹ ਤੋਂ بگੜ ਕੇ ਨਹੀਂ ਹੋ ਜਾਂਦਾ ਸਿਰੇ ਦਾ ਵਿਗੜ ਜਾਂਦਾ ਸਨੇ ਚ ਖੋਟਾ ਜਲਦੀ ਹੈ ਉਹ ਦੇ ਰਹਿ ਜਾਂਦਾ ਖੋੜਾ ਹੀ ਨਾ ਕਿਸੇ ਨੂੰ ਜਿੱਦਾਂ ਕਿਸੇ ਨੂੰ ਘਾੜਾ ਕਾਣ ਪੈ ਗਈ ਸਿਰੇ ਦੇ ਵਿੱਚ ਦੇ ਬਣ ਗਿਆ ਅਗੇ ਅਛਾ ਤੁਸੀਂ ਉਹ ਫਿਰ ਵੀ ਪਕੜ ਦੋ ਫਰੇ ਰਹਿੰਦੇ ਸਾਡੀ ਤੋਂ ਪਤਾ ਨਹੀਂ ਹੈਗਾ ਕਿਸੇ ਨੂੰ ਵੀ ਸਾਡਾ ਨਾਮ ਦੱਸਣਿਆ ਦੇ ਦਾ ਇਹਨੂੰ ਪਤਾ ਕੋਈ ਨਹੀਂ ਮਿਸਰੇ ਸਾਡੇ ਨੂੰ ਇਹ ਗੱਲ ਵੀ ਇਹ ਗੱਲ ਵੀ ਸਾਡੀ ਸਮਝ ਤੋਂ ਪਰੇ ਆ ਗਏ ਆ ਫਿਰ ਵੀ ਫਿਰ ਵੀ ਨਹੀਂ ਕਿਸੇ ਨੂੰ ਪਤਾ ਹੈਗਾ ਇਹਦਾ ਅੱਛਾ ਇਹ ਵੀ ਨਹੀਂ ਹੈਗਾ ਵੀ ਚੱਲ ਵੇ ਪਹਿਲਾਂ ਸਰੇ ਸੀਗਾ ਹੁਣ ਹੈਰੀ ਹਮੇਸ਼ਾ ਹੀ ਰਹਿੰਦਾ ਹੋ ਸਰੇ ਵੀ ਹਮੇਸ਼ਾ ਰਹਿੰਦਾ ਪਰ ਪਤਾ ਵੀ ਕਿਸੇ ਨੂੰ ਨਹੀਂ ਲੱਗਦਾ ਜਾਨ ਕੋ ਦੇ ਤੋ ਅਜਾਨ ਕੋ ਜ਼ਮੀਨ ਕੋ ਕੋ ਜਾਨ ਕੋ ਦੇ ਜਾਣਦੇ ਨੇ ਵੀ ਦਦਾ ਸਮਝਦਾ ਨਹੀਂ ਵੀ ਉਹ ਹੀ ਦਿੰਦਾ ਉਰਰ ਵੀ ਦੇ ਜਾਂਦਾ ਅਜਾਣ ਨੂੰ ਇਹ ਨਹੀਂ ਪਤਾ ਵੀ ਕੌਣ ਦਿੰਦਾ ਹੈ ਉਰਰ ਨੂੰ ਵੀ ਦੇ ਜਾਂਦਾ ਅਜਾਣ ਜਿਹੜੇ ਦਿੰਦਾ ਕੌਣ ਹੈ ਉਹ ਤਾਂ ਕਹਿੰਦੇ ਨੇ ਅਸੀਂ ਉਹ ਕਹੋ ਉਹ ਉਰਰ ਵੀ ਦੇ ਜਾਂਦਾ ਜਿਹੜੇ ਕਹਿੰਦੇ ਰੱਬ ਕੌਣ ਹੁੰਦਾ ਅਸੀਂ ਆਪ ਕਹਦੇ ਹਾਂ ਉਰਰ ਵੀ ਦੇ ਜਾਂਦਾ ਇਸ ਗੱਲ ਤੋਂ ਅਣਜਾਣ ਨੇ ਗੱਲ ਦੇ ਰਿਹਾ ਉਹਨਾਂ ਨੂੰ ਵੀ ਦੇ ਜਾਂਦਾ ਜਿਹੜੇ ਜਾਣਦੇ ਨੇ ਉਰਰ ਨੂੰ ਦੇ ਜਾਂਦਾ ਕੋਈ ਫਰਕ ਨਹੀਂ ਹੈ ਜਾਣ ਨੂੰ ਦੇ ਤਾ ਇਹ ਤੇ ਜਿਹੜਾ ਜ਼ਮੀਰ ਕੋ ਦੇ ਦ ਜਮਾਨ ਕੋ ਜ਼ਮੀਨ ਨੂੰ ਵੀ ਕੋ ਦਿੰਦਾ ਹੈ ਜ਼ਮੀਰ ਜਿਹੜੀ ਪੈਦawar ਕਿਥੋਂ ਹੁੰਦੀ ਹੈ ਨਿਕਲਿਆ ਜਾਂਦਾ ਰੋਜ਼ ਨਿਕਲਿਆ ਜਾਂਦਾ ਕਿਵੇਂ ਦਿੰਦਾ ਜਮੀਨ ਨੂੰ ਸੂਰਜ ਦੀ ਧੁੱਪ ਰਾਹੀਂ ਦਿੰਦਾ ਚੰਦਰਮੇ ਦੀ ਰੋਸ਼ਨੀ ਕਿੰਨਾ ਰਾਹੀਂ ਦਿੰਦਾ ਆ ਜਿਹੜੇ ਬਹੁਤ ਕੋਈ ਜ਼ਮੀਨ ਤੇ ਬਚਾਉਂਦਾ ਹੈ ਜ਼ਮੀਨ ਨੂੰ ਜੇ ਧੁੱਪ ਲੱਗਦੀ ਹੈ ਜ਼ਮੀਨ ਜਰਖੇਸ਼ ਹੁੰਦੀ ਹੈ ਪਾਣੀ ਦਿੰਦਾ ਪਾਣੀ ਨਾਲੇ ਜ਼ਮੀਨ ਚ ਪੈਦਾ ਹੋਜੂ ਕੁਝ ਜਮੀਨ ਨੂੰ ਵੀ ਬਹੁਤ ਕੁਝ ਦਿੰਦਾ ਹੈ ਜਮੀਨ ਸਾਨੂੰ ਦਿੰਦੀ ਹੈ ਅਸਲ ਦੇ ਵਿੱਚ ਜਮੀਨ ਨੂੰ ਦਿੰਦਾ ਜਮੀਨ ਸਾਨੂੰ ਦਿੰਦੀ ਹੈ ਜਮੀਨ ਨੂੰ ਦੇ ਕੇ ਸਾਰੇ ਜਵਾਨਾਂ ਨੂੰ ਦਿੰਦਾ ਦਰਖਤਾਂ ਨੂੰ ਤਾਂ ਮਿਲਦਾ ਜੇ ਜਮੀਨ ਨੂੰ ਦਿੰਦਾ ਉਹ ਜਮੀਨ ਨੂੰ ਦੇ ਦਿੰਦਾ ਜਮੀਨ ਦਰਖਤਾਂ ਨੂੰ ਦੇ ਦਿੰਦੀ ਹੈ ਐਂ ਦਿੰਦਾ ਹੋ ਐਂ ਦਿੰਦਾ ਵੀ ਰਸਤੇ ਹਰੇਕ ਦੇ ਮੂੰਹ ਚ ਬੁਰਕੀ ਪਾਉਂਦਾ ਹੈ ਜਮੀਨ ਕੋ ਦੇਣਾ ਜਵਾਨੇ ਨੂੰ ਆਪੇ ਚਲਾ ਜਾਂਦਾ ਪੱਕੇ ਆਪੇ ਚਲਾ ਜਾਂਦਾ ਸਾਰਿਆਂ ਨੂੰ ਉਸੇ ਦਾ ਜ਼ਮੀਨ ਨੂੰ ਅਧਰੰਦਾ ਵਿਲਾ ਤੂੰ ਬਣਦੇ ਮਾਂ ਨੂੰ ਦੇ ਦਿੰਦਾ ਮਾਂ ਬੱਚਿਆਂ ਨੂੰ ਦੇ ਦਿੰਦੀ ਹੈ ਜਮੀਨ ਘਾਤੀ ਨੂੰ ਮਾਤਾ ਤਾਂ ਹੀ ਕਹਿੰਦੇ ਨੇ ਜੇ ਮਾਂ ਦੇ ਦੁੱਧ ਆ ਗਿਆ ਬੱਚੇ ਨੇ ਪੀ ਲੈਣਾ ਜੇ ਮਾਂ ਦਾ ਦੁੱਧ ਨਹੀਂ ਬੱਚਾ ਕੀ ਪੀਊਗਾ ਉਹ ਹੁਣ ਬੱਚੇ ਨੂੰ ਤਾਂ ਸੱਤਾ ਨਹੀਂ ਨਾ ਦੁੱਧ ਦਿੰਦਾ ਹੋ ਮਾਂ ਨੂੰ ਦੇ ਦਿੰਦਾ ਬੱਚਾ ਫਾਇਦਾ ਨਹੀਂ ਹੋਇਆ ਤਾਂ ਪਹਿਲਾਂ ਆ ਜਾਂਦਾ ਖੱਦੇ ਬਾਤਿਆਂ ਦੇ ਉਹਦੇ ਬਾਤਿਆ ਦੇ ਉਹ ਪੈਦਾ ਹੋਣ ਲੱਪਿੜ ਇਹ ਤਰੀਕਾ ਨਾ ਦਤਾ ਹਾਂ ਕਾਹੇ ਕੋ ਢੋਲਤਾ ਹੈ ਤੁਮਰੀ ਸੁਧ ਕਾਹੇ ਕੋ ਢੋਲਤਾ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾਪਤ ਲੈ ਹੈ ਕਾਹੇ ਕੋ ਢੋਲਤਾ ਹੈ ਤੂੰ ਕਾਹ ਤੇ ਢੋਲਦਾ ਤੂੰ ਕਰੋਂ ਉਹ ਦੇਖ ਜਮੀਨ ਨੂੰ ਦੇਖ ਫੇੜ ਵੋਦੇ ਨੂੰ ਦੇਖ ਪਤਾ ਹੀ ਨਹੀਂ ਉਹਨਾਂ ਨੂੰ ਕਰ ਉਹਦੇ ਨੂੰ ਪਤਾ ਕਰ ਵੇਲੇ ਜਾਂਦਾ ਕਾਇ ਕਡੋਲਦਾ ਤੂੰ ਬਣੀ ਸੁਧਰ ਸ੍ਰੀ ਪਦਮਾ ਪਤਲਾ ਸੁਧਰ ਸ੍ਰੀ ਪਦਮਾ ਪਤ ਤੇਰੀ ਵੀ ਸੁਧ ਲਊਗਾ ਤੂੰ ਕਵਰਾ ਆ ਦੇਣਾ ਪੇੜ ਸਾਲਾ ਸਾਲ ਖੜੇ ਰਹੇ ਗਰਮੀਆਂ ਲੱਗ ਜਾਂਦੀਆਂ ਨੇ ਖੜੇ ਰਹਿੰਦੇ ਨੇ ਫੇਰ ਬਰਸਾ ਰ ਆ ਜਾਂਦੀ ਏ ਜੇ ਨਹੀਂ ਕਿਸੇ ਵੇਲੇ ਟਾਈਮ ਤੇ ਚੀਜ਼ ਮਿਲਦੀ ਤਾਂ ਬਹੁਤਾ ਕੰਡਾਈ ਦਾ ਨਹੀਂ ਹੁੰਦਾ ਰੋਣਾ ਨਹੀਂ ਪਾਈ ਦੱਸਦਾ ਸੁਧਾ ਪਹਿ ਲੈ ਲੰਦਾ ਹੁੰਦਾ ਹਾਂ ਰੋਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਬਹੁ ਭਾਂਤ ਬਚਾਵੇ ਰੋਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਬਹੁ ਭਾਂਤ ਬਚਾਵੇ ਰੋਗ ਨੇ ਬਹੁਤ ਸਾਰੇ ਸੁਤਸਾਰ ਦੇ ਵਿੱਚ ਸੋਗ ਨੇ ਬਹੁਤ ਸਾਰੇ ਇਹਨਾਂ ਤੇ ਬਚਾਉ ਰਿਹਾ ਉਹ ਸਾਨੂੰ ਅਸਲ ਦੇ ਵਿੱਚ ਬਹੁ ਭਾਂਤ ਬਚਾਵੇ ਬਹੁਤ ਭਾਂਤ ਕਰਕੇ ਬਚਾ ਰਿਹਾ ਰੋਗ ਕਿਰ ਬਕਾਰ ਸਾਰੇ ਰੋਗ ਦੇ ਰੋਗ ਤਾਂ ਮਨ ਦਾ ਸਰੀਰਕ ਰੋਗ ਨਹੀਂ ਹੈ ਸਰੀਰ ਕੋ ਰੋਗ ਲੱਗਦੇ ਰਹਿੰਦੇ ਨੇ ਸਰੀਰ ਕੋ ਜੇ ਫੈਲ ਜਾਣ ਸਾਰੇ ਉੱਤੇ ਲੱਗ ਜਾਂਦੀ ਹੈ ਧਿਆਨ ਰੱਖੇ ਨਹੀਂ ਲੱਗਦੀ ਕੁਝ ਆਦਮੀਆਂ ਦੇ ਵਿੱਚ ਲੜਨ ਦੀ ਸ਼ਕਤੀ ਜ਼ਿਆਦਾ ਹੁੰਦੀ ਹੈ ਤੇ ਸੱਚ ਘੱਟ ਹੁੰਦੀ ਹੈ ਉਹ 另 ਗੱਲ ਹੈ ਸਰੀਰ ਕਿਹਾ ਜਾਂ ਕਿਸੇ ਦਾ ਇਹ ਜਿਹੜੇ ਰੋਗਾਂ ਦੀ ਗੱਲ ਕੀਤੀ ਹੈ ਬਹੁਤ ਸਿਕਰੋ ਗੱਲ ਕੀਤੀ ਹੈ ਬਚਾਵਾ ਗਿਆਨ ਬਚਾਉਂਦਾ ਉਹ ਮਾਨਸਿਕ ਰੋਗਾਂ ਤੋਂ ਬਚਾਉਂਦਾ ਡਿਪਰੈਸ਼ਨ ਤੋਂ ਬਚਾਉਂਦਾ ਹਾਰਟ ਅਟੈਕ ਤੋਂ ਬਚਾਉਂਦਾ ਗਾਂਵਾਂ ਵਾਲੂ ਹਾਰਟ ਅਟੈਕ ਨਹੀਂ ਲੱਗਦਾ ਹਾਰਟ ਅਟੈਕ ਦਾ ਜਦੋਂ ਡਾਕਟਰਾਂ ਨੇ ਦੱਸਿਆ ਸੀ ਨਾ ਕਿ ਹਾਰਟ ਅਟੈਕ ਦਾ ਕੋਈ ਇਲਾਜ ਨਹੀਂ ਹੈ ਕੋਈ 56 ਦੀ ਗੱਲ ਹੈ 55 55 ਦੀ ਗੱਲ ਸਾਰੇ ਡਾਕਟਰਾਂ ਨੇ ਦੱਸਿਆ 14 ਪਿੰਡਾਂ ਬੁਲਕਾ ਦੇ ਡਾਕਟਰਾਂ ਨੇ ਰਿਜ਼ਲਟ ਕੱਢਿਆ ਵੀ ਇਹਦਾ ਇਲਾਜ ਨਹੀਂ ਹੈ ਕੋਈ ਜਿਹੜਾ ਇਹਦਾ ਇਲਾਜ ਅਸੀਂ ਕਰਦੇ ਆ ਦਵਾਈ ਦੇ ਦੇ ਹਾਰਟ ਅਟੈਕ ਟੈਂਪਰੇਰੀ ਤੌਰ ਤੇ ਰੁਕਦਾ ਪਰ ਉਹਦੀ ਮੌਤ ਆਸਮਦੀ ਛੇਤੀ ਹੋ ਜਾਂਦੀ ਉਹਦੇ ਖੋਲਦੇ ਵਿੱਚ ਅਸੀਂ ਜਿਹੜੀ ਦਵਾਈ ਦਿੰਦੇ ਆ ਐਸਾ ਨੁਕਸਪਾਸ਼ਾ ਕਰਦੀ ਹੈ ਗਰਮੀ ਪੈਦਾ ਕਰਦੀ ਹੈ ਸਗੋਂ ਉਹਦੇ ਨਾਲ ਕਮਜ਼ੋਰੀ ਪੈਦਾ ਹੁੰਦੀ ਹੋਈ ਇਹ ਨਾੜੀਆਂ ਦੇ ਵਿੱਚ ਦੀ ਦਵਾਈ ਦੱਸਦੇ ਪਹਿਲਾਂ ਨੀਦੌੜ ਦੀ ਦਵਾਈ ਅਸੀਂ ਦੀਦ ਨਹੀਂ ਸੀ ਉਹਦੀ ਹੁੰਦੀ ਚਿੰਤਾ ਵਾਲਿਆਂ ਉਹਨਾਂ ਦਾ ਕੋਈ ਇਲਾਜ ਨਹੀਂ ਹੈ ਡਾਕਟਰੀ ਇਲਾਜ ਨਹੀਂ ਕਿਉਂਕਿ ਇਹ ਸਬੰਧ ਸਪਿਰਚੁਲਿਜ਼ਮ ਨਾਲ ਹੈ ਆਦਮੀ ਦੇ ਮਨ ਦਾ ਸਬੰਧ ਹੈ ਅਟੈਕ ਦਾ ਮਨ ਨੂੰ ਚਿੰਤਾ ਫਿਕਰ ਹੁੰਦਾ ਮਨ ਨੂੰ ਚਿੰਤਾ ਫਿਕਰ ਦੀ ਦਵਾਈ ਨਹੀਂ ਹੈ ਸਾਡੇ ਕੋਲ ਦਵਾਈ ਨਹੀਂ ਹੈ ਉਹਨੂੰ ਬੇਹੋਸ਼ ਕਰਕੇ ਰੱਖਣਾ ਜਾਂ ਨਸ਼ਾ ਖਵਾ ਕੇ ਕੋਈ ਕਰ ਲੈਣਾ ਇਹ ਦਵਾਈ ਨਹੀਂ ਹੈ ਉਹਦੇ ਖੂਨ ਦੇ ਵਿੱਚ ਸਮਾਉਣ ਨੁਕਸਾਨ ਪੈ ਜਾ ਕਰਨੀ ਚਾਹੀਦੀ ਜੇ ਫਰੇído ਆਈ ਤਾਂ ਹੈ ਪਰ ਇਹਦਾ ਨੁਕਸਾਨ ਜ਼ਿਆਦਾ ਹੁੰਦਾ ਇਸ ਕਰਕੇ ਦੀ ਦਵਾਈ ਹੋ ਨਹੀਂ ਕੋਈ ਹਾਰਟ ਅਟੈਕ ਸਾਡੇ ਕੋਲ ਕੋਈ ਇਲਾਜ ਨਹੀਂ ਇਹਦਾ ਇਲਾਜ ਧਰਮ ਤੇ ਲੱਭੋ ਫਿਰ ਉਹਨਾਂ ਧਰਮਸਟਡੀ ਕਰਾਇਆ ਪਤਾ ਸੀਗਾ ਵੈਸੇ ਅੰਗਰੇਜ਼ਾਂ ਨੇ ਤਾਂ ਇੰਦੋਸਤਾਨ ਦੇ ਵਿੱਚ ਇੰਦੋਸਤਾਨ ਦੇ ਵਿੱਚ ਧਰਮ ਜਿਹੜਾ ਹੈਗਾ ਸਿੱਖ ਧਰਮ ਵਧੀਆ ਧਰਮ ਹੈ ਕਿਉਂਕਿ ਉਹਨਾਂ ਦੇ ਸਿੱਖਾਂ ਦੇ ਉਸ ਵੇਲੇ ਦੀਆਂ ਦਾਸਾਂ ਕਰਕੇ ਜਿਹੜੇ ਕੰਮ ਕੀਤੇ ਸੀ ਅੰਗਰੇਜ਼ਾਂ ਨੂੰ ਪਤਾ ਸੀ ਉਸ ਬੜੇ ਨੇ ਸਟੱਡੀ ਕਰਾ ਕੇ ਰੱਖਿਆ ਉਹ ਗਰਦ ਉਹ ਕਹਿੰਦਾ ਨਾ ਵੀ ਹੈ ਤਾਂ ਸਹੀ ਇਹਦੇ ਵਿੱਚ ਆਦਮੀ ਦੇ ਮਨ ਤੇ ਗਮੀ ਔਰ ਖੁਸ਼ੀ ਦਾ ਗਮੀ ਦਾ ਅਸਰੇ ਨਾ ਹੋਵੇ ਘਟਾ ਟੱਕ ਨਹੀਂ ਹੁੰਦੋ ਕਿਸੇ ਖੁਸ਼ੀ ਔਰ ਗਮੀ ਦਾ ਤੇ ਅਸਰੇ ਨਾ ਹੋਵੇ ਬੇਅਸਰ ਹੋ ਜਾਏ ਇਹ ਤਾਂ ਇਹ ਧਰਮ ਵੀ ਕਰਦਾ ਫਿਰ ਹੋਰ ਕੋਈ ਚੀਜ਼ ਨਹੀਂ ਕਰਦੀ ਜੋ ਨਾਲ ਸੁਖਵੇਂ ਦੁਖਵੇਂ ਦੁਖ ਨਹੀਂ ਮੰਨ ਸੁਖ ਛਲੇ ਔਰ ਭੈਣੇ ਜਾ ਕੇ ਕਲਚਰ ਬੱਤੀ ਮੰਨ ਇਹ ਦੋਈ ਹੈ ਇਹਦੇ ਵਿੱਚ ਧਰਮ ਜਾਹਰ ਕਰਤੇ ਹੈ ਨਹੀਂ ਤਾਂ ਕਹਿੰਦੇ ਸਿੱਖ ਧਰਮ ਦੱਸੋ ਕੀ ਹੈ ਐਸੇ ਕਰਕੇ ਉਹਨਾਂ ਨੇ ਅਬਰਦਸ਼ ਗਿਆ ਸੀ 5000 ਬੰਦੇ ਜਿਹੜੇ ਕਹਿੰਦੇ ਸੀ ਕੁਰਸੀਨੇ ਦੇ ਬੈਠਣੇ ਆਈ ਉਹਨਾਂ ਨੂੰ ਮੈਂ ਕਿਹਾ ਸੀ ਵੀ ਤੁਹਾਨੂੰ ਉਹ ਚੀਜ਼ ਨਹੀਂ ਮਿਲਲੀ ਜੇ ਕੁਰਸੀਆਂ 'ਤੇ ਬੈਠੋਗੇ ਜਿਹੜੀ ਚੀਜ਼ ਖਾਤਰ ਤੁਸੀਂ ਅਪਰਤ ਛਕ ਰਹੇ ਹੋ ਫੇਰ ਨਾ ਕਿਹਾ ਦੱਸਿਆ ਦੀ ਮੈਨੂੰ ਵਿੱਚੋਂ ਪਤਾ ਸੀ ਗੱਲ ਦਾ ਵੀ ਅਪਰਤ ਕਿਉਂ ਛਕਦੇ ਨੇ ਬੱਚੇ ਬងਾਰੀ ਦਾ ਪਤਾ ਸੀ ਨਾ ਵੀ ਕਿਉਂ ਛਕਦੇ ਨੇ ਉਹ ਛਕਦੇ ਸੀ ਹਾਰਟ ਅਟੈਕ ਤੋਂ ਬਚਣ ਵਾਸਤੇ ਹਾਰਟ ਅਟੈਕ ਦਾ ਸਿੱਖਾ ਨੂੰ ਹੋ ਰਿਹਾ ਹੁਣ ਕਿਉਂ ਹੋ ਰਿਹਾ ਗਰਮਾ ਦੀ ਸੋਚੀ ਨਹੀਂ ਗਰਵਾਤੇ ਪੈਰੇ ਹੀ ਨਹੀਂ ਦਿੱਤਾ ਬੰਦੇ ਹੀ ਨਹੀਂ ਬੰਦਨ ਨਾਲ ਹੈ ਗੱਲ ਸਾਰੀ ਹੋਣੀ ਬੰਨਾ ਤੇ ਬਦਲਦੀ ਹੈ ਜਿਹੜੇ ਬੰਦਾ ਨੂੰ ਸੰਤਾਂ ਨੂੰ ਵੀ ਹਾਰਟ ਅਟੈਕ ਹੁੰਦਾ ਹੈ ਸੰਤਰੀ ਹੁੰਦੇ ਮੈਨੂੰ ਯਾਦ ਆ ਪੰਜਾਬੀ ਦੇ ਖ਼ਬਰ ਚ ਮੈਂ ਸਾੜ੍ਹੋਂਪੁਰ ਬੈਠਾ ਸਟੇਸ਼ਨ ਤੇ ਪੜਿਆ ਸੀ ਐਨਾ ਕਲੇਰਾਂ ਵਾਲਾ ਜਦੋਂ ਕੀ ਚਾਹ ਸਮਰੇ ਉਹਨੇ ਕਾਦੀ ਹਾਰਟ ਅਟੈਕ ਨਾ ਮਰੇ ਸੰਤ ਗੱਲਾ ਆਇਆ ਫਿਰ ਉਹ ਮੈਨੂੰ ਤਾਂ ਪਤਾ ਸੀ ਮੈਂ ਜਦ ਦੇ ਦੇਖ ਲਿਆ ਵੀ ਇਹ ਸੰਤ ਨਹੀਂ ਪਤਾ ਤਾਂ ਖੈਰ ਪਹਿਲਾਂ ਹੀ ਸੀ ਵੀ ਸੰਤ ਹੈ ਨਹੀਂ ਇਹ ਹਾਰਟ ਅਟੈਕ ਨਾ ਮਰੇ ਉਹ ਸੰਤ ਨਹੀਂ ਉਹ ਤਾਂ ਉਹ ਤਾਂ ਮਾਇਆਦਾਰੀ ਸੀ ਮਾਇਆਦਾਰੀ ਦੇ ਉੱਤੇ ਮਾਇਆ ਦਾ ਪ੍ਰਭਾਵ ਹੈ ਡਾਕਟਰ ਦਾ ਪ੍ਰਭਾਵ ਹੈ ਇਹ ਤਾਂ ਉਹਨਾਂ ਦੀ ਮਾਇਆਦਾਰੀ ਦੀ ਸੰਤ ਹੋਵੇ ਉਹਨੂੰ ਹਾਰਟ ਅਟੈਕ ਹੋਵੇ ਸੰਤ ਨਹੀਂ ਹੋ ਸਕਦਾ ਹਾਰਟ ਅਟੈਕ ਦਾ ਇਲਾਜ ਹੈ ਬਾਣੇ ਚ ਚੱਲਣਾ ਜਿਹੜਾ ਹੁਕਮ ਦੇ ਵਿੱਚ ਚੱਲਦਾ ਉਹ ਹਾਰਟ ਅਟੈਕ ਦਾ ਮਸਲਾ ਨਹੀਂ ਬਾਣੇ ਚੱਲਣਾ ਹਾਰਟ ਅਟੈਕ ਦੀ ਇਲਾਜ ਇਸ ਕਰਕੇ ਗਰੀਬਾਂ ਨੂੰ ਘਟਦਾ ਗਰੀਬਾਂ ਦੀ ਸੀਮਤ ਹੁੰਦੀ ਹੈ ਰੋਟੀ ਸਿੰਘ ਹੁੰਦੀ ਹੈ ਬਹੁਤਾ ਫਿਰਦਾ ਹੁੰਦਾ ਨਹੀਂ ਉਹਨੂੰ ਜੇ ਡਾ ਕਾਰੋਬਾਰ ਵਾਝਨ ਤੋਂ ਨਾ ਹਾਰਟ ਅਟੈਕ ਦੀ ਬਿਮਾਰੀ ਵਾਝਦੀ। ਇਸ ਤਰੀਕੇ ਦੇ ਰੋਗਨ ਦੀ ਗੱਲ ਕੀਤੀ ਹੋਈ ਹੈ। ਵੱਡੇ ਰੋਗ ਇਹਨਾਂ ਤੋਂ ਸਾਜ ਦੋ ਦੋ ਤੋਂ ਆਏ ਨੇ ਕਿ ਦੋ ਤੋਂ ਵੀਰਤਾ ਕੀ। ਪਹਿਲਾ ਹਾਰਟ ਅਟੈਕ ਨਹੀਂ ਹੁੰਦਾ ਇਹਨਾਂ ਤੋਂ। ਉਹ ਗੱਲ ਅਲੱਗ ਹੈ ਕਿਸੇ ਨੂੰ। ਕਿਸੇ ਹੋਰ ਵਜ੍ਹਾ ਨਾਲ ਰੋਗ ਨਾ ਹੋ ਗਿਆ। ਫਿਕਰ ਤਾਂ ਇਹ ਲੋਕਾਂ ਨੂੰ ਹੁੰਦੀ ਸੀ। ਫਿਕਰ ਤਾਂ ਗਰੀਬ ਨੂੰ ਵੀ ਕਈ ਪ੍ਰਕਾਰ ਦਾ ਹੋ ਜਾਂਦਾ। ਕਈਆਂ ਦੇ ਐਕਸੀਡੈਂਟਲੀ ਜਵਾਨ ਮੁੰਡੇ ਪਰਜੰਦਰੇ ਕਈ ਹੋਰ ਨੁਕਸਾਨ ਹੋ ਜਾਂਦੇ ਨੇ ਅੰਦਰ-ਅੰਦਰ ਖਾ ਜਾਂਦਾ ਉਹਨਾਂ ਨੂੰ ਫਿਕਰ। ਹਾਰਟ ਅਟੈਕ ਤਾਂ ਹੋ ਜਾਂਦਾ ਉਹਨਾਂ ਨੂੰ ਵੀ, ਦਿਲ ਕਮਜ਼ੋਰ ਹੋ ਜਾਂਦਾ। ਪਰ ਆਮ ਆਦਮੀ ਨੂੰ ਜਿਵੇਂ ਹਣ ਬਲੱਡ ਪ੍ਰੈਸ਼ਰ ਵਗੈਰਾ ਇਹ ਇਹ ਉਹ ਤੋਂ ਸੀ। ਖਾਣ-ਪਾਣ ਬਦਲ ਕੇ ਹਰ ਮੋਟ ਚਿਤਕਾ ਬਦਲ ਕੇ ਵਰਕ ਜ਼ਿਆਦਾ ਕਰਦਾ ਦਿਮਾਗ ਇਸ ਕਰਕੇ ਜਿਹੜਾ ਗਿਆਨ ਹੈ ਤਤ ਗਿਆਨ ਹੈ ਰੋਗਨ ਤੇ ਅਰਸੋਗਨ ਤੇ ਜਲ ਜੋਗਨ ਤੇ ਵਿਪਾਂਤ ਬਚਾਦਾ ਰੋਗਨ ਤੇ ਅਰਸੋਗਨ ਤੇ ਵੀ ਹੋਵੇ ਦੇ ਵਿੱਚ ਉਹਨੂੰ ਕੋਈ ਚਿੰਤਾ ਨਹੀਂ ਕੱਢ ਗਿਆ ਤਾਂ ਉਹਦਾ ਵੱਧ ਗਿਆ ਤਾਂ ਉਹਦਾ ਆਪ ਕੀ ਆਪ ਦਾ ਪਹਿਰੇਦਾਰ ਭਾਈ ਦਬੜਾ ਦੇ ਜੋ ਖਰਚੇ ਹੋਰ ਸਾਡਾ ਤਾਂ ਉਹਨੇ ਜਿੰਨੇ ਸਰਚ ਖਾ ਲਿਆ ਬਾਕੀ ਤਾਂ ਸੀ ਬਾਕੀ ਤਾਂ ਬੇਨਦਾਰੀ ਹੈ ਨਾ ਬਾਕੀ ਤਾਂ ਵੀ ਸ਼ਾਹਦਾ ਹੈ ਖਦਾ ਵੀ ਤੋਹੀ ਲਾ ਹੈ ਨਾ ਬਸ ਖਾਲਸਾ ਬਾਕੀ ਆਮ ਦਾ ਸ਼ਾਹਦਾ ਜਵਾਨ ਨੂੰ ਕਹਿੰਦੇ ਜਾਮ ਲੈ ਜਾਂਦੇ ਨੇ ਜੇ ਜਮਾ ਗਾਲੇ ਨੂੰ ਜਾਮ ਲੈ ਜਾਂਦੇ ਨੇ ਜਮ ਕੇ ਲੈ ਜਾਂਦੇ ਨੇ ਆਪੇ ਲੈ ਜਾਂਦੇ ਨੇ ਕਹਾਂ ਜਾਣ ਦਿੰਦੇ ਨਾਲ ਜਾਣ ਤਾਂ ਦੇਣਾ ਨਹੀਂ ਨਾ ਇਥੇ ਨਹੀਂ ਖਾਦਣੇ ਬਦ ਜਮਾਨੇ ਦੀ ਖਾਣੇ ਲੈ ਕੇ ਕਿੱਥੇ ਜਾਣ ਜੋ ਜਮਾ ਘਾਲ ਲਿਓ ਜਮਾ ਦਾ ਜਮਦਾ ਹੋਏ ਮੈਂ ਝਾਦਾ ਜਿਹੜਾ ਖਾਜ ਖਾਲ ਲਿਓ ਤੇਰਾ ਉਹ ਪਹਿਲਾਂ ਇਹ ਦੇਖ ਕੇ ਚੱਲਦੇ ਸੀ ਇਹ ਜਦ ਪੜਾਈ ਇਹ ਜੀ ਸੀ ਇਹ ਜੀ ਸਿੱਖਿਆ ਸੀ ਸਿੱਖਿਆ ਦੀ ਗੱਲ ਹੁਣ ਐ ਸਿੱਖਿਆ ਹੈ ਨਹੀਂ ਉਹਦਾ ਜਿਹਦੀ ਨੂੰ ਭੁੱਖ ਹੈ ਮਾਇਆ ਦੀ ਮੇਰਾ ਗੱਲ ਵਰਡ ਜੀ ਤਾਂ ਭੁੱਖ ਦੀ ਹੈ ਜੇ ਕਰੋ ਜਿਹਦੀ ਮਾਇਆ ਦੀ ਭੁੱਖ ਹੈ ਨਾ ਉਹੜੀ ਕਿਸਨੂੰ ਸਭ ਤੋਂ ਜ਼ਿਆਦਾ ਭੁੱਖੇ ਨੂੰ ਦੇ ਦੀ ਉੱਟੀ ਗੱਲ ਹੋ ਗਈ ਕਿਉਂ ਹੋਈ ਉੱਟੀ ਗੱਲੇ ਹੋਈ ਕਿਉਂ ਇਹ ਕੋ ਸ਼ਲੋਕ ਹੈ ਦਾ ਫਰੀਦ ਦਾ ਬਦ ਅਥੇ ਵੀ ਵੇ ਦਰਿਆ ਟੁੱਟਣਾ ਥੀ ਵਾਹ ਬਸ ਇਹਨਾਂ ਦਾ ਬੰਨ ਟੁੱਟ ਗਿਆ ਜਿਹੜਾ ਦਰਿਆ ਦਾ ਬੰਨ ਬੰਨਿਆ ਸੀ ਕਰੋਨਾ ਲਾਇਆ ਸੀ ਬੰਨ ਸਫਰ ਦਾ ਉਹ ਗਿਆ ਟੁੱਟ ਪਹੜਾ ਕੇ ਰਹਿ ਗਿਆ ਸਭ ਕੁਝ ਇਹਨੂੰ ਉਹ ਸਫਰ ਦਾ ਵਨ ਟੁੱਟ ਗਿਆ ਪਿੱਛੇ ਬਹੁਤ ਪੜੀ ਖੜਾ ਸੀਗਾ ਗਰੀਬੀ ਬਹੁਤ ਕੱਟੀ ਸੀ ਬਜ਼ੁਰਗਾਂ ਦੇ ਘਰ ਘਾੜ ਜੋ ਗੱਡਿਆਂ ਦੇ ਪਾਵੇ ਫਿਰਦੇ ਸੀ ਨੋ ਪਛੜ ਗਏ ਸੀ ਆ ਲੜਾਈ ਲੜਦੇ ਰਣਦੇ ਪਛੜ ਗਏ ਸੀ ਬਹੁਤ ਉਹ ਬੰਨ ਗਿਆ ਟੁੱਟ ਇਹ ਵਾਰਨਿੰਗ ਦਿੱਤੀ ਸੀ ਜੇ ਵੱਲ ਟੁੱਟੀਆਂ ਕੱਖਵਰੀ ਛੜਨਾ ਸਿੱਖਾਂ ਦਾ ਟੁੱਟ ਗਿਆ ਵੱਲ اللي ਗਿਆ ਆਇਆ ਗੁਰਵਾਨੀ ਚ ਉਹ ਬੰਨ ਲੈ ਗਿਆ ਸਾਡੇ ਅਖੇ ਇਹਨਾਂ ਨੂੰ ਇਸ ਕਰਕੇ ਇਹਨਾਂ ਨੂੰ ਕਿਉਂਕਿ ਪਿੱਛੇ ਪਾਣੀ ਜਵਾਂ ਜੋ ਜ਼ਿਆਦਾ ਹੋ ਜਾਂਦਾ ਨੇ ਜਵਾਂ ਜੇ دریا ਬੰਨ ਲੀਏ ਜਵਾਂ ਜਵਾਂ ਦੇ ਦਿੰਦੇ ਪਾਣੀ ਇੱਕ ਵਾਰ ਟੁੱਟ ਜਵੇ ਫਿਰ ਜਿਨਾਂ ਦੇ ਸਾਰਾ ਨਿਕਲਣਾ ਲਵੇ ਪਾਣੀ ਦਰਿਆ ਦਾ ਉਹ ਨਾ ਹੁਣ ਗੋਲ ਕਦੇ ਵੀ ਪ੍ਰਵਾਹ ਨਹੀਂ ਇਹਨਾਂ ਨੂੰ ਕਿਨੂ ਕੇ ਹਾਲ ਜੀ ਨਾ ਸੰਖਿਆ 골 ਉਹਦੀ ਵੀ ਪ੍ਰਵਾਹ ਨਹੀਂ ਮਾਇਆ ਦੀ ਬੰਨੀ ਹੋ ਟਟ ਗਿਆ ਅੱਦੇ ਹੋ ਗਏ ਇੱਥੋਂ ਹੋਈ ਹੋ ਜਾਂ ਬਿਮਾਰੀ ਇਹਨ ਦਸਤੀ ਇਹ ਜੀਨ इलाज ਕਰਨਾ ਕਰ ਲੋ ਨਹੀਂ ਕਰਨਾ ਦਸਤੀ ਕੁ ਬੜੀ ਕੀ ਬਈ ਡਾਕਟਰ ਦਾ ਆ ਅਗੇ ਮੈਂ ਕੰਮ ਹੁੰਦਾ ਬਿਮਾਰੀ ਦੱਸਣਾ ਤੈਨੂੰ ਆ ਬਿਮਾਰੀ ਹੈ ਭਾਈ ਇੱਥੋਂ ਬਚੀ ਜੇ ਬਚਣਾ ਬਚੋ ਨਹੀਂ ਬਚਣਾ ਬਚੋ ਲਾਟਣਾ ਜਬਰਦਸਤੀ ਦਾ ਵਿਛੜਣਾ ਨਹੀਂ ਉਹਨੂੰ ਦੱਸਤਾ ਵੀ ਜੇ ਭਾਈ ਹੁਣ ਤੇਰੇ ਅੰਦਰ ਸ਼ਰਾਬ ਚੱਲੀ ਗਈ ਨਾ ਹੁਣ ਪੀ ਲਈ ਪੀ ਲਈ ਜੇ ਫੇਰ ਵੀ ਪੀਲਵੇਂ ਹੋ ਫਰੋਦੀ ਵਰਜੀ ਜੇ ਫੇਰ ਵੀ ਉਹ ਨਾ ਹਟੇ ਫਿਰ ਉਹ ਭਰੂਗਾ ਆਪੇ ਜਨ ਜੋਗਣ ਤੇ ਬੋਹ ਪਾਂਦ ਬਚਾਵੇ ਜਲ ਜੋਗਣ ਤੇ ਬੋਹ ਪਾਂਦ ਬਚਾਵੇ ਇਹ ਜਲ ਜੋਗੜਾ ਇਹ ਜਿਹੜਾ ਸੰਸਾਰ ਹੈ ਨਾ ਇਹ ਕੀ ਹੈ ਇਹ ਪਾਣੀ ਦਾ ਬੋਲਬਲਾ ਇਹ ਜਲ ਜੋਗਣਾ ਹੋਣੇ ਜਿਹੜੀਆਂ ਕੋਨ ਮਾਇਆ ਚ ਰੱਖਣ ਮਾਇਆ ਨਾਲ ਜੁੜੇ ਰੱਖਣਾ ਚਾਹੁੰਦੀ ਉਹ ਜਲ ਜੋਗਣਾ ਉਹਨੂੰ ਕਹਿੰਦੇ ਨੇ ਜਿਹੜੀਆਂ ਸ਼ਕਤੀਆਂ ਸਾਨੂੰ ਮਾਇਆ ਤੋਂ ਪਰੇ ਨਹੀਂ ਨਾ ਜਾਣਦੀਆਂ ਇਹ ਤਾਂ ਸੰਸਾਰ ਚੋਂ ਛੁੱਟਣ ਦੀ ਦਿੰਦੀ ਉਹ ਭਗਸਾਂ ਚੋਂ ਉਹ ਜਲ ਜੋਗਣਾ ਨੇ ਜਲਦਾ ਹੀ ਆ ਜਲਦੇ ਸਿਰਫ ਆਪਣਾ ਸਾਜਿਆ ਜਲਤਨੀ ਸਾਜੀ ਆਇਆ ਜਾਲਾਂ ਜੁੜਿਆ ਰੱਖਣ ਵਾਲੀਆਂ ਜਿੱਦੀਆਂ ਜੋਗੜਾਂ ਦੇ ਨਾਲ ਬੱਤਾਂ ਨੇ ਉਹ ਜਲ ਜੋਗੜਾਂ ਨੇ ਜਿੱਦੀਆਂ ਵੀ ਦੁਰਬੱਤਾਂ ਨੇ ਸਾਰੀਆਂ ਜਲ ਜੋਗੜਾਂ ਨੇ ਜਾਂ ਤੇ ਉਲਟ ਦੁਨੀਆਂ ਬੱਤਾਂ ਨੇ ਸਾਰੀਆਂ ਜਲ ਜੋਗੜਾਂ ਨੇ ਇਹ ਜਲ ਜੋਗੜਾਂ ਸਾਰੀਆਂ ਸਤਸਾਲ ਨਾਲ ਜੋੜਦੀਆਂ ਨੇ ਜਿੱਦੀਆਂ ਅਰਦਾਸਾਂ ਸੀ ਕਰਦਿਆਂ ਜਲ ਜੋਗੜੀਆਂ ਨੇ ਸਾਰੀਆਂ ਪੁੱਤਰਾਂ ਦੀ ਅਰਦਾਹ ਜਲ ਜੋਗਣਾਂ ਪੁੱਤਰ ਚਾਹੀਦੇ ਨੇ ਜਲ ਜੋਗਣਾਂ ਅਰਦਾਸ ਕਪਤੀ ਗੰਢ ਬਬੇ ਸੰਸਾਰ ਸੰਸਾਰਾ ਜੋੜ ਲੇ ਗੰਢ ਬਾੜੀ ਸਿਫਤੀ ਗੰਢ ਬਬੇ ਦਰਬਾਰ ਇਹ ਸਿਫਤਾਂ ਦੀ ਜਿਹੜੀ ਆ ਨਾ ਜਿਸ ਨੂੰ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਇਹ ਜਿਹੜੀ ਵਿਚਾਰਤਾ ਸਿੱਤਾਂ ਦੀ ਐ ਇਹ ਦਰਬਾਰ ਨਾਲ ਜੋੜਦੀ ਐ ਦਰਗਾਹ ਨਾਲ ਜਲ ਜੋਗਣਾ ਨਾਲ ਜੋੜਦੀਆਂ ਨੇ ਬਾਕੀ ਜੋੜਦੀਆਂ ਨੇ ਸੰਸਾਰ ਨਾਲ ਜਲ ਜੋਗਣ ਤੇ ਬੋਪਾਲਤ ਬਚਾਵੇ ਚਲਾਵਤ ਘਾਵ ਸ਼ਤਰੂ ਅਨੇਕ ਚਲਾਵਤ ਘਾਵ ਕਉ ਤਨ ਏਕ ਜਿਹੜੇ ਵਕਾਰ ਨੇ ਉਹਦਾ ਰੇਗਾ ਕਾ ਚਲਾਉਂਦੇ ਹੀ ਵਕਾਰ ਸ਼ਤਰੂ ਦੇ ਸਾਡੇ ਜੋ ਨਾ ਬਕਾਰਾ ਨਾ ਲੜਦਾ ਤਾਂ ਬਕਾਰਾ ਵੀ ਅਗੋ ਚਲਾਉਣਾ ਹੀ ਗੇ ਸਤਰਾ ਨੇ ਇੱਕ ਚਲਾਬਤ ਲੱਗਦਾ ਚਾਹੇ ਬਾਹਲਾ ਛਤਰੂ ਹੋਵੇ ਚਾਹੇ ਦਲਾ ਹੋਵੇ ਕੋਈ ਨਹੀਂ ਲੱਗਦਾ ਉਹ ਤਾਂ ਜ ਤੈ ਵਾਲ ਨਾ ਤੇਰੀ ਰੇਗਲ ਦੂਵੀ ਪਾਸੇ ਵੀ ਤਾਂ ਹੀ ਲੱਗਣਾ ਹੈ ਸੱਤ ਮਿੰਟ ਬਿਜੇ ਕਾ ਚਲਾਉਂਦਾ ਬਥੇਰੇ ਦੋ ਚਲਾਉਂਦਾ ਇੱਕ ਵੀ ਕੰਮਿਆਬ ਨਹੀਂ ਹੁੰਦਾ ਤਉ ਤਾਂ ਇਹ ਕੰਨਾ ਲੱਗਣਾ ਪਾਵੇ ਰੱਖਦਾ ਹੈ ਆਪਣੋ ਕਰ ਕਰ ਆਪਣੇ ਹੱਥ ਦੇ ਕਰ ਕੀ ਜੇ ਨਾ ਜੇ ਤੂੰ ਨਹੀਂ ਜਾਂਦਾ ਇਹਦੇ ਕੌ ਲੱਗੇ ਲੱਗੂ ਕਿਵੇਂ ਪੂਰੇ ਹੱਥ ਆਪਣਾ ਕਰ ਦਿੰਦਾ ਰੱਖਦਾ ਆਪਣੋ ਕਰਦਾ ਕਰ ਉਹ ਜੇ ਲੱਗੇ ਕੌ ਤੇ ਆਪਣਾ ਹੱਥ ਪੂਰੇ ਕਰ ਦਿੰਦੇ ਹੋਰ ਪਾਸੇ ਨਹੀਂ ਜਾਂਦੀ ਗੋਲੀ ਆਤੀ ਉਨੇ ਰਫਲ ਬਣ ਕੇ ਹਲਾ ਦਿੰਨਾ ਪਰ ਇਹਨੂੰ ਉਹਨੂੰ ਨਹੀਂ ਦੀਦੀ ਹੈ ਕਿੱਧਰ ਖਲਗੀ ਉਹਦਾ ਤੇਲ ਦੂਆ ਫਸਾ ਬੁਣੇ ਕੜੀ ਜਾਂਦਾ ਉੱਥੇ ਹਲਾ ਦਨ ਰੱਖਦਾ ਆਪਣੋ ਕਰਦਾ ਕਰ ਆਪ ਸੰਭੂ ਨੂੰ ਮੇਟਣ ਪਾਵਾਂ ਜਿੱਲੇ ਵੀ ਪਾਪ ਨੇ ਅਟ ਪਾਪ ਆ ਗਿਆ ਜਲ ਜੋਗੜ ਨਹੀਂ ਗੱਲਾਂ ਆ ਗਈ ਪਾਪ ਆ ਗਿਆ ਪਾਪ ਜਨਾਂ ਵੀ ਸੰਸਾਰ ਦੇ ਨੇ ਜਿੰਦਿਆਂ ਵੀ ਇੱਛਾਵਾਂ ਸਾਡੀਆਂ ਨੇ ਇੱਕ ਵੀ ਨੜੇ ਨਹੀਂ ਆਉਂਦੀ ਚਰਾਸੀ ਦੇ ਲੋਕਾਂ ਨੇ ਰਣੇ ਆਉਂਦੇ ਹੁੰਦੇ ਸਭ ਕੁਝ ਹੈ ਖਾਲਸਾ 84 ਤੋਂ ਪਰੇ ਆ ਪਰ ਤੇ ਚਰਾਸੀ ਤੋਂ ਅਲੱਗ ਹੁੰਦੇ ਨੇ ਸੁਧਾਰੀ ਨਹੀਂ ਹੁੰਦੇ ਸੰਸਾਰੀ ਲੋਕਾਂ ਦਾ ਇੱਥੇ ਆ ਕੇ ਫਰਕ ਪੈਂਦਾ ਖਾਲਸੇ ਦਾ ਸਿੱਖਦਾਰ ਸੁਧਾਰੀ ਦਾ ਫਰਕ ਇੱਥੇ ਆ ਕੇ ਪੈ ਜਾਂਦਾ ਸਿੱਖ ਹੈ ਜੇ ਸਿੱਖਾ ਤਾਂ ਸੰਸਾਰੀ ਹੈ ਨਹੀਂ ਜੇ ਸੰਸਾਰੀ ਆ ਜੋ ਸਿੱਖ ਹੈ ਜੀ ਅਜੀ ਸੰਸਾਰੀ ਹੋ ਕੇ ਸਿੱਖ ਬਣ ਦਾ ਦਾਵਾ ਕਰਦੇ ਨੇ ਸਿਆਪਾ ਹੈ ਹੈਗੇ ਸੰਸਾਰੀ ਗੱਲ ਕਰਦੇ ਆ ਸਿੱਖੀ ਦੀ ਸਿੱਖੀ ਦੇ ਤਾਇਆ ਅਸੀਂ ਬੇੜੇ ਜੀ ਨਹੀਂ ਬੜੇ ਗੱਲ ਕਰਨਾ ਗੁਰਬਾਣੀ ਦੇ ਸੰਸ਼ੋਧਨ ਦੀ ਅਰਥਾਂ ਦੀ ਅਸਲ ਤੇ ਮਨ ਲਿਆਣਾ ਵੀ ਅਸੀਂ ਸਿੱਖਾ ਹਾਂ ਹਰ ਸੇ ਖੈਰੀ ਸਾਬਤ ਕਰੇ ਕੋਈ ਆ ਜੀ ਵੀ ਮੈਂ ਸਿੱਖਾਂ ਪਹਿਲਾਂ ਫਿਰ ਕੋਈ ਗਾਹਾਂ ਗੱਲ ਕਰੇ ਇਹ ਸਾਬਤ ਕਰੇ ਮੈਨੂੰ ਸਿੱਖੀ ਦਾ ਗਿਆਨ ਹੈ ਚਲੋ ਸਿੱਖੀ ਦਾ ਗਿਆਨ ਹੈ ਸਾਬਤ ਕਰ ਦਵੇ ਜੇ ਉਹਨੂੰ ਸਿੱਖੀ ਦਾ ਗਿਆਨ ਸਿੱਖ ਹੈ ਜਿਹੜੇ ਆਦਮੀ ਨੂੰ ਸਿੱਖੀ ਦਾ ਗਿਆਨ ਨਹੀਂ ਨਾ ਹੈ ਸਿੱਖੀ ਕੀ ਹੈ ਸਿੱਖੀ ਕੀ ਹੈ ਉਹਦੀ ਡੈਫੀਨੇਸ਼ਨ ਹੈਗੀ ਹੈ ਕਈ ਡੈਫੀਨੇਸ਼ਨ ਸਿੱਖੀ ਸਿੱਖਿਆ ਗੁਰ ਵਿਚਾਰ ਇਹ ਲਈ ਗੁਰਮਾਦੀ ਵਿਚਾਰਤਾ ਰਹਿ ਸਿੱਖੀ है. ਰੱਖੀ ਹੈ ਸਮਝਾ ਦਵੇ ਸਿੱਖੀ ਦੀ ਵਿਚਾਰਤਾ ਰੱਖੀ ਹੈ ਸਮਝਾ ਦਵੇ ਪੂਰੀ ਲਾਈਨ ਖਿਜੀ ਦਵੇ ਇੱਥੋਂ ਭਵਸਾਗਰ ਤੋਂ ਲੈ ਕੇ ਸੱਜਖਣ ਤੱਕ ਪੂਰੀ ਡਿਮਾਰਕੇਸ਼ਨ ਦੇ ਦਵੇ ਯਾਰ ਆਏ ਇੱਥੇ ਦੀ ਰਾਹ ਦੀ ਚੱਲ ਕੇ ਸੱਜਖਣ ਪਹੁੰਚ ਜਾਈਦਾ ਇਹ ਵਿਚਾਰਧਾਰਾ ਮਾਰਗ ਗੁਰੂ ਦੇ ਵਿਚਾਰ ਤਾਰਾ ਹੈ ਕਿ ਜੇ ਇਹਦੀ ਸਮਝ ਨਹੀਂ ਆਈ ਫਿਰ ਬਕਵਾਸ ਗੱਲ ਦੀ ਕੀ ਲੋੜ ਤੇ ਬੋਲਣ ਦੀ ਕੀ ਲੋੜ ਹੈ ਪਹਿਲਾਂ ਸਿੱਖਦਾ ਲੋ ਸੁਣ ਲੈ ਕਿਸੇ ਤੋਂ ਆਪਣੀ ਆਪਣੀ ਬੋਲੀ ਬੋਲੀ ਜਾਂਦੇ ਇਹ ਮਜ਼ਾਕ ਗੱਲ ਹੈ ਇਹ ਕਾਗ ਵੀ ਕਾਬਲੂ ਕੇ ਹਾਸੇ ਵੀ ਇਹ ਬੋਲੂਗਾ ਬਾਕੀ ਕੋਈ ਗੱਲ ਆਪਣੇ ਬਹੁਤ ਨਹੀਂ ਕਰਨੀ ਲੈਣੇ ਨੂੰ ਕਿਹਾ ਵੀ ਇਹ ਜੋ ਕਹੋ ਠੀਕ ਹੈ ਬਾਕੀ ਤੁਹਾਨੂੰ ਨਹੀਂ ਪਤਾ ਸਿੱਖੀ ਰੱਖੀ ਹੈ ਸੁਣਦੇ ਉਹ ਵੀ ਸੀ ਉਹ ਡਾਇਰੈਕਟ ਗੁਰੂ ਤੋਂ ਸੁਣਨ ਵਾਲੇ ਨੂੰ ਤਾਂ ਪਤਾ ਲੱਗਿਆ ਤੁਹਾਨੂੰ ਕਿੱਥੋਂ ਪਤਾ ਲੱਗਿਆ ਸੁਪਨਾ ਆ ਗਿਆ ਤੁਹਾਨੂੰ ਇੱਥੇ ਪਤਾ ਲੱਗਦਾ ਵੀ ਇਹ ਮੂਰਖ ਕਿੱਡੇ ਦਾ ਮ ਇਹ ਤਾਂ ਮੂਰਖ ਨੇ ਕੋਈ ਆਦਮੀ ਨਹੀਂ ਜੀ ਸਿੱਖੀ ਦਾ ਗਿਆ ਲੋਬੇ ਯਾ ਕੋਈ ਆ ਕੇ ਕਹੇ ਬਿਰੂ ਗਿਆ ਦੱਸੇ ਉਹ ਅਰਥ ਕਿਦਰੋਂ ਆਉਂਦੇ ਨੇ ਵੀ ਤੁਸੀਂ ਰੱਦ ਕਰੀ ਬੈਠੇ ਹੋ ਸਾਰੇ ਆਪੇ ਸਾਰੇ ਠੀਕੇ ਗਲਤ ਨੇ ਜੋ ਪ੍ਰਚਾਰ ਹੋਇਆ ਗਲਤਲ ਮੰਨ ਬੈਠੇ ਹੋ ਫੇ ਰੌਲਾ ਕਿਹੜੀ ਗੱਲ ਦਾ ਪਾ ਰਹੇ ਹੋ ਚੁੱਪ ਕਰ ਜਾ ਖੋਜ ਲੋ ਪਿਆ ਕੇਸੇ ਤੋਂ ਪੁੱਛ ਲੋ ਭਾਈ ਜੀ ਨੇ ਖੋਜੀ ਉਹ ਦੱਸੇ ਉਹਦੀ ਸੁਣ ਕੇ ਉਹਨੂੰ ਦੱਸੋ ਵੀ ਇੱਥੋਂ ਪਾਈ ਗਲਤ ਲੱਗਦੀ ਹੈ ਇਹ ਤਾਂ ਹੋਈ ਨਾ ਗੱਲ ਆਪਣਾ ਆਪਣਾ ਜੱਟਾ ਕੀ ਫਿਰਦੇ ਸਤਿਮਾਰੀ ਹੋਈ ਹੈ ਇਹਨਾਂ ਦੇ ਗੱਲ ਹੀ ਪਾਣੀ ਕਹਾਂ ਅਗਲਾ ਤਾਂ ਸੋਕੇ ਰੱਖ ਦਿੰਦਾ ਜਾਂ ਮਦਾਨ ਚ ਜਾਂਦਾ ਜਾਂ ਜਾਊਗਾ ਖਾੜੇ ਦੇ ਵਿੱਚ ਤੇ ਦੁਆਜੂ ਫਿਰ ਜਵਾਬ ਨਹੀਂ ਹੁੰਦਾ ਇਹਨਾਂ ਨੂੰ ਫਿਰ ਕਬਰੋਂ ਤੇ ਖੜਦਾ ਪ੍ਰੇਖਾ ਸਾਰੇ ਨਿਕਲ ਜਾਂਦੇ ਉਹ ਬੇਦਰਪਿਆਨ ਨੂੰ ਹੱਲ ਦਾ ਖੜ ਉਹ ਕਹੇ ਕਿ ਇਹ ਅਤਰਾਜ ਕੀ ਅਤਰਾਜ ਦੇ ਚ ਜੇ ਗੁਰਬਾਣੀ ਦੀ ਸਮਝ ਆਵੇ ਤਾਂ ਪਤਾ ਹੋਵੇ ਵੀ ਇਹ ਅਰਥ ਕੀ ਹੈ ਇਹਦਾ ਉਹ ਹਾਲ ਮਰੀਦਾਂ ਦਾ ਕਹਿਣਾ ਮਰੀਦ ਕਹਿੰਦੇ ਨੇ ਆਪਣੇ ਅੰਦਰ ਪਹਿਲੀ ਗੱਲ ਗੁਰੂ ਦੀ ਕੇ ਉਹਨਾਂ ਨੇ ਆਪਣੇ ਆਪ ਨੂੰ ਬੁੱਧਰ ਪਿਆਰ ਨੂੰ ਹਾਲ ਮਰੀਦਾਂ ਦਾ ਕਹਿਣਾ ਹਾਲ ਮਰੀਦਾਂ ਦਾ ਆ ਇਹਦੇ ਅਰਥ ਨੇ ਮੈਂ ਮਰੀਦ ਆਂ ਗੁਰੂ ਦੀ ਹਾਂ ਜੇ ਜੇ ਤੁਸੀਂ ਮਰੀਦ ਹੋ ਜਾਂਦੇ ਫਰੀਦ ਉਹ ਹੈ ਜੇ ਮਰੀਦ ਬਣੋ ਜੇ ਜੇ ਬਣਿਆ ਹੋਇਆ ਫਰੀਦ ਉਹ ਮਰੀਦ ਹੁੰਦਾ ਤੁਸੀਂ ਸਿੱਖ ਬਣ ਗਏ ਉਹ ਸਿੱਖ ਆ ਜਿਹੜਾ ਮਰੀਦਾਂ ਕਹਿ ਰਿਹਾ ਉਹ ਸਿੱਖ ਆ ਬੁੱਧਰ ਪਿਆਰਾ ਕਹੇ ਬਾਕੀ ਸਿੱਖ ਆ ਮਰੇ ਪੰਜ ਪਿਆਰੇ ਨੇ ਮਿੱਤਰ ਪਿਆਰਾ ਯਾ ਹੋ ਪਿਆਰੇ ਨਹੀਂ ਗਿਆ ਹੋਇਆ ਪੰਜ ਪਿਆਰੇ ਗੁਰੂ ਦੇ ਪਿਆਰੇ ਨੇ ਲਾਡਲੀ ਫੌਜ ਕਹਿੰਦਾ ਪਿਆਰੇ ਹੀ ਨੇ ਹੋ ਉਹ ਬੈਠੇ ਹੋ ਮਿੱਤਰ ਦਾ ਕਹਿਣਾ ਮੇਰਾ ਸੁਨੇਹਾ ਦੇ ਦਿਓ ਪਰ ਬਟ ਚੌਸ ਨਾ ਆ ਵੀ ਕੋਈ ਇਹ ਜੀ ਗੱਲ ਹੋ ਗਈ ਹਾ ਢਾਈ ਦਾ ਹੁੰਦਾ ਪਹਿਲਾਂ ਲੋ ਬਾਸ਼ਾ ਨੇ ਸੀਸ ਦਿੱਤਾ ਪੰਜਵੇਂ ਬਾਸ਼ਾ ਨੇ ਸੀਸ ਦਿੱਤਾ ਉਹ ਨਾਲੇ ਡੇੜਾ ਤੇ ਕਹਿੰਦਾ ਤੂੰ ਤੇ ਮੈਨੂੰ ਰੋਕ ਰਜਾਈਦਾ ਨਾ ਹੋਟੜੂ ਸੁਪੋਧਨ ਕਿ ਨੂੰ ਕਰਦੇ ਨੇ ਇਹਨੂੰ ਕਰਦੇ ਨੇ ਸ੍ਰੀ ਪਦਮਪਤਿ ਸੁਪੋਧਨ ਕਹਿੰਦਾ ਇਹ ਸਾਨੂੰ ਕਰ ਰਹੇ ਨੇ ਜਿਹਦੀ ਗੱਲ ਚੱਲਦੀ ਹੈ ਤੈਨੂੰ ਛੱਡ ਕੇ ਤੇਰੇ ਚਾਲ ਛੱਡ ਕੇ ਬਾਜਾ ਰਜਾਈਨ ਚ ਪਿਆ ਹੁੰਦਾ ਨਾ ਅੱਜ ਉੱਥੇ ਅਲਨਪੁਰ ਸਾਹਿਬ ਉਹ ਰੋਗ ਸੀ ਮੇਰੇ ਵਾਸਤੇ ਤੇ ਰੋਗ ਸੀ ਉਹ ਸੁਖ ਨਹੀਂ ਸੀ ਕਬਲੂ ਮੇਰੇ ਵਾਸਤੇ ਨਰਕ ਸੀ ਪੱਠੀ ਸੀ ਉਹ ਤੁਦ ਮੇਰਾ ਰੋਗ ਰਜਾਈਨ ਦਾ ਹੋਟਲ ਲਾਗ ਨੂੰ ਵਸਾਉਂ ਤੜਾਣ ਉਹ ਤਾਂ ਲਾਗ ਸੀਗੇ ਸਾਰੇ ਬਾਇਆ ਧਾਰੀ ਬਾਇਆ ਧਾਰੀ ਨਾ ਮੈਂ ਘਰੇ ਪੈ ਤਾ ਮੇਰੀ ਮੈਂ ਉਹਨਾਂ ਦੀ ਇਰਕ ਵਿੱਚ ਬਣ ਲੈਂਦਾ ਮੈਨੇ ਮੰਨ ਲਿਆ ਆਬ ਨੂੰ ਠੀਕ ਹੈ ਉਹ ਨਹੀਂ ਸੀ ਠੀਕ ਸੂਲ ਸਰਾਹੀ ਉਹ ਮੇਰੇ ਬਾਤੇ ਸੂਲੀ ਸਵਲ ਸੀ ਸਰਾਹੀ ਜੇ ਮੈਨੂੰ ਉੱਤੇ ਸਰਾਹੀ ਨਾਲ ਪਾਣੀ ਪੀਦਾ ਉਹ ਮੈਨੂੰ 목ਣਾ 목ਣਾ ਪੀਣਾ ਪਊਗਾ ਸੂਲ ਸਰਾਹੀ ਸੂਲੀ ਦੇ ਬਰਾਬਰ ਸੀ ਮੈਨੂੰ ਉਦੋਂ ਸੂਲੀ ਚੰਗੀ ਹੈ ਫਲਸੀ ਤੇ ਚੜ ਜਾऊं ਠੀਕ ਹੈ ਸਰਾਹੀ ਦੀ ਬਹੁਤ ਚੰਗੀ ਖੱਜਰ ਪਿਆਲਾ ਪਿਆਲਾ ਨਾ ਉਦੋਂ ਮੈਨੂੰ ਖੱਜਰ ਚੰਗੀ ਹੈ ਉਹ ਪਿਆਲਾ ਮੇਰੇ ਖੰਜਰ ਵਿੱਚ ਬਣਾ ਸੀ ਜੇ ਮੇਰੇ ਹੱਥੀ ਪਿਆਲਾ ਹੁੰਦਾ ਸਰਾਹੀ ਹੁੰਦੀ ਔਰ ਮੇਰੇ ਕੋਲ ਉਹੀ ਐਸ਼ੋ ਐਸ਼ਤ ਹੁੰਦੀ ਮੈਂ ਉਹ ਨਹੀਂ ਉਹਦੀ ਲੋੜ ਹੈਗੀ ਉਹ ਇਹ ਕਹਿ ਰਹੇ ਤੁਸੀਂ ਅਰਥ ਕੀ ਕਰ ਰਹੇ ਹੋ ਸੂਲ ਸਰਾਹੀ ਖੰਜਰ ਪਿਆਲਾ ਵੀ ਕਸਾਈਆਂ ਦਾ ਸਹਣ ਕਿਉ ਮੇਰੇ ਤੇ ਹਰ ਵਕਤ ਕਸਾਈ ਦੀ ਤਲਵਾਰ ਸੀ ਵੀ ਆ ਕਹ ਆ ਬੰਦੇ ਹੋ ਬੰਦੇ ਮੈਂ ਹੁਕਮ ਨੂੰ ਛੱਡ ਕੇ ਪਰਮੇਸ਼ਰ ਦੇ ਉਹਨਾਂ ਦੇ ਹੁਕਮ ਦੇ ਵਿੱਚ ਆ ਜਾਂਦਾ ਮੈਂ ਪਾਗਲ ਸੀ ਮੇਰੇ ਬਾਰੇ ਨੂੰ ਹਾਲ ਫਰੀਦਾ ਯਾਰ ਨੇ ਤਾਂ ਸਾਨੂੰ 70 ਚੰਗਾ ਯਾਰ ਨੇ ਤਾਂ ਸਾਨੂੰ 70 ਚੰਗਾ ਯਾਰ ਦੇ ਯਾਰ ਦੇ ਨਾਲ ਨੋੜ ਮੈਂ ਸੱਚ ਨਹੀਂ ਤਾਂ ਛੱਡਿਆ ਸੱਚ ਮੇਰਾ ਬਚ ਗਿਆ ਨਾ ਜਮੀਨ ਤੇ ਪਿਆ ਮੈਂ ਖੁਸ਼ ਹਾਂ ਪੱਟ ਖੇੜਿਆ ਪੱਟ ਖੇੜਿਆ ਨਾ ਜੇ ਮੈਂ ਉੱਥੇ ਰੋਜ਼ ਪਰ ਸਾਹ ਹੁੰਦਾ ਮੈਂ ਪੱਠੀ ਜਿੱਤਪਦਾ ਸੋਲਾ ਕਰਕੇ ਉਹਨਾਂ ਦੀ ਈਰਮਾ ਦੀ ਘਟੇ ਰਹੇ ਨੋ ਵੇ ਭਾਈ ਤੁਸੀਂ ਪ੍ਰਚਾਰ ਨਾ ਕਰਿਓ। ਕਲੇ ਸਾਲਾ ਪ੍ਰਚਾਰ ਬੰਦ ਕਰ ਦੋ ਰੋਕ ਕੋਈ ਗੱਲ ਨਹੀਂ। ਇਹ ਨਹੀਂ ਹੋ ਸਕਦਾ। ਸਾਜ ਦਾ ਪ੍ਰਚਾਰ ਨਹੀਂ ਬੰਦ ਹੋ ਸਕਦਾ ਜਾਨੀ। ਸਾਚ ਨੂੰ ਛੱਡ ਕੇ ਉੱਥੇ ਰਹਿਣਾ ਮੇਰੇ ਬਾਤ ਪੱਠੀ ਜਿਹਾ ਰਹਿਣ ਦੇ ਬਰਾਬਰ ਸੀ। ਪੱਟ ਘੇੜਿਆਂ ਦਾ ਰਹਿਣਾ। ਗੱਲ ਆਏ ਤੁਸੀਂ ਕੀ ਅਸਰ ਕਰਦੇ ਹੋ? ਪਤਾ ਨੂੰ ਕੱਸਦਾ ਹੈ ਨਹੀਂ ਇਹ ਬਟਾਰਾ ਘਰੀ ਜਾਂਦੇ ਹੋ। ਕਿਤੇ ਸਿੱਖੇ ਲੋ। ਆਪਾਂ ਦਾੜੀਆਂ ਵਧਾਈ ਫਿਰਦੇ ਹੋ ਗਾਜ-ਗਾਜ ਦੀ ਇਹ ਨਾਲ ਤਾਂ ਨਹੀਂ ਪ੍ਰਭਾਵ ਪੈਂਦਾ। ਹੋਰ ਕੀ ਪੇਟ ਹੀ ਕੇ ਪਟ ਮੈਂ ਹੋਰ ਕਿਸੇ ਦੀ ਕੀ ਗੱਲ ਕਹਾਂ। ਪੇਟ ਹੀ ਕੇ ਪਟ ਵਿੱਚ ਬਚਾਵਾ। ਉਹ ਤਾਂ ਪੇੜ ਜੁ ਹੁੰਦਾ ਬਚਾਜੂ। ਉਹ ਵੀ ਪਟ ਵਿੱਚ ਹੁੰਦਾ ਜੂ। ਉੱਥੇ ਬਿਨਾ ਸਾਹ ਦੇ ਬਚਾਈ ਫਿਰਦਾ ਉਹ ਸਾਹ ਹੁੰਦਾ ਜੀ। ਬਾਹਰ ਤਾਂ ਬਚਾਉਣਾ ਕੋਈ ਗੱਲੇ ਨਹੀਂ ਉਹਦੇ ਵਾਸਤੇ। ਬਾਹਰ ਬਚਾਉਣਾ ਕੀ ਔਖਾ ਰੂ ਉਹ ਪਰਦੇ ਜੇ ਉੱਥੇ ਕੋਈ ਮੁਸੀਬਤ ਪੈ ਜਾ ਅੰਦਰ ਵੀ ਪਚਾਈ ਜਾਂਦਾ ਉਹ ਉਹਦਾ ਹੱਥ ਉੱਤੇ ਵੀ ਪੜਦਾ ਉਹ ਨਹੀਂ ਕੋ ਰੋਕ ਸਕਦਾ ਬਾਣਾ ਨੂੰ ਨਹੀਂ ਰੋਕ ਸਕਦਾ ਕੋਈ ਬਾਣਾ ਉੱਥੇ ਵੀ ਉਤਰਿਆ ਹੈ ਬਾਣਾ ਸਾਰੇ ਵਰਤ ਰਿਹਾ ਹੈ ਹੀ ਕੇ ਪਟ ਵਿਚ ਬਚਾਵਾ ਪੇਟ ਦੇ ਵਿੱਚ ਜਿਹੜਾ ਪੜਦਾ ਪੜਦਾ ਹੀ ਨਾ ਗਰਭ ਉਹਦੇ ਵਿੱਚ ਅੰਦਰ ਬਚਾ ਰਿਹਾ ਹੋਰ ਬੱਚੇ ਰੂ ਪਟ ਵਿਚ ਬਚਾਵਾ ਕਈ ਬਾਹਰ ਦੀ ਗੱਲ ਕਰਦੇ ਹੋ ਬਾਹਰ ਬਚਾਉਣ ਲਈ ਔਖਾ ਉੱਥੇ ਦੀ ਬਚਾ ਸਭ ਹੀ ਰੱਖਿਆ ਹੋਇਆ ਹਾਂਜੀ ਨੇ ਦੇਵਤੇ ਨੇ ਅਭੇਵ ਤੁਮੈ ਸਭ ਹੀ ਕਰ ਨੇ ਗੀਤ ਪਰਮੇਸ਼ਰ ਦੇ ਗਾਉਂਦੇ ਨੇ ਕੋਈ ਮੈਂ ਚੜਦਾ ਨਹੀਂ ਗਾਉਂਦੇ ਉਹ ਪਦਮਾ ਪਦ ਦੇ ਗੀਤ ਗਾਉਂਦੇ ਨੇ ਸ੍ਰੀ ਪਦਮਾ ਪਦੇ ਨਹੀਂ ਗਾ ਸਕਦੇ ਸ੍ਰੀ ਪਦਮਾ ਪਦ ਨੂੰ ਪਦਮਾ ਪਦ ਮੰਨ ਕੇ ਗੀਤ ਰੋੜੇ ਹਰਿਆਣਾ ਦੇ ਇਹ ਜਾਂ ਛੜ ਗਾਉਂਦੇ ਨੇ ਨੱਚਦੇ ਹੁੰਦੇ ਨੇ ਕਿ ਧਰਮ ਦੇ ਜਿਹੜੇ ਇਹ ਨੇ ਆਪੇ ਆ ਦੂਏ ਨੇ ਬਾਕੀ ਦੂਏ ਨੇ ਸ਼ਿਵ ਦੇਵ ਨਹੀਂ ਨਹੀਂ ਧਾਨਮ ਦੇਵ ਤਾਂ ਪੁਜੰਗ ਪੁਜੰਗ ਇੱਤਈਆ ਰੋਏ ਜਿੱਥੇ ਪੁਜੰਗ ਆਉਣੇ ਨੇ ਉਹ ਸ਼ਿਵ ਵਾਲੇ ਆਉਣੇ ਨੇ ਜੋ ਨੋ ਨੋ ਜੱਛ ਜਿਸ ਨੂੰ ਆ ਜੱਛ ਇਹ ਗੌਣ ਵਾਲੇ ਨੇ ਦੂਹੇ ਦਾਨੁਬਦੇਵ ਨੇ ਉਹ ਗੌਦੇ ਰੀ ਉੱਤੇ ਦਾਨੁਬਦੇਵ ਉਹ ਸੁਣਦੇ ਹੁੰਦੇ ਜੜਕ ਵੀ ਸੁਣਦੇ ਗੌਦੇ ਨੇ ਨਾ ਸੰਗਤਾਂ ਸੁਣਦੀ ਹੋਈ ਹੈ ਸੁਣਨ ਵਾਲੇ ਦੇਵਤੇ ਹੁੰਦੇ ਨੇ ਗੌਣ ਵਾਲੇ ਰਗੀਟਾ ਢਿਕੇ ਨੇ ਆਪਾਂ ਕਬੀਸਰ ਕਹਿੰਦੇ ਐ ਉਹ ਜੱਛ ਨੋ ਸੀ ਉਹਨਾਂ ਦਾ ਕਿੰਨਾ ਨੇ ਜੱਛ ਗੌਣ ਕਰਨ ਵਾਲੇ ਆਂ ਕੋਈ ਹੰਗ ਸੂਦਾਨਬਦੇਵ ਜੇ ਆਪਾਂ ਕਹਿੰਨੇ ਕੌਲੇ ਇਹ ਢਾਟੀ ਹੈ ਇਹ ਅਗਹੀ ਹੈ ਕਬੀਸ਼ਰ ਹੈ ਉਹਨਾਂ ਦੇ ਰੌਣੇ ਇਹ ਵਿੱਚੋਂ ਹੀ ਹੁੰਦੇ ਰਹੇ ਹੁੰਦਾ ਉਹਨਾਂ ਦੇ ਵਿੱਚੋਂ ਹੀ ਦੇਵਤਿਆਂ ਚੋਂ ਹੀ ਪਰ ਉਹ ਕੈਟਾਗਰੀ ਤਾਂ ਹੈ ਉਹਨਾਂ ਦੀ ਗਉੜ ਨਾਲ ਦੀ ਇਹ ਗੀਤ ਉਹਨਾਂ ਨੇ ਜੋੜਨੇ ਆਪੇ ਲਿਖੜਨੇ ਆਪੇ ਗਾਉਣੇ ਉਸ ਦੀ ਗੱਲ ਨਹੀਂ ਆ ਮਿਸ਼ਰੂ ਦੀ ਦੂਏ ਨੇ ਨਾ ਕੀ ਸ਼ਿਵਜੀ ਦਾ ਵਿਆਹ ਗਾਉਂਦੇ ਹੁੰਦੇ ਨੇ ਉਹ ਵੀ ਗਾਉਂਦੇ ਨੇ ਉਹਨਾਂ ਦਾ ਵਿਜੋੜਿਆ ਹੈ ਉਹ ਸ਼ਿਵਜੀ ਦੀ ਉਸਤਤੀ ਕਰਦੇ ਨੇ ਉਹ ਮਿਸ਼ਰੂ ਦੀ ਕਰਦੇ ਨੇ ਸੋਦਨਬ ਦੇਵ ਤਨੋਦੇ ਵੀ ਨਾਲੇ ਵਿੱਚ ਆਪੇ ਇਹ ਤੁਮੇ ਸਭ ਹੀ ਕਰਤੇ ਆਵੇਂ ਤੇਰੇ ਧਿਆਨ ਸਾਰਾ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਰਾਖਸ਼ ਜੀ ਉਹ ਤਾਂ ਲਗਦੇ ਨੇ ਇਹ ਨਾਲੇ ਰੱਬ ਨੂੰ ਨਹੀਂ ਮੰਨਦੇ ਉਹ ਵਸ ਦੇਖੋ ਰਾਖਸ਼ ਜੀ ਮੰਨਦੇ ਨੇ ਕਿਸੇ ਨਾ ਕਿਸੇ ਰੂਪ ਚ ਪਰਮੇਸ਼ਰ ਨੂੰ ਉਹ ਚਾਹੇ ਕੁਦਰਤ ਕਹੇ ਮੰਨਦੇ ਨੇ ਕੁਝ ਵੀ ਮੰਨਦੇ ਪਰ ਉਹ ਜਿਹੜੇ ਇਹ ਨਾਲਾ ਤਰੀਕਾ ਹੈ ਜਿਹਨੂੰ ਇਹ ਮੰਨਦੇ ਨੇ ਪੂਰਤੀ ਨੂੰ ਆ ਉਹ ਉਹ ਮੰਨਦੇ ਉਹ ਕਹਿੰਦਾ ਕੋਈ ਗੈਬੀ ਸ਼ਕਤੀ ਹੈ ਜਿਵੇਂ ਮੁਸਲਮਾਨ ਕਹਿੰਦੇ ਨੇ ਪੂਰਦੇ ਦਾ ਕੋਈ ਹੈ ਨਹੀਂ ਕੋਈ ਗੈਬੀ ਸ਼ਕਤੀ ਹੈ ਅੱਲਾ ਉਹਦੇ ਮੁਰੇ ਅੜਦੇ ਨੇ ਬਗਦੇ ਨੇ ਬਗਦੇ ਵੀ ਨੇ ਬਗਦੇ ਨੇ ਲੋ ਐਵੇਂ ਬਗਦੇ ਨੇ ਤੇ ਬਗਦੇ ਪਰ ਉਹ ਜਾਣਦੇ ਨਹੀਂ ਹਲੂ ਇਹ ਕਹਿੰਦੇ ਜਾਣਦੇ ਨਹੀਂ ਜੀ ਤੇ ਬਗਦੇ ਨੇ ਉਹਦਾ ਜੋ ਜੀਤੇ ਬਗਦੇ ਨੇ ਸਹੀ ਹੈ ਚਾਹੇ ਜਾਣਦੇ ਨਹੀਂ ਇਹਨਾਂ ਨੇ ਡੁਪਲੀਕੇਟੇ ਬਣਾ ਲੈਣਾ ਘਾ ਜਾਣਰਾਂ ਨਾਲ ਵਰਕਾ ਹੀ ਪਾਣਦਾ ਜਾਣਰ ਦੀ ਲੋੜੇਰੀ ਉਹਨੂੰ ਜਨੂਨ ਦੀ ਲੋੜ ਤਾਂ ਹੈ ਨਾ ਇਹ ਤਾਂ ਖਾਂਡ ਕੇ ਜਨੂਨ ਦੀ ਲੋੜ ਆਕਾਸ਼ ਪਤਾਲ ਰਸਤਲ ਸਰਨ ਆਵੇਂ ਭੂਪ ਦੇ ਉੱਤੇ ਆਕਾਸ਼ ਪਤਾਲ ਜਿੱਦੇ ਵੀ ਜੀਵ ਨੇ ਜੱਛ ਭਜੰਗ ਸਰਨ ਆਵੇਂ ਸਾਰੇ ਤੇਰੇ ਅੱਗੇ ਤੇਨੂੰ ਅੱਗੇ ਸਾਰੇ ਨੂੰ ਵਸ਼ਕਾਰ ਕਰਦੇ ਨੇ ਤੇਰੇ ਅੱਗੇ ਸਾਰੇ ਝੁਕਦੇ ਨੇ ਪਾਇ ਸਕੈ ਨਹੀਂ ਪਾਰ ਪ੍ਰਭਾ ਓਨ ਕੋ ਨੇਤ ਹੀ ਨੇਤਾ ਬੇਦ ਬਤਾਵਾ ਇਹ ਜਿਹੜੇ ਬੇਦ ਨੇ ਇਹ ਦੱਸਦੇ ਨੇ ਵੀ ਜਿਹੜੇ ਗਿਆਨਵਾਨ ਨੇ ਜਿਹਦੇ ਵੀ ਗਿਆਨਵਾਨ ਨੇ ઋષਿਪੂਰੀ ਹੋਏ ਤੇਰੀ ਪ੍ਰਭਾ ਜਿਹੜੀ ਹੈਗੀ ਆ ਨਾ ਤੇਰਾ ਪ੍ਰਭਾਵ ਕਿਵੇਂ ਪੈ ਰਿਹਾ ਸੰਸਾਰ ਤੇ ਉੱਤੇ ਨੇਤ ਹੀ ਨੇਤਾ ਬੇਦ ਬਤਾਵਨ ਇਹ ਕਿੰਨਾ ਕਪਉ ਕਿੰਨਾ ਉਹਦਾ ਪ੍ਰਭਾਵ ਹੈ ਥੋੜਾ ਇਹਦਾ ਅੰਦਾਜ਼ਾ ਕੋਈ ਨਹੀਂ ਕਿਸੇ ਨੂੰ ਤੇਰੇ ਪ੍ਰਭਾਵ ਦਾ ਤੇਰੀ ਪ੍ਰਭਾ ਜਿਹੜੀ ਹੈ ਤੇਰੀ ਜਿਹੜੀ ਸ਼ਕਤੀ ਹੈ ਉਹਦਾ ਕੋਈ ਅੰਦਾਜ਼ਾ ਨਹੀਂ ਲੱਗਦਾ ਹੈ ਨਾਲੂ ਦੇ ਇਸ ਕਰਕੇ ਬੇਅੰਤ ਬੇਅੰਤ ਕਹੀ ਜਾਂਦੇ ਖੋਜ ਥਕੇ ਸਭ ਹੀ ਖੁਜੀਆ ਸਾਰੇ ਖੋਜੀ ਖੋਜ ਕੇ ਥੱਕ ਗਏ ਸੁਰ ਹਾਰ ਪਰੇ ਹਰ ਹੱਥ ਨਾ ਦੇਵਤੇ ਵੀ ਹਾਰ ਕੇ ਬਹਿ ਗਏ ਥੱਕ ਗਏ ਕੋਈ ਪਤਾ ਨਹੀਂ ਮਿਲਦਾ ਜਾਂ ਲੱਗੂ ਦੇਖੀ ਜਊ ਹਰ ਹੱਥ ਨਾ ਹਰ ਹੱਥ ਨਹੀਂ ਆਇਆ ਕਿਸੇ ਤੇ ਔਂ ਨਾਰਦ ਸੇ ਚਤੁਰਾਨਨ ਸੇ ਰੁਮਨਾਰਿਕ ਸੇ ਸਭ ਹੂੰ ਮਿਲ ਗਾਇਓ ਨਾਰਦ ਸੇ ਚਤਰਾਨਾ ਸੇ ਨਾਰਦ ਨਾਰਦ ਬੁਰੀ ਚਤਰਾਨਨ ਕਹਿੰਦੇ ਨੇ ਰੂਪ ਬ੍ਰਹਮਾਨ ਰੁਮਨਾਰ ਚਾਰ ਚਾਰ ਪ੍ਰਕਾਰ ਦਾ ਗਿਆਨ ਜਿਹੜਾ ਚਾਰ ਪ੍ਰਕਾਰ ਦਾ ਗਿਆਨ ਹੈ ਨਾ ਇਹਨੂੰ ਚਤਰਾ ਚਤਰਾਨ ਨੂੰ ਕਹਿੰਦੇ ਹਨ ਹਾਂ ਰੁਮਨਾਰਿਕ ਰੁਬਨਾਰਿਕ ਇੱਕ ਰਿਸੀ ਬੁਦੀ ਤਾਂ ਦੁਹੇ ਵੀ ਹੋਏ ਨੇ ਪਰ ਇਹ ਕੁਝ ਐਸੇ ਵੀ ਰਿਸ਼ੀ ਹੋਏ ਨੇ ਜਿਹੜੇ ਪਰਮੇਸ਼ਰ ਦੇ ਗੀਤ ਗਾਉਂਦੇ ਨੇ ਪਰ ਸਹੀ ਨਹੀਂ ਗਾ ਸਕਦੇ ਜਿਨਾ ਜੋ ਗੁਰਦਰ ਕਵੀ ਰਾਏ ਵਗਾਰਾ ਉਹ ਆਏ ਨੇ ਨਾ ਬਖੰਡ ਬਾਤੇ ਦਾ ਖੰਡ ਕੀਤਾ ਪਰ ਪੂਰਾ ਗਿਆਨ ਨਹੀਂ ਸੀ ਉਹਨਾਂ ਕੀ ਬੁਰੀ ਵੀ ਐਜੇ ਹੋਏ ਨੇ ਰਮਨਾਰ ਇੱਕ ਸੇ ਰਹੇ ਨੇ ਕੋਸ਼ਿਸ਼ ਕਰਦੇ ਰਹੇ ਨੇ ਜਿਹੜਾ ਗਾਦਿਓ ਗਾਉਂਦੇ ਰਹੇ ਨੇ ਗਾਇਨ ਕਰਦੇ ਰਹੇ ਨੇ ਪਰ ਉਹ ਪੂਰਾ ਕਲੀਅਰ ਨਹੀਂ ਸੀ ਉਹਨਾਂ ਨੂੰ ਭੇਦ ਲਖਿਓ ਸਭ ਹਾਰ ਪਰੇ ਹਰ ਹਾਥ ਨਾ ਆਇਓ ਬੇਦਕ ਤੇਵ ਨੇ ਵੀ ਇਹ ਕਹਿਤਾ ਵੀ ਭੇਦ ਸਾਨੂੰ ਨਹੀਂ ਬਿਲਿਆ ਸਭ ਹਾਰ ਪਰੇ ਹਰ ਹਾਥ ਨਾ ਆਇਓ ਸਾਰੇ ਹਾਰ ਕੇ ਥੱਕੇ ਬੇਅਲਤ ਬਿਆਨ ਤੇ ਸਵਾਹਰ ਕੁਛ ਵੀ ਕਹਿ ਸਕਦੇ ਹਰ ਹਾਥ ਨਾ ਆਇਓ ਹਰਦੀ ਸਮਝ ਨਹੀਂ ਆਈ ਹਰ ਹਾਥ हर ਆਇਆ ਹਰਦੀ ਸਮਝ ਨਹੀਂ ਆਈ ਬਾਹਰੋਂ ਨਹੀਂ ਹਰਦੀ ਸਮਝ ਆਉਣੀ ਸੀ ਅਸਰ ਚੰਦਰੋ ਆਪੇ ਹਰਸੀ ਇਹ ਇਹ ਜੋਨੇ ਬਾਰੋਂ ਕੋਈ ਤੇ ਨਾ ਲੁਆਇ ਰਹੇ।ਾਕੀ ਸਭ ਕੋ ਠੀਕ ਹੈ ਲੱਭਦੇ ਨ ਬਾਰੋਂ। ਹੱਥ ਕੇ ਮੈਂ ਅਜ ਬਾਰੋਂ। ਜੇ ਹਰ ਆਪੇ ਵਿਰਤ ਕੀ ਹੁਲ। ਜੇ ਆਪੇ ਹਰ ਇਹ ਆਪਣੇ ਫਿਰ ਹੱਥ ਕੀ ਹੁਣਾ ਵਿੱਚ। ਹਰ ਦੀ ਸਮਝਾਉਣੀ ਸੀ ਔਣੀ ਸੀ ਅੰਦਰੋਂ ਸਮਝਾਉਦੇ ਬਹਿ ਕੇ। ਸਮਝਦੇ। ਕਾਇ ਸਕੇ ਨਹੀਂ ਪਾਰ ਉਮਾਪਤੀ। ਸਿੱਧ ਸਨਾਤ ਸੰਨਤਨ ਤੇ ਆਇਓ ਉਹ ਬਾਬਾ ਪਤੀ ਜੀ ਨੂੰ ਕਹਿੰਦੇ ਨੇ ਵੀ ਉਹ ਪਰਮਾ ਪਤੀ ਜਾਈ ਨੂੰ ਹੈ ਨਾ ਉਹ ਬਾਬਾ ਪਤੀ ਤਾਂ ਸ਼ਿਵ ਜੀ ਦਾ ਨਾਮ ਹੈ ਸੱਚ ਉਹ ਵੀ ਯਾਰਾ ਪਾਰ ਨਹੀਂ ਪਾ ਸਕਿਆ ਉਹ ਵੀ ਨਹੀਂ ਕਿਸੇ ਕੱਡੇ ਲੱਗਿਆ ਬਥੇ ਨਹੀਂ ਸਮਾਦੀ ਲਾਈ ਹੈ ਉਹਨੇ ਸਿੱਧ ਸਨਾਤ ਤੇ ਆਇਓ ਆਹੋ ਜਿੱਦਾਂ ਨੇ ਨਾ ਥਾਣਾਂ ਆਲੇ ਲੜਕੇ ਤੇ ਆਇਓ ਪਤਾਲਿਕਾ ਨਿਕ ਨਾ ਧਿਆਨ ਜੋੜੇ ਰਿਹਾ ਉਹਨਾਂ ਨੇ ਕਿੰਨਾ ਚਿਰ ਤੱਕ ਅਨੰਤ ਕਾਲ ਤੱਕ ਧਿਆਨ ਜੋੜ-ਜੋੜ ਕੇ ਥੱਕ ਗਏ ਧਿਆਨ ਤਰੋ ਤੇ ਕੋ ਮਨ ਮੈਂ ਉਹਨਾਂ ਨੂੰ ਵਲਿਆ ਕੁਛ ਨਹੀਂ ਧਿਆਨ ਚ ਨਹੀਂ ਆ ਸਕਿਆ ਉਹਨਾਂ ਦੇ ਸਮਝ ਨਹੀਂ ਆਈ ਸਭ ਜੇ ਰਹੇ ਸੀ ਕਿ ਧਿਆਨ ਲਾ ਕੇ ਵੀ ਕੀ ਚੀਜ਼ ਹੋਰਦਾ ਜੇ ਲਾ ਰਹੇ ਸੀ ਧਿਆਨ ਤਰੋ ਤੇ ਕੋ ਮਨ ਮੈਂ ਜੇ ਕੋ ਅਮਿਤੋਜ ਸਵੇ ਜਗ ਛਾਇਓ ਤਾਂ ਧਿਆਨ ਧਰ ਧਰਨਾ ਧਿਆਨ ਥੱਲੇ ਨੂੰ ਧਰਨ ਅਸਲ ਵਿੱਚ ਤੇ ਜੋ ਕੁਝ ਹੋ ਰਿਹਾ ਹੈ ਧਿਆਨ धरो ਤੇ ਕੋ ਮਨ ਮੈਂ ਮਨ ਚੋ ਦਾ ਧਿਆਨ धरो ਜੇ ਕੋ ਅਮਤੋਜ ਸਭੇ ਜਗ ਛਾਇ ਜਿਹਦੇ ਜਿਹਦੀ ਰੋਸ਼ਨੀ ਸਾਰੇ ਸੰਸਾਰ ਫੈਲੀ ਹੋਈ ਹੈ ਜਿਹਦੀ ਰੋਸ਼ਨੀ ਨਾਲ ਸਾਰਾ ਸੰਸਾਰ ਚੱਲਦਾ ਸਾਰੇ ਸੰਸਾਰ ਰੋਸ਼ਨੀ ਈ ਤੇ ਇਹ ਚੱਲੂ ਚੱਲਣ ਹੋਏ ਉਹਨੂੰ ਲੱਭੋ ਕੌਣ வேத ਪ੍ਰਾਣ ਕਤੇਬ ਅਬੀ ਇਹ ਨਿਰਪਾਣ ਸਭੇ ਪਛਾਰੇ ਵੇਦ ਕਹਿ ਲੋ ਪ੍ਰਾਨ ਕਹਿ ਲੋ ਕਿਤੇਬ ਕਹਿ ਲੋ ਕੁਰਾਨ ਕਹਿ ਲੋ ਨਿਰਪਾਣ ਸਭੇ ਪਛਾਰੇ ਜਿਹੜੇ ਰਾਜੇ ਸਭੇ ਪਛਾਰੇ ਸਾਰੇ ਹਾਰ ਗਏ ਕੋਈ ਜੱਗ ਕਰਦਾ ਕੋਈ ਕੁਛ ਕਰਦਾ ਹੁੰਦਾ ਅਸਲ ਦੇ ਵਿੱਚ ਜਿਹੜੇ ਇਹਨਾਂ ਦੇ ਗੁਰੂ ਹੁੰਦੇ ਨੇ ਲੋ ਧਰਮ ਦੇ ਜਿਹੜੇ ਰਾਜੇ ਨੂੰ ਕਹਿੰਦੇ ਨੇ ਗੁਰੂ ਵੀ ਰਾਜੇ ਦੀ ਸਿਰਸਿ ਆਜਤ ਜਿਹੜੇ ਕੁਰਾਨ ਵਾਲੇ ਸੀ ਨਾ ਕੁਰਾਨ ਵਾਲੇ ਜਿਹੜੇ ਇਹਨਾਂ ਦੇ ਹੈੱਡ ਹੁੰਦੇ ਸੀ ਉਹ ਰਾਜੇ ਬਣਦੇ ਹੁੰਦੇ ਸੀ ਰਾਜਵਾਦੀ ਲਾਈਕ ਹੋ ਗਿਆ ਨਾ ਜਿਹੜਾ ਇਹਨਾਂ ਦਾ ਲੀਡਰ ਹੁੰਦਾ ਸੀ ਨਾ ਉਸ ਨੂੰ ਬੋਲਦਾ ਉਹ ਹੀ ਰਾਜਾ ਪਹਿਲਾਂ ਮਬੂਸਾ ਸਾਬਦਾ ਰਾਜ ਹੋਇਆ ਫਿਰ ਉਹ ਤੋਂ ਬਾਅਦ ਉਹ ਪਾਲੀਆਂ ਦਾ ਉਹਦੇ ਪਾਲ ਦੋ ਤੇ ਕਹਿੰਦੇ ਸੱਤਾ ਰਾਜ ਹੁਣ ਚਾਹੀਦਾ ਭਤੀਜਾ ਕਹਿੰਦਾ ਮੇਰਾ ਚਾਹੀਦਾ ਮਾਰਿਆ ਉਹਨਾਂ ਨੇ ਰਾਜਵਾਦ ਤੇ ਮਾਰਿਆ ਜਿਹੜਾ ਉਹ ਨਰਦਾਬਾਦ ਤੋਂ ਗੱਦੀ ਦਾ ਹੋ ਜਾਂਦਾ ਸੀ ਜਦੋਂ ਸਾਡੀ ਗੱਦੀਆਂ ਨਾਲੇ ਰਾਜ ਦਾ ਦੋ ਇਕੱਠੇ ਸੀ ਤਾਂ ਕਹਿੰਦੇ ਦਰਪਾਨ ਸਾਡੇ ਤਾਂ ਰਾਜਾ ਦੀਦੇ ਨਾਲ ਹੋਇਆ ਗੱਦੀ ਦੇ ਕੋਈ ਉਹਨਾਂ ਦੇ ਗੱਦੀ ਦੇ ਨਾਲ ਰਾਜ ਜੁੜਿਆ ਹੋਇਆ ਦੂਜਾ ਬਤਲਦੇ ਗੱਦੀ ਦੇ ਨਾਲੇ ਰਾਜ ਜੁੜਿਆ ਹੈ ਦੇਖੋ ਰਾਮਚੰਦਰ ਦੀ ਪੂਜਾ ਹੋ ਰਹੀ ਹੈ ਰਾਮਚੰਦਰ ਰਾਜਾ ਵਰਤੂ ਵੀ ਰਾਜ ਨਹੀਂ ਲੈ ਰਿਹਾ ਕਹਿੰਦਾ ਮੇਰੇ ਨਾਲ ਇਹ ਕਾਬਲ ਹੈ ਵਰਤੂ ਰਾਜਵੰਦ ਲੈ ਨਹੀਂ ਰਿਹਾ ਉਹ ਜਿਹੜਾ ਅਛਾਈ ਹੈ ਧਰਮਕ ਆਦਮੀ ਹੈ ਸੇਵਸਤ ਆਦਮੀ ਉਹਦੇ ਨਾਲੇ ਰਾਜ ਦਾ ਤਖਤ ਜੁੜਿਆ ਹੋਇਆ ਉਹੀ ਉਸੇ ਦਾ ਹੱਕ ਹੈ ਇੱਥੇ ਬੈਠਣ ਕਾਰਮ ਬਨੋ ਨੀ ਰਾਹ ਚਲਿਆ ਤਾਂ ਹੀ ਜੱਤੂ ਚਲਿਆ ਹੋਇਆ ਤਰਮਕਾਰ ਬਹੀ ਰਹਤੇ ਬੈਠੇ ਤਖਤ ਬਹਿ ਤਖਤ ਦੇ ਲਾਇਕ ਇਹ ਪੇਦ ਨਾ ਪਾਇ ਸਕੇ ਉਹ ਅਨਪੇਦ ਕਿਸੇ ਨੇ ਹੈਗਾ ਕਿਸੇ ਨੇ ਉਹਦਾ ਪੇਦ ਪਾਇਆ ਵੀ ਹੈ ਨਹੀਂ ਪੇਦ ਨਾ ਪਾਇ ਪਾਇਆ ਜਾ ਸਕਦਾ ਪੇਦ ਕੋਈ ਨਹੀਂ ਪਾਇਆ ਜਾ ਸਕਦਾ ਤਾਂ ਕਿ ਆ ਭੇਦ ਇਸ ਕਰਕੇ ਹਨ ਭੇਦ ਆ ਹਨ ਭੇਦ ਬੜੇ ਦੁਖੀ ਹੋਗੇ ਲੋਕ ਲਬ ਲਬ ਕੇ ਦੁਖੀ ਹੋਗੇ ਖੇਦ ਹੋਣਾ ਦੁਖੀ ਹੁਣ ਹਨ ਛੇਦ ਪੁਕਾਰੇ ਥੱਕ ਗਏ ਥੱਕ ਗਏ ਬਤਨ ਨਰਾਸ਼ ਹੋਗੇ ਕਹਿ ਲੋ ਹਨ ਪੁਕਾਰੇ ਇਹ ਕਹਿ ਕੇ ਕਿ ਤੂੰ ਛੇਦਾਂ ਤੇਰੀ ਉਭੜਿਆਈ ਕਰ ਕਰਕੇ ਥੱਕ ਕੇ ਪਰ ਲਈ ਕਿਸੇ ਨੂੰ ਮਿਲਿਆ ਨਹੀਂ ਅਨਛੇਦ ਪੁਕਾਰੇ ਅਨਛੇਦ ਪੁਕਾਰ ਪੁਕਾਰ ਕੇ ਰਾਗ ਨਾ ਰੂਪ ਨਾ ਰੇਖ ਨਾ ਰੰਗ ਨਾ ਸਾਖ ਨਾ ਸੋਗ ਨਾ ਸੰਗਤ ਹਾਰੇ ਆ ਦੇ ਹੁਣ ਇੱਕ ਗੱਲ ਹੋਰ ਕਹਿ ਦਿੱਤੀ ਸੰਗਤ ਹਾਰੇ ਕਹਿੰਦੇ ਰੇਖ ਨਹੀਂ ਉਹ ਤਾਂ ਤੁਹਾਡੇ ਨਾਲ ਬਾਹਰ ਨਹੀਂ ਆ ਕਿਤੇ ਸੰਗਤ ਹਾਰੇ ਅਖੀਰ ਚੌਰੇ ਕੋ ਦੱਸ ਗਏ ਉਹ ਜਿਹਨੂੰ ਹੁਣ ਤੇ ਇਜ਼ਾਰਾ ਗਾਇਨ ਕੀਤਾ ਨਾ ਪਿੱਛੇ ਤੇ ਲੈ ਕੇ ਸ਼ੁਰੂ ਦਾ ਲੈ ਗੇ ਜਿਹਦਾ ਸਾਰਾ ਕਥਾ ਕੀਤੀ ਹੈ ਉਹ ਸੰਗ ਤੇ ਆ ਰਿਹਾ ਤੁਹਾਡੇ ਨਾਲ ਹੈ ਉਹ ਪ੍ਰਾਤਮਾ ਹੀ ਹੈ ਉਹਦੇ ਜਾਣਨ ਵਾਲੇ ਅੰਦਰ ਰਾਗ ਨਾ ਉਹ ਇਹਦਾ ਅੰਤਰਾ ਦੋ ਦੀ ਆਵਾਜ਼ ਹੈ ਰੂਪ ਨਾ ਰੰਗ ਨਾ ਸਾਖ ਨਾ ਸੰਗ ਤੇ ਤੁਹਾਡੇ ਨਾਲ ਹੀ ਆ ਉਹ ਇਹਦਾ ਤੁਹਾਡੇ ਨਾਲ ਹੈ ਦੀ ਸਾਰੀ ਗੱਲ ਕਰੀ ਉਈ ਰੋਲੇ ਰੋਲੇ ਸੰਤ ਤਿਆਰ ਆਦ ਅਨਾਦ ਦੀ ਆਗਾਦ ਅਪੇਖ ਅਦਵੈਖ ਜਪਿਓ ਤੈਨਹੀ ਕੋਤਾਰੇ ਕੋਈ ਮੁੜ ਕੇ ਤੂੰ ਪਿਆ ਜਾ ਕੋ ਕਹਤਾ ਔਰ ਆਦ ਅਨਾਦ ਆਗਾਦ ਅਪੇਖ ਅਦਵੈਖ ਜਪਿਓ ਤੈਨਹੀ ਆਦ ਹੈ ਸਭ ਦਾ ਆਦ ਹੈ ਜਿਹਨੇ ਜਪ ਲਿਆ ਅਨਾਦ ਦੀ ਅਨਾਦੀ ਹੈ ਅਨਾਦੀ ਆਪਣਾ ਕੋਈ ਆਦ ਨਹੀਂ ਸ੍ਰੀ ਸਿਸਿਦਾਤਾ ਹੈ ਆਪਣਾ ਆਧਰੀ ਹੋਰ ਕੋਈ ਅਨਾਦੀ ਹੈ ਅਗਾਦ ਅਗਾਦ ਹੈ ਬੁੱਢੀ ਤੋਂ ਪਰੇ ਹੈ ਆਪੇ ਵੇਖ ਆਪੇ ਕੋਈ ਹੈ ਨਹੀਂ ਸਰੀਰ ਹੈ ਨਹੀਂ ਅਦਵੇਖ ਉਹਨੂੰ ਸਮਝ ਲੈ ਜੀ ਚਾਹੇ ਦੇ ਨੇ ਉਹਨੇ ਸਾਰੇ ਆਪਣੇ ਕੋਲ ਉਤਾਰਤੇ ਉਹਨੇ ਆਪਣੀ ਕੋਲ ਉਤਾਰ ਲਿਆ ਸਾਰੇ ਕੋਲੂ ਦੱਸ ਦੂਗਾ ਫਿਰ ਵੀ ਆਹ ਹੁੰਦਾ ਕੀ ਹੈ ਉਹ ਸਾਰਾ ਰਾਜ ਦਾਦੂ ਉਤਰ ਕੇ ਸਾਰੇ ਜਿਹੜੇ ਸਮਝ ਲੈਣਗੇ ਉਹ ਤਰ ਜਾਣਗੇ ਜਿਹਦੇ ਜਾਣ ਲਣਗੇ ਉਹ ਤਰ ਜਾਣਗੇ ਤੀਰਥ ਕੋਟ ਕੀਏ ਇਸ਼ਨਾਨ ਤੀਰਥ ਕੋਟ ਕੀਏ ਇਸ਼ਨਾਨ ਧੀਏ ਬੋਧਾਨ ਕੀਏ ਇਸ਼ਨਾਨ ਕਰੋੜਾਂ ਤੀਰਥਾਂ ਦੇ ਇਸ਼ਨਾਨ ਕੀਤੇ ਹੋਣ ਚਾਹੀਏ ਧੀਏ ਬੋਧਾਨ ਬੜੇ ਦਾਨ ਵੀ ਦਿੱਤੇ ਮਹਾ ਵਰਤ ਧਾਰ ਬੜੇ ਬੜੇ ਵਰਤ ਵੀ ਬਹੁਤ ਰੱਖੇ ਵਾਹ ਵਰਤ ਰੱਖੇ ਕਈ ਕਈ ਦਿਨ ਦੇ ਵਰਤ ਰੱਖੇ ਲਗਾਤਾਰ ਅਰੋਜੇ ਵੀ ਤਾਂ ਰੱਖਦੇ ਨੇ ਵੀ ਦਿਨੋ ਰੱਖਦੇ ਨੇ ਵਿਚਾਰੇ ਔਖੀਆਂ ਵੀ ਨਾ ਗਰ ਵੀ ਨਾ ਹੰਦਬ ਬਹੁਤ ਔਖਾ ਹੋ ਜਾਂਦਾ ਹੈ ਚਾਹੇ ਮਰ ਜਾਣ ਪਾਣੀ ਨਹੀਂ ਪੀਂਦੇ ਹੋ ਦੇਸ ਫਰਿਓ ਕਰ ਭੇਸ ਤਪੋ ਧਨ ਧਨ ਕੇ ਸਦਰੇ ਪਿਆਰੇ ਦੇਸ ਫਰਿਓ ਕਰ ਭੇਸ ਦੇਸ ਫਰਿਓ ਕਰ ਭੇਸ ਤਪੋ ਧਨ ਕੇ ਸਦਰੇ ਨਾ ਮਿਲੇ ਧਨ ਕੇ ਸਦਰੇ ਨਾ ਮਿਲੇ ਹਰ ਪਿਆਰੇ ਤਨ ਕੇ ਸਦਰ ਤਨ ਦੇ ਬਾਤ ਤੇ ਸਦਰ ਤਨ ਦੀ ਇੱਛਾ ਸੀ ਤਲਦੀ ਮਾਇਆ ਦੀ ਦੇਰ ਦੇਰ ਤੇ ਫਿਰਦਾਰਾ ਕਬਦਾ ਤਸਵੀਰ ਦਾ ਭੇਸ ਬਣਾ ਕੇ ਸੰਤ ਦਾ ਭੇਸ ਤਾਂ ਨਾ ਇਹ ਚਾਹ ਸੀ ਕਿ ਚਾਹਦੀ ਤਨ ਦੀ ਦੌਲਤ ਦੀ ਜਿਵੇਂ ਸੰਤ ਤੋਂ ਫਿਰਦੇ ਨੇ ਢਟ ਢਟ ਸਦਰ ਕੀ ਸੀ ਤਨ ਕੇ ਸਦਰੇ ਪੈਸਿਆਂ ਕਰ ਬڑے بڑے ਡੇਰੇ ਬਣਾਏ ਨੇ ਆ ਕੇ ਇਕੱਠੇ ਕਰਕੇ ਕੋਈ ਸਾਚੀ ਖੰਡਾ ਵੀ ਤੁਸੀਂ ਇੱਥੇ ਡੇਰਾ ਬਣਾ ਰਹੇ ਹੋ ਇੱਥੇ ਰਹਿਣਾ ਤੁਸੀਂ ਉਹ ਡੇਰਾ ਤੁਸੀਂ ਕਾਸਮ ਯਾ ਤਾਂ ਤੁਸੀਂ ਰਹਿਣਾ ਚਾਹੁੰਦੇ ਹੋ ਇੱਥੇ ਹੀ ਇੱਥੇ ਨਹੀਂ ਬੋਲਾ ਚਾਹ ਰਹਿਣ ਦੇਣਾ ਤੁਹਾਨੂੰ ਲੜਾਈ ਪੜਾਈ ਜਰੂਰ ਛੜਪੂਗੀ ਚੇਲਿਆਂ ਚ ਜਾਇਦਾਦ ਬਣਾ ਲਓ ਤਾਂ ਲੜਾਈ ਛੜਪੂ ਲੜਾਈ ਛੜਦੀ ਨੇ ਪਿਛੇ ਹੋਰ ਕੀ ਹੁੰਦਾ ਇੱਥੇ ਤਨਕੇ ਸਦਰੇ ਨੂੰ ਮਿਲੇ ਹਰ ਪਿਆਰੇ ਉਹ ਜਿਹੜਾ ਲੈ ਕੇ ਚੇਲਿਆਂ ਨੂੰ ਦੇਣਾ ਤਾਂ ਹਰ ਪਿਆਰਾ ਉਹ ਤਾਂ ਮਿਲਿਆ ਨਹੀਂ ਜੋ ਉਹਨਾਂ ਨੂੰ ਦੇਣਾ ਸੀ ਉਹ ਤਾਂ ਮਿਲਿਆ ਨਹੀਂ ਹੋਰੇ ਸੇ ਆਪਾਂ ਛੇੜਦਾ ਉਹਨੂੰ ਮੈਂ ਧਾਰੀ ਬਣਾਤਾ ਸੰਤ ਕਾਲਾ ਬਣਾਦਾ ਜੁੱਤਾ ਉਹਨਾਂ ਨੂੰ ਮੈਂ ਧਾਰੀ ਬਣਾਤਾ ਇਹ ਦੋ ਲਾਭ ਹੋਰ ਕਰ ਕੀ ਰਹੇ ਨੇ ਹੋਰ ਕੀ ਕਰ ਲੈ ਜਿਹਨੇ ਡੇਰੇ ਨੇ ਕੀ ਕਰ ਰਹੇ ਇਹੋ ਕੋ ਕਰ ਰਹੇ ਤਨਕੇ ਸਦਰੇ ਨਵਲੇ ਯਾਰ ਪਿਆਰੇ ਜਨਨਾ ਜੇ ਤਨ ਦੀ ਇਛਾ ਦਰ ਹੈ ਹਰ ਪਿਆਰਾ ਨਹੀਂ ਮਿਲ ਸਕਦਾ ਮਾਇਆ ਦੀ ਦਾ ਭੁੱਖ ਦਾ ਮਾਇਆ ਦੇ ਨਾਮ ਦੀ ਤਾਂ ਭੁੱਖ ਜਾਗੀ ਹੋਈ ਨਹੀਂ ਸੱਚੇ ਨਾਮ ਦੀ ਤਾਂ ਭੁੱਖ ਲੱਗੀ ਹੋਈ ਨਹੀਂ ਭੁੱਖ ਤਾਂ ਮਾਇਆ ਦੀ ਹੈ ਪੇਸ ਬਣਾ ਲਿਆ ਸਤ ਦਾ ਤੁਰਾ ਫਰਦਾ ਬਾਹਰ ਇੱਛਾ ਕੀ ਅਛਾ ਮਾਇਆ ਦੀ ਤਨ ਕੇ ਸਤੇਰੇ ਨਾ ਮਿਲੇ ਯਾਰ ਪਿਆਰੇ ਜਿਨ੍ਹਾਂ ਦੇ ਅੰਦਰ ਤਰਨ ਤਲਦੀ ਸੱਦਰ ਰਹੀ ਹੈ ਉਹਨੂੰ ਹਰ ਪਿਆਰਾ ਨਹੀਂ ਮਿਲਿਆ ਕਿਸੇ ਵੀ ਸੰਤ ਨੂੰ ਨਹੀਂ ਮਿਲਿਆ ਜਿਹੜੇ ਆਏ ਹੋਏ ਨੇ ਮਾਇਆ ਧਾਰੀ ਜੇ ਹੁਦਾ ਦਾ ਉਹਨਾਂ ਦੇ ਚੇਲਿਆਂ ਕੋਲ ਦੱਸ ਜਾਂਦੇ ਸਮਝਾ ਜਾਂਦੇ ਵੀ ਆਹ ਹੁੰਦੀ ਹੈ ਗੱਲ ਇਹ ਜੋ ਮਰਜੀ ਕਹੀ ਜਾਣ ਵਾਹਪੁਰ ਜੋ ਮਰਜੀ ਝੂਠ ਬੋਲੀ ਜਾਣ ਗੁਰਬਾਣੀ ਦੇ ਵਿੱਚੋਂ ਸਾਬਤ ਕਰਨ ਜਿਹੜੀ ਗੱਲ ਨੂੰ ਅਸੀਂ ਮੰਨਦੇ ਉਹ ਜੋ ਸਾਬਤ ਕਰਨ ਵੀ ਕੀ ਤੋਂ ਉਹਨਾਂ ਕੋ ਗਿਆਨ ਸੀ ਕਿ ਉਹਨਾਂ ਨੂੰ ਗਰਮਾਦਾ ਗਿਆਨ ਸੀ ਤੁਹਾਨੂੰ ਦਿੱਤਾ ਕੀ ਉਹਨਾਂ ਨੇ ਹਾਂ ਇਹ ਦਿੱਤਾ ਵੀ ਲੋਕਾਂ ਨੂੰ ਬੇਵਕੂਫ ਬਣਾ ਕੇ ਉਹਨਾਂ ਦੀ ਜੇਬ ਕਮੀ ਘਟਣੀ ਤੇ ਇਹ ਦਿੱਤਾ ਇਹ ਕੋਲ ਤੁਹਾਡੇ ਕੋਲ ਹੈ ਕੇਲੇ ਹੁੜਬੀ ਨਾ ਜੇ ਹੁੜਬੀ ਉਹਨਾਂ ਦੀ ਤੁਹਾਡੇ ਹੱਥ ਤੁਹਾਡੇ ਜੇ ਉਹਨਾਂ ਦੀ ਜੇ ਜਿੱਦਾਂ ਤੁਸੀਂ ਮੰਗ ਲਓਗੇ ਉਹਨਾਂ ਦੇ ਦੇ ਦੇਣੇ ਪੈਣਗੇ ਜੇ ਉਹਨਾਂ ਦੀ ਹੱਥ ਤੁਹਾਡਾ ਇਹ ਗੱਲ ਹੈ ਇਹ ਵਸਤੀ ਤੁਹਾਡੇ ਕੋਲ ਹੈ ਚਾਹੇ ਉਹਨਾਂ ਨੂੰ ਡਰਾ ਕੇ ਚਾਹੇ ਕੁਝ ਕਰਕੇ ਚਾਹੇ ਝੂਠ ਬੋਲ ਕੇ ਚਾਹੇ ਉਹਨਾਂ ਨੂੰ ਵੋਚਨ ਕਰਕੇ ਕਿਵੇਂ ਵੀ ਕਰਕੇ ਇਹ ਟੈਕਨੀਕ ਤੁਹਾਡੇ ਕੋਲ ਹੈਗੀ ਹੈ ਇਹੀ ਉਹ ਸਿਖਾ ਕੇ ਕਹਿੰਦੇ ਕੋਟ ਕਰੇ ਆ ਸਟਾਗ ਕਰੇ ਮੁਖ ਕਰੇ ਆਸਣ ਕੋਟ ਕਰੇ ਕਰੋਣਾ ਕੋਟ ਆਸਣ ਦੀ ਗੱਲ ਦਾ ਇੱਥੇ ਆ ਜਿਹੜਾ ਆਸਣ ਇਸ ਤਰ੍ਹਾਂ ਗੋਸਟਾਂਗੂ ਦਾਇਤ ਪ੍ਰਕਾਰ ਦਾ ਇਸ ਕਸ਼ਟਾਂਗ ਯੋਗ ਹੈ ਅਟ ਪਖਲ ਤੇ ਜੁੜ ਲੋ ਉਹ ਵੀ ਇਸਾਂਗ ਯੋਗ ਕੀ ਆ ਆਹ ਗੁਰਬਾਣੀ ਇਸਾਂਗ ਯੋਗ ਹੈ ਸੱਚ ਅਟ ਕੋਲ ਉਤਾਰਨ ਕਰਨੇ ਪਰ ਮੈਂ ਜਨਰਵਾਰਾ ਨਿਰਵਾਰ ਹੋ ਜਾਣਾ ਆਪੇ ਜੁੜ ਗਿਆ ਉੱਥੇ ਦਰਬਾਰ ਤੇ ਦਰਬਾਰ ਜੁੜ ਗਿਆ ਲੋ ਉਹ ਨਿਰਪਾਉ ਨਿਰਪਾਉ ਹੋ ਜਾਣਾ ਜੁੜ ਗਿਆ ਉੱਥੇ ਅਕਾਲ ਮੁਰਦ ਉਹ ਅਕਾਲ ਮੁਰਦ ਹੋ ਜਾਣਾ ਜੁੜ ਗਿਆ ਉੱਥੇ ਅਜੂਦੀ ਉਹ ਅਜੂਦੀ ਹੋ ਜਾਣਾ ਜੁੜ ਗਿਆ ਉੱਥੇ ਇਹ ਸ਼ਤਾਰ ਓਕਾਰ ਉਹ ਓਕਾਰ ਹੋ ਜਾਣਾ ਜੁੜ ਗਿਆ ਉੱਥੇ ਓਕਾਰ ਹੁੰਦਾ ਓਕਾਰ ਹੁੰਦਾ ਹੈ ਕੋਈ ਤਾਂ ਗੁਬੇ ਜਾਉ ਓਕਾਰ ਹੋ ਜਾਂਦਾ ਜਦ ਇਹ ਹੁੰਦਾ ਹੈ ਦੇਖੋ ਜਦ ਇਹ ਕੋਈ ਜਾਂਦਾ ਨਾ ਚੁੱਪ ਹੁੰਦਾ ਜਨਾ ਇਧਰ ਹਉਆ ਜਦ ਇਹ ਬੁਲਾਇਆ ਬੋਲਦਾ ਹੈ ਕਿ ਤਾਂ ਗੁਬ ਫਿਰ ਓਕਾਰ ਵੱਧ ਜਾਂਦਾ ਨਾ ਫਿਰ ਓਕਾਰ ਹੋ ਜਾਂਦਾ ਇੱਕ ਨਹੀਂ ਬਣਿਆ ਜਾਂ ਇੱਕ ਹੋ ਗਿਆ ਕੀ ਬਣ ਗਿਆ ਉਹ ਕਾਰ ਇੱਕ ਕੀ ਬਣ ਗਿਆ ਉਹ ਕਾਰ ਇਹ ਕੱਢਾ ਇੱਕ ਦਾ ਹੀ ਉਹ ਕਾਰ ਵਾਲੇ ਉਹ ਹੀ ਸਤਨਾਮ ਬਣੇ ਸਤਨਾਮ ਸੱਚ ਦਾ ਗਿਆਨ ਉਹਦੇ ਕੋਲ ਕਰਤਾ ਪੁਰਖ ਕਰਤਾ ਵੀ ਪੁਰਖ ਵੀ ਸ਼ਬਦ ਦੇ ਵਿੱਚ ਜੁ ਸ਼ਬਦ ਦਾ ਰੂਪ じゃ ਹੋ ਗਿਆ ਸ਼ਬਦ ਕਰਤਾ ਪੁਰਖ ਹੈ ਇਸ ਢੰਗ ਜੋਗ ਹੈ ਅਠਪਰਕਾਰ ਦਾ ਅਸਨ ਕੋਟ ਤਰੇ ਬੋ ਨਿਆਸ ਕਰੇ ਮੁਖ ਕਰੇ ਇਹੀ ਅਠ ਇਹੀ ਅਸਤਾਂਗ ਕੀ ਦੀ ਤਰੇ ਬੋ ਮੁਖ ਕਰੇ ਬੋ ਨਿਆਸ ਤਰੇ ਕੀ ਹੋਇਆ ਮਨ ਕਾਲਾ ਹੋ ਗਿਆ ਸੋ ਅਰੇ ਮੁਖ ਵੰਤ ਕਾਲਾ ਹੋ ਗਿਆ ਫਾਇਦਾ ਕੀ ਹੋਇਆ ਕਰਨਾ ਤੇ ਮਨ ਜਟਾ ਛਾਗੀ ਅੰਦਰ ਗਿਆ ਤਾ ਛਾਗਿਆ ਅੰਦਰ ਪਰਮ ਵੇ ਧਰਮ ਕਰਤਾ ਪਰਮ ਛਾਗਿਆ ਸਗੂ ਕਰੇ ਕਾਲਾ ਕੋ ਗਲ ਜੇ ਕੰਮ ਹੱਤਾ ਜੋ ਕਰਿਆ ਸੀ ਉਹ ਤਾਂ ਬੜੇ ਹੀ ਨਾ ਫਿਰ ਕਾਲਾ ਹੀ ਹੈ ਨਾ ਹੈ ਦੀਨ ਦਿਆਲ ਅਕਾਲ ਭਜੇ ਦਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਦੀਨ ਦਿয়াল ਅਕਾਲ ਅਕਾਲ ਆ ਗਿਆ ਹੁਣੇ ਦਿਨ ਦਿਵਾਲਾ ਅਕਾਲ ਹੈ ਉਹਦੇ ਨਾਲ ਜੁੜੇ ਤੇ ਬਿਨਾ ਭਜਨ ਦਾ ਬਿਨਾਂ ਜੁੜ ਲੈ ਜੇ ਆਪਾ ਕਾਲ ਨਹੀਂ ਹੋਇਆ ਤਾਂ ਅਸਾਲ ਨਾਲ ਜੋੜ ਨਹੀਂ ਸਕਦਾ ਦਿਨ ਅਕਾਲ ਅਕਾਲ ਅੰਦਰਲਾ ਗਾਲ ਹੈ ਉਹਦਾਂ ਜਿਹੜਾ ਪ੍ਰਾਤਮਿਕ ਅਕਾਲ ਹੈ ਸਤਕੁਲ ਬੇਰਾ ਸਦਾ ਸਦਾ ਨਾ ਆਵੇ ਨਾ ਜਾਏ ਅਬਨਾਸ਼ੀ ਪ੍ਰਖਾ ਸਭ ਮੇਰਾ ਸਮਾਏ ਸਤਗੁਰ ਦੇ ਵਿਚਲੀਨ ਹੋਣੇ ਥੱਲੇ ਦੇ ਵਿੱਚ ਆਪਣੇ ਆਪਣੇ ਅੰਦਰੇ ਲਈ ਰੁਪਨੇ ਕਿਤੇ ਬਾਹਲੀ ਰੋਡ ਦੀ ਗੱਲ ਹੀ ਹੈ ਗੁਰਬਾਣੀ ਕਰਦੀ ਇੱਕ ਹੁਣ ਅੱਦਨ ਅੱਦੇ ਹੋ ਜਾਣਾ ਸਰੀਰ ਛੱਡ ਦੇਣਾ ਆਪਣੇ ਮੂਲ ਦੇ ਵਿਚਲੀਨ ਹੋ ਜਾਣਾ ਕਾਹੀ ਕਹੂਗਾ ਅੰਦਲਾ ਜੀ ਦੇ ਲਈ ਉਹ ਅਕਾਲ ਹੈ ਉਨੀ ਵਰਦਾ ਹੈ ਅਕਾਲ ਭਜੇ ਬਿਨ ਜਾਦਾ ਸਰੀਰ ਛੱਡਦਾ ਉਹ ਹੀ ਆ ਸਕਿਆ ਅੱਗੇ ਹੰਸ ਕੇ ਲਹਤ ਹੁੰਦਾ ਬਕਲਾ ਹੀ ਮਰਦਾ ਹੈ ਅੰਤ ਕੋ ਅੰਤ ਕੇ ਧਾਮ ਸਦਾ ਅੰਤ ਕੋ ਅੰਤ ਕੇ ਧਾਮ ਉਹ ਤੇ ਜੁੜੇ ਤੇ ਬਨਾ ਤੇ ਅੰਤ ਕੋ ਅੰਤ ਕੇ ਧਾਮ ਸਦਾ ਅਨੰਤ ਦਾ ਧਾਮ ਹੋ ਰੇ ਅੰਤ ਧਾਮ ਹੋ ਰੇ ਕਾਲ ਦੇ ਜਿਹੜਾ ਕਾਲ ਦੇ ਵਸੇ ਰਹਾ ਕਾਲ ਦੇ ਵਿੱਚ ਚਲਾ ਗਿਆ ਕਾਲ ਦਾ ਗਰਾਸ ਬਣ ਗਿਆ ਕਾਲ ਦੇ ਬੂ ਚਲਾ ਗਿਆ ਇਹ ਅੰਤ ਕਾ ਧਾਮ ਹੈ ਸ੍ਰਿਸ਼ਟੀ ਆ ਅੰਤ ਕਾ ਧਾਮ ਹੈ ਸੱਚਾ ਹਨ ਅਨੰਤ ਕਾ ਧਾਮ ਹੈ ਉਹ ਦਾ ਅੰਤ ਨਹੀਂ ਹੈ ਅੰਤਰਾ 12 12 ਉਹ ਦਾ ਜਿਹਦਾ ਅੰਤ ਨਹੀਂ ਹੋ ਉਹ ਅਨੰਤ ਕਾ ਧਾਮ ਹੈ ਧਾਮ ਜਿਹੜੇ ਵੇਦਾਂਤੀ ਨੇ ਇੱਥੇ ਰਹਿਣ ਨੇ ਅੰਤ ਕਾ ਧਾਮ ਵੇਦਾਂਤੀ ਨਹੀਂ ਜਾ ਸਕਦੇ ਉੱਥੇ ਇਹ ਤਾਂ ਅੰਤ ਧਾਮ ਅੰਤ ਕਾ ਧਾਮ ਦੇ ਅੰਦਰ ਰਹਿਣ ਬਾਹਰ ਵਿਚ ਮਾਤਵਾਰ ਕੇ ਵਿਚ ਲੱਜਾਂ ਬਾਤਵਾਰ ਦਾ ਰਸਤਾ ਨਹੀਂ ਪਤਾ ਅਰੂਰ ਕੀ ਹੁੰਦਾ ਨਵੇਂ ਦਾਲ ਤਿਰੈ ਤੇ ਕਿਰਨ ਦੱਸਿਆ ਨਰਦ ਗ੍ਰੰਥ ਵਿੱਚ ਹੈਗਾ ਹਾਂ ਅੰਤ ਕੇ ਦਾ ਆਂਦਾ ਪ੍ਰਸਾਦ ਕਵਿੱਤ ਅਤਰ ਕੇ ਚਲਈਆ ਛੇਤ ਛਤਰ ਕੇ ਤਰਈਆ ਛਤਰ ਧਾਰਿਓ ਕੇ ਛਲਈਆ ਵਹਾਂ ਸ਼ਤਰਣ ਕੇ ਸਾਲ ਹੈ ਕਾਣੋ ਜਿਹਦੇ ਪਿੱਛੇ ਗੱਲ ਚੱਲਦੀ ਓ ਉਸੇ ਦੀ ਗੱਲ ਗਾਂ ਚੱਲਦੀ ਐ ਅਸਤਰ ਕੇ ਚਲਈਆ ਅਸਤਰ ਅਸਤਰ ਦਾ ਅਸਤਰ ਅਸਤਰ ਹੁੰਦਾ ਐ ਦੂਰੋਂ ਮਾਰਨ ਵਾਲਾ ਹਥਿਆਰ ਯੋ ਚੱਕਰ ਹੈ ਤੀਰ ਐ ਅਸਤਰ ਹੈ ਤਲਵਾਰ ਐ ਸ਼ਸਤਰ ਐ ਬਿਜਾਇ ਐ ਸ਼ਸਤਰ ਐ ਅਸਤਰ ਹੁੰਦਾ ਅਸਤਰ ਨੂੰ ਚੱਕਰ चलाए ਲਾਇਆ ਦਿਓ ਕਰਤੇ सत्र ਸਤਰ ਕੋ ਮਾਰ ਜੁਦਾ शब्द जड़ा है, ਜਿਹੜਾ ਹੈ ਅਤਰ ਜਿਹੜਾ ਮੂਤੋ ਬੋਲੇ ਸ਼ਬਦ ਹਨ ਬਾਣੀ ਇਹ ਅਤਰ ਅਸਤਰ ਜਿਹੜਾ ਉਹ ਅੰਦਰ ਦਾ ਸ਼ਬਦ ਹੈ ਉਹ ਸ਼ਾਸਤਰ ਹੈ है, ਅਤਰ ਨਹੀਂ ਹੈ ਉਸ ਪਰਛੇ ਹੋਊਗਾ ਇਹ ਬੋਲਣ ਵਾਲਾ ਦੂਰ ਬੈਠਾ ਹੈ ਸ਼ਬਦ ਜਾਊਗਾ ਕਮਾਨ ਚੋਂ تیر ਜਾਊਗਾ ਸ਼ਬਦੇ ਜਾਉ ਨਾ ਤਨ ਕਿਤੇ ਆਇਓ ਸਤ ਕਾ ਜਾ ਸੰਦਾ ਬੰਡ ਜਾ ਜਾਊਗਾ ਨਾ ਬਾਣੇ ਜਾਊਗਾ ਬਸ ਸ਼ਬਦੇ ਬੋਲਿਆ ਹੋਇਆ ਉਹਦਾ ਨਹੀਂ ਸ਼ਬਦ ਜਾਂਦਾ ਉਹ स्पर्ਸ਼ ਦੰਦ ਆਹ ਤਲਵਾਰ ਮਾਰਦੇ ਤਲਵਾਰ ਨਾਲ ਜਾ ਕੇ ਟੱਚ ਕਰਦੇ ਕਿ ਨਹੀਂ ਹੱਥ ਵੀ ਨਾਲੇ ਜੁੜਿਆ ਹੁੰਦਾ ਦੂਰੋਂ ਨਹੀਂ ਫੈਂਕੀ ਹੋਈ ਤਲਵਾਰ ਸ਼ਬਦ ਦੂਰੋਂ ਫੈਂਕੀ ਹੋਈ ਚੀਜ਼ ਹੈ ਉਪਦੇਸ਼ ਜਿਹੜਾ ਹੈਗਾ ਨਾ ਇਹ ਗੁਰੂ ਇਹ ਜਦੋਂ ਅਸਤਰ ਹੈ ਅਤਰ ਕੇ ਚਲਈਆ ਛੇ ਤੋਂ ਛਤਰ ਕੇ ਤਰਈਆ ਛਿੱਤ ਤੇ ਛਤਰ ਕੇ ਤਰਈਆ ਇਹ ਕਹਾਣੀ ਗੁਰਮੁਖੀ ਦੀ ਗੱਲ ਹੈ ਇੱਥੇ ਜਲਦੀ ਛੇ ਤੋਂ ਛਤਰ ਕੇ ਤਰਈਆ ਛਿੱਤ ਛਤਰ ਕੇ ਤਰਈਆ ਇੱਥੇ ਪਥਵੀ ਧਰਤੀ ਤੇ ਆ ਕੇ ਜਿਹੜੇ ਛਤਰ ਧਾਰੀ ਦੇ ਜਿਹਨਾਂ ਸਿਰ ਤੇ ਰਾਜ ਹੈ ਇਹ ਜਿਹੜੇ ਅ ਗੁਰੂ ਬੜਕੇ ਆ ਸਮਝ ਲੋ ਉਹ ਵੀ ਛਤਰ ਕੇ ਤਰਈ ਆ ਹੁੰਦੇ ਨੇ ਹਾ ਕੋ ਹਾਤ ਕੇ ਜਿਹੜੇ ਫਿਰਦੇ ਹੁੰਦੇ ਨੇ ਗੁਰੂ ਸਾਰੇ ਇਹਨਾਂ ਦੇ ਆਪਣੇ ਵੀ ਕਲੀਆਂ ਲਾਉਂਦੇ ਸੀ ਤਾਈ ਲਾਉਂਦੇ ਸੀ ਉਹ ਛਤਰੇ ਹੁੰਦਾ ਛਿਤ ਕੇ ਤਰਈ ਆ ਛਿਤ ਕੇ ਤਰਈ ਆ ਛਤਰ ਧਾਰਿਓ ਕੇ ਛਤਰ ਧਾਰਿਓ ਕੇ ਛਲਈਆ ਉਹ ਜਿਹੜੇ ਛਤਰ ਧਾਰਿਓ ਅੰਦਰ ਨੇ ਛਤਰ ਪਹਿਨਣ ਵਾਲੇ ਉਹਨਾਂ ਨੂੰ ਵੀ ਛੱਡ ਲੈਂਦਾ ਉਹ ਸਰਦਾਰ ਨੂੰ ਛੱਡਦੇ ਨੇ ਹੋਰਾਂ ਨੂੰ ਛੱਡ ਲੈਂਦਾ ਮਹਾ ਸ਼ਤਰਣ ਕੇ ਸਾਲ ਹਨ ਛਲੇ ਹੋਈ ਨੇ ਜੋ ਛਲੇ ਨਾ ਹੋਏ ਹੁੰਦੇ ਤਾਂ ਮਾਇਆ ਮਾਇਆ ਮਾਇਆ ਨੇ ਛਲੇ ਹੋਏ ਨੇ ਉਹ ਛੜਈਆ ਕੇ ਮਾਇਆ ਪੈਦਾ ਕੀਤੀ ਉਹਨਾਂ ਬਾਤ ਤੇ ਭਾਈ ਮਾਇਆ ਛੜ ਉਹਨੇ ਆਪਣੇ ਮਾਇਆ ਨਾਲ ਲੋਕਾਂ ਨੂੰ ਛੜ ਵਾਲੇ ਛਲੇ ਹੋਏ ਨੇ ਮਾਇਆ ਜਿ ਫਜ਼ਾਤੇ ਮਾਇਆ ਜਿ ਫਜ਼ਾਏ ਨੇ ਛੜਲੇ ਹੋ ਛੜਲੇ ਛੱਤਰ ਧਾਰਿਓ ਕੇ ਛੜੇ ਬੜੇ ਬੜੇ ਛੱਤਰ ਧਾਰੀ ਜਿਹੜੇ ਆਪ ਨੂੰ ਸੰਤ ਕਹੋਂਦੇ ਨੇ ਛੜੇ ਹੋਏ ਨੇ ਮਾਇਆ ਜਿਹੜੇ ਫਸੇ ਹੋਏ ਨੇ ਆ ਕਹਿ ਤਾਂ ਇਹੋ ਕਹਿ ਰਹੇ ਨੇ ਵੀ ਮੈਨੂੰ ਅਫਸੋਸ ਨਹੀਂ ਹੈ ਛੱਡਿਆ ਜੇ ਮੈਂ ਉੱਥੇ ਫਸ ਜਾਂਦਾ ਮੈਂ ਛੜਿਆ ਗਿਆ ਸੀ ਅਨੰਦਪੁਰ ਸਾਹਿਬ ਜੇ ਉਹਨਾਂ ਦੀ ਗੱਲ ਮੰਨ ਲੈ ਨਾ ਸਾਚੀ ਛੜ ਦੁੱਦ ਬਾਇਆ ਕਰਕੇ ਵੈ ਤੇ ਛੜਿਆ ਗਿਆ ਸੀ ਉਹ ਗੱਲ ਤਾਂ ਇੱਥੇ ਦੱਸ ਰਹੇ ਲੋ ਕਿਵੇਂ ਛੜੇ ਜਾਂਦੇ ਨੇ ਇਹਨੂੰ ਬੜਾ ਪਤਾ ਅਰਥ ਕੀ ਨੇ ਉਹਦੇ ਉਹ ਸਮਝਦੇ ਨਾ ਛੜਿਆ ਕੀ ਐ ਕੀ ਛੜਿਆ ਇਹਨਾਂ ਨੂੰ ਬੜਾ ਪਤਾ ਛੜਿਆ ਕੀ ਹੁੰਦਾ ਇਹਦੇ ਅਰਥ ਕਰਕੇ ਦੱਸ ਦੇ ਜਿਹੜੇ ਬੜੇ ਬੜੇ ਆਪਣੇ ਆਪ ਨੂੰ ਕਹਿੰਦੇ ਕਹਉਂਦੇ ਹੋਏ ਰਹੇ ਨੇ ਨਾ ਮਹਾਪੁਰਸ਼ 70 ਧਾਰੀ 70 ਧਾਰੀ ਕੀ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਛੜੇ ਹੋਏ ਨੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਛੜੇ ਹੋਏ ਨੇ ਮਾਇਆ ਦੇ ਵਿੱਚ ਇਤੋਂ ਵੱਡਾ ਕੌਣ ਹੈ ਫਿਰ? ਛੱਤਾਂ ਧਾਰੀਆਂ ਨੇ ਦੱਲੇ ਸਾਰੇ ਬੂਹੇ ਦੇ ਨਾਲ ਨੂੰ ਇਹਦਾ ਮੈਚ ਫਸੇ ਰ ਛੱਤਾਂ ਧਾਰੀਆਂ ਕੋਈ ਛਲਈਆ ਉਹ ਛੱਤਾਂ ਧਾਰੀਆਂ ਦਾ ਛਲਈਆ ਜਿਹੜਾ ਉਹਨੂੰ ਛੱਡ ਜਵੇ ਸਮਝੋ ਫਸ ਗਿਆ ਮੈਚ ਜਿਹੜਾ ਉਹਦੇ ਵੱਲੋਂ ਜਾਂਦਾ ਆਵਾਜ਼ ਨਹੀਂ ਫਿਰਦਾ ਬਚਾਉਂਦਾ ਉਹਨੂੰ ਐ ਜਿਹੜਾ ਉਹਦੇ ਵੱਲੋਂ ਜਾਂਦਾ ਮਾਰ ਦੇ ਛੜ ਤੋਂ ਅਛਾਲਾ ਨਾ ਆਪੋ ਜਿਹੜਾ ਹਉਦ ਰਹਾ ਛੜ ਗਿਆ ਕਹਦਾ ਆ ਖੜੀਓ ਕੁਝ ਫਸਾਦ ਛੜਈਆ ਉਧਰ ਦਲਦਲ ਐ ਜਿਹੜਾ ਨਾ ਜਾਂਦਾ ਇਸ ਰਸਤੇ ਸੱਚ ਦੇ ਉਹ ਤਾਂ ਪਹੁੰਚਦਾ ਸੱਚ ਤੱਕ ਜਿਹੜਾ ਜਰਾ ਘਰਾ ਬਦਲ ਗਿਆ ਨਾ ਉਹ ਦਲਦਲ ਚ ਵਾ ਜਾਂਦਾ ਮਾਇਦੀ ਚ ਇਸ ਕਰਕੇ ਉਹ ਰੋਬਾ ਜੀ ਪਤਾ ਕੀ ਕਹਿੰਦੇ ਕਹਿੰਦਾ ਖੱਡਾ ਤੇਖੀ ਬਾਲਾਂ ਨੇ ਕੀ ਇਹਤ ਮਾਰਗ ਬਹੁਤ ਵਰੀਕ ਰਸਤਾ ਐ ਉਹ ਤੇ ਲੀਕ ਤੇ ਪੈਰ ਖੋਖਦੇ ਤੇ ਕੀ ਬਾਣ ਰਕੀਏ ਜੇ ਇਧਰ ਉਧਰ ਪੈਰ ਰਖਤਾ ਦਲਦਲ ਜਿਹਾ ਜਾਉਗੇ ਬਾਣ ਨਿੱਕੀ ਪਰਸਲਾਤ ਕੰਡੀ ਨਾ ਛੜਿਆ ਏ ਉਹ ਵੀ ਉਹੀ ਗੱਲ ਕਰਦਾ ਉਹਦਾ ਕੰਨਾਂ ਨੂੰ ਨਹੀਂ ਸੁਣਦੀ ਬਾਣੀ ਜਿਹੜਾ ਜੁੜਨਾ ਸੀ ਉਹ ਬਾਣੀ ਉਧਰੋਂ ਸੁਣ ਕੇ ਉਹਦਾਂ ਜੁੜਨਾ ਉਹ ਰਸਤਾ ਹੈ ਸਚਖੰਡ ਦਾ ਉਹਦੇ ਨੂੰ ਜੁੜ ਕੇ ਜਾਇਦਾ ਡੋਲੀਆਂ ਛਾਣੇ ਕੁੱਟ ਕੇ ਨਹੀਂ ਜਾਇਦਾ ਜਾ ਸਕਦਾ ਜਿੰਨਾ ਚਿਰ ਬਾਹਰਲੇ ਕੀਰਤਨ ਨਾਲ ਜੁੜਿਆ ਹੋਇਆ ਇੱਥੇ ਰਹੂਗਾ ਸੰਸਾਰ ਚ ਇਹਦਾ ਸਾਧਨ ਉੱਥੇ ਜਾਣ ਦਾ ਹੈ ਇਹ ਤਾਂ ਪਹਿਲਾ ਸਾਧਨ ਹੈ ਸੰਸਾਰ ਨੂੰ ਤੋੜਨ ਦਾ ਇਹ ਮਾਇਆ ਦਾ ਜਾਗ ਹੈ ਬੂ ਨਾ ਬੋਲਿਆ ਹੋਇਆ ਇਹ ਤਾਂ ਇਹ ਤਾਂ ਤੋੜਨ ਦਾ ਹੈ ਮਾਇਆ ਨੂੰ ਇਹ ਤੋੜਦਾ ਰਾਗ ਬਣਾਇਆ ਤਾਂ ਇਹਦੇ ਤੇ 1 ਲੱਖ ਰੁਪਏ ਖਰਚ ਕਰਦੇ ਤੁਸੀਂ ਕੀਰਤਨ ਤੇ ਇਹ ਇਹ ਮਾਇਆ ਦੇ ਆਸਰੇ ਖੜਾ ਤੁਹਾਡਾ ਕੀਰਤਨ ਜਿਹੜਾ ਮਾਇਆ ਨੂੰ ਤੋੜਨ ਵਾਲਾ ਸੀ ਨਾ ਮਾਇਆ ਨੂੰ ਤੋੜਨੇ ਵਾਲਾ ਸੀ ਨਾ ਜਿਹੜਾ ਰਗ ਜੋ ਬਾਣੀ ਪੜਦੇ ਆ ਸੀ ਕੀਰਤ ਦਾ ਜਿਹਨੂੰ ਕੀਰਤ ਵੀ ਕਹਿੰਦੇ ਨੇ ਇਹ ਜਿਹੜਾ ਮਾਇਆ ਨੂੰ ਤੋੜਨ ਵਾਲਾ ਸੀ ਨਾ ਉਹ ਤਾਂ ਮਾਇਆ ਤੇ ਆਧਾਰ ਖੜਿਆ ਹੈ ਇਹਦਾ 50 50 20 20000 ਰੁਪਏ ਲੈਂਦੇ ਨੇ ਉਹਦਾ ਤੋੜਨ ਵਾਲਾ ਜੋੜਨ ਵਾਲਾ ਉਬਾਜਾ ਚੱਕੀ ਫਿਰਦੇ ਹੋ ਤੁਸੀਂ ਜਿਹੜੇ ਤੁਸੀਂ ਕੀ ਕਰਦੇ ਰਹੇ ਹੋ ਤੋੜਦੇ ਰਹੇ ਹੋ ਜੋੜਦੇ ਰਹੇ ਹੋ ਪਹਿਲਾਂ ਜਵਾਬ ਦਿਓ ਉਹ ਤਾਂ ਕਿ ਛੱਤ ਆ ਕੀ ਲਿਖਦਾ ਭਾਈ ਮਾਇਆ ਛੜ ਛੱਤ ਤਾਂ ਹੋਇਆ ਹੋਇਆ ਪਹਿਲਾਂ ਉਹ ਦੇਖ ਲਓ ਅੰਦਰ ਚਾਹ ਕੇ ਛੜ ਹੋਇਆ ਹੋਇਆ ਨਹੀਂ ਹੋਇਆ ਫਿਰ ਹੋਰ ਗੱਲ ਕਰਿਓ ਜਿਹੜੇ ਆਪ ਛੜੇ ਹੋਏ ਨੇ ਮਾਇਆ ਦੇ ਉਸੇ ਖਿਆਦੇ ਰਹੇ ਨੇ ਸਾਨੂੰ ਤੁਸੀਂ ਆਪਣੇ ਛੜ ਤੋਂ ਹੀ ਵੱਜ ਜਾਂਦੇ ਤੁਹਾਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਅਸੀਂ ਛੜੇ ਹੋਏ ਆ ਅੱਜ ਵੀ ਤੁਹਾਨੂੰ ਪਤਾ ਵੀ ਅਸੀਂ ਛੜੇ ਗਏ ਅਸੀਂ ਸੇਵਾ ਕਰਦੇ ਆਂ ਜੀ ਸੇਵਾ ਕਰਦਾਂ ਤੁਸੀਂ ਫਰੀ ਦੀ ਸੇਵਾ ਆ ਕਰੀ ਦੀ ਜੇ ਤੁਸੀਂ ਕਰਦੇ ਆਂ ਸੇਵਾ ਕਰੀ ਤੇ ਬਾਬੇ ਫੋਟੇ ਨਾਲ ਖੋਦ ਕੇ ਉਲਦੀ ਸੇਵਾ ਹੋਰ ਕਰਦੇ ਰਹੇ ਨੇ ਸਿੱਧੇ ਸੇਵਾ ਪਿੱਛੇ सेवा ਲਾਇਗਰ ਇਹਦੇ ਜੋ ਮੈਂ ਤੁਸੀਂ ਕਰਦੇ ਹੋ ਅਗੇ ਬਾਂ ਕੱਢੀਆਂ ਲੋਕਾਂ ਦੀ ਸੇਵਾ ਨਹੀਂ ਹੁੰਦੀ ਬਹੁਤ ਕੇ ਪੈਸੇ ਲੈਣੇ ਤੁਸੀਂ ਮੁਕਰਰ ਕਰਕੇ ਪੈਸੇ ਲੈਣੇ ਸੇਵਾ ਹੈ ਵੇਚਦੇ ਹੋ ਉਹਨਾਂ ਨੂੰ ਕਿਹਾ ਸੀ ਪੜਨ ਤੇ ਵੇਚਦਾ ਸੀ ਗਿਆ ਕੋਈ ਲੜਕਾ ਵੇਚੀ ਇਕਬੀਰ ਕਾ ਦਾ ਲੜਕੀ ਗਾਂ ਵੇਚਣਾ ਲੜਕਾ ਵੇਚਣਾ ਬਿੱਧਿਆ ਵੇਚਣੀ ਲੜਕੀ ਵੇਚਣੀ ਜੇ ਕਿਹਨੂੰ ਕੀਰਤਨ ਦਿਖਾ ਕੇ ਉਹ ਤਾਂ ਆਪਣਾ ਲਾਭ ਉਠਾਉਣ ਕੀਰਤਨ ਵੇਚਿਆ ਉਹ ਬਿੱਧਿਆ ਵੇਚ ਕੇ ਕੋਈ ਕਮਾਈ ਕਰਨੀ ਹੈ ਲੜਕੀ ਵੇਚੀ ਤੀਓ ਜੇ ਗਾਂ ਵੇਚਦਾ ਤੁਸੀਂ ਲੜਕਾ ਵੇਚਦਾ ਇਹ ਕਹਿ ਰਿਹਾ ਖबीर ਤਾਂ ਤਾਂ ਇਹ ਕਹਿ ਰਹੀ ਹੈ ਗੁਰੂਆਂ ਨੇ ਕਿਉਂ ਰੱਖਿਆ ਸ਼ਲੋਕ ਵਿੱਚ ਕਦਰ ਕਰੇ ਕੋਈ ਲੜਕਾ ਵੇਚੇ ਲੜਕੀ ਵੇਚੇ ਕੋਈ ਸਾਜਾ ਕਰੇ ਖਬੀਰ ਸਿਓ ਹਰਸਿਓ ਬੜਜ ਕਰੇ ਕੀਤਾ ਨਾ ਹਰਸਿਓ ਬੜਜ ਅਤਰ ਜਿਵੇਂ ਆਵੇ ਖਜੂਕੀ ਬਾਣੀ ਤੈਸੋੜਾ ਕਰੀ ਗਿਆਨ ਵੇ ਲਾ ਇਹ ਬੜਜ ਕਰਨਾ ਸੀਗਾ ਨਾਮ ਦਾ ਜਿਹੜੇ ਬਾ ਆਈ ਸੀ ਬਾਣੀ ਉਸੇ ਬਾ ਦਾ ਹਉ ਦੇਣੀ ਸੀ ਸੱਚ ਘੜ ਆਈ ਐ ਉਹ ਤੋਂ ਬੋਲ ਸੀ ਕੋਈ ਤੁਸੀਂ ਸੱਚ ਘੜ ਨਾ ਪਾਣੀ ਆਉਂਦੇ ਆ ਗੁੱਲੋਂ ਦੀ ਹੱਥੋਂ ਅ ਜੇ ਮੈਂ ਆਉਂਦੀ ਆ ਉਹ ਦਰਿਆ ਚ ਪਾਣੀ ਦੀ ਦਰਿਆ ਦਾ ਹੁੰਦਾ ਦਰਿਆ ਦਾ ਜਿਹੜੇ ਪਾਉ ਦਾ ਘਾਹ ਸਪਲਾਈ ਕਰ ਦਿੰਦਾ ਦਰਿਆ ਦਾ ਇਹ ਗੁਰ ਦਰਿਆ ਹੁੰਦਾ ਦਰਿਆ ਨਾ ਮੋਲ ਲਿਆਉਂਦਾ ਪਾਣੀ ਨਾ ਮੋਲ ਵੇਚਦਾ ਵਿਚਾਰਾ ਪਾਣੀ ਹੁੰਦਾ ਰੋਗੀ ਜਾਂਦਾ ਉਹਦਾ ਕਰਾਸਤਾ ਹੈ ਉਹ ਦੇਣ ਵਾਲਾ ਗਿਆਨ ਤਾਂ ਇੱਕ ਦਰਿਆ ਵੋ ਰਸਤਾ ਉਹਦੇ ਰਸਤੇ ਆਇਆ ਜੀ ਦਾ ਹੈਗਾ ਹੈ ਕਿਸੇ ਹੋਰ ਦਾ ਖਸੂਕੀ ਬਾਣੀ ਹੈ ਜਾਣਿਆ ਖਸਮ ਦੇ ਬੰਦਿਆਂ ਕੋਲ ਉਹਦਾ ਇੱਕ ਮੀਡੀਅਮ ਇਵਤਾਰ ਦੇ ਰੂਪ ਜਲੀ ਜਲਦੀ ਹੈ ਤਾਰ ਬਿਜਲੀ ਪੈਦਾ ਕਰਦੀ ਹੈ ਉਹਦਾ ਇੱਕ ਸਪਲਾਈ ਲਾਈਨ ਸਪਲਾਈ ਲਾਈਨ ਬਣ ਗਏ ਤੁਸੀਂ ਬਹੁਤ ਬੜੇ ਆਪਣੇ ਆਪ ਨੂੰ ਅਜੀਬ ਬਣਾ ਲਈ ਕੀ ਰ ਤੂੰ ਤਾਂ ਹੀ ਬਣਾ ਲਈ ਮੈਂ ਗੱਲ ਕੀ ਹੈ ਸੇਵਾ ਕਰ ਦੇਉ ਤੁਸੀਂ ਐਂ ਕਰੀ ਦੀ ਸੇਵਾ ਛਤਰ ਧਾਰਿਓ ਕੇ ਛਲਈਆ ਛਤਰ ਧਾਰਿਓ ਕੇ ਛਲਈਆ ਛੜੇ ਹੋਇਆ ਤੁਸੀਂ ਬੜੇ ਬੜੇ ਜਿਹੜੇ ਆਪਣੇ ਆਪ ਨੂੰ ਅਕਾਲ ਤਖਤ ਦੇ ਜਹੇਦਾਰ ਬਣੇ ਫਿਰਦੇ ਤੇ ਛਲਈਆ ਬੇਗੂਫ ਲੋਕ ਦਾ ਉਹ ਸੀ ਜਿਹਨਾਂ ਨੂੰ ਇਹ ਜੇ ਬਦਿਆ ਨੂੰ ਉਥੇ ਜਹੇਦਾਰ ਬਣਾਤਾ ਇਹ ਕਾਬਲ ਸੀ ਕੇ ਦੇ ਜਿਹੜੇ ਹੁਣ ਤੁਰੇ ਫਿਰਦੇ ਨੇ ਬੱਟ ਬੱਟ ਇਹ ਕਾਬਲੇ ਨਹੀਂ ਸੀ ਬੰਦੇ ਕੁਝ ਗੱਲਾਂ ਠੀਕ ਆ ਇਹਨੇ ਹੋ ਕਾਬਲੀਅਤ ਤਾਂ ਬਿਨਾ ਜਿਹੜੇ ਬੰਦੇ ਬਣਾਏ ਹੋਏ ਨੇ ਬੇਵਕੂਫੀ ਹੈ ਇਹਨਾਂ ਦੀ ਇਹਨਾਂ ਨੇ ਬੈਰੀ ਬੜੇ ਤਖਤ ਲਾਇਕ ਗਲਤੀਆਂ ਨਾ ਦੀਆਂ ਕੀਤੀਆਂ ਇਹਨਾਂ ਨੇ ਪੇਸ਼ ਪੈ ਕੇ ਹੁਣ ਉਹ ਤੁਰਿਆ ਫਿਰਦਾ ਉਹ ਮਿਸ਼ਨਰੀ ਸੀ ਆਪਣੇ ਜਾਚਕ ਜਾਜ ਗਰੀ ਜਾਜ ਉਹ ਦੂਆ ਕੇਵਲ ਸੋ ਕੇਵਲ ਸੋ ਕਾਬਲ ਸੀਗਾ ਊੜਾੜਾ ਤੁਹਾਨੂੰ ਪਤਾ ਨਹੀਂ ਹੈ ਗੁਰਬਾਨੀ ਦਾ ਬੜੇ ਫਿਰਦਾ ਬੜੇ ਜੈ ਹਰਨਾ ਕਾਬਲ ਆਦਮੀ ਨੂੰ ਬਣਾ ਕੇ ਸਾਰੀ ਮਿੱਟੀ ਬਲੀਦ ਕਰਦੀ ਹੈ ਜੇ ਆਦਮੀ ਅੰਦਰ ਤਿਆਗੇ ਨਹੀਂ ਹੈ ਸਭ ਕੁਝ ਛੱਡਿਆ ਹੋਇਆ ਹੀ ਨਹੀਂ ਤੁਸੀਂ ਇਹ ਜੀ ਸੀਟ ਤੇ ਬਠਾਲਤਾ ਉਹਨੂੰ ਉਹ ਤਖਾਲੂ ਕਦੇ ਵੀ ਵੇਖ ਸਕਦਾ। ਵੇਖ ਕੇ ਤੁਹਾਡੀ ਖਰਾਬ ਹੋ ਜੂਗਾ, ਬਰਬਤ ਬੋਲ ਦੂਗਾ। ਇਹ ਤਾਂ ਬਕਾਊ ਮਾਲ ਹੈ, ਜਿਹੜਾ ਕੀਰਤਨ ਵੇਚਾਰਿਆ ਉਹ ਕਿਵੇਂ ਨਹੀਂ ਵਿਕ ਸਕਦਾ। ਕੋਈ ਉਹ ਤਾਂ ਕੁਝ ਵੀ ਕਹਾ ਸਕਦਾ ਪੈਸੇ ਦੇ ਕੇ। ਉਹ ਤਾਂ ਬਕਾਊ ਮਾਲ ਹੈ। ਉਹ ਤਨਖਾਹਾਂ ਜਿਹੜੇ ਤਨਖਾਹ ਦੇ ਮਜ਼ਦੂਰ ਰਹੇ ਹੁਣ ਉਹ ਬਕਾਊ ਹੁੰਦੇ ਨੇ। ਇਹ ਤੁਸੀਂ ਸੀਟ ਤੇ ਤਨਖਾਹਦਾਰ ਵਾਸਤੇ ਰੱਖਣੀ ਨਹੀਂ ਸੀ। ਗਲਤੀ ਤੇ ਇਹਨਾਂ ਦੀ। ਇਹ ਸੀ ਤਨਖਾਹਦਾਰ ਵਾਲੀਆਂ ਦੀ ਹੁਣ ਨਾ ਹੱਡ ਗ੍ਰੰਥੀ ਦੀ ਸੀ ਤਨਖਾਹ ਲਈ ਹੈ ਨਾ ਇਹ ਅਗਾਂਹ ਦਾ ਦੇ ਜਹਦਾ ਵਾਲੀ ਸੀਟ ਇਹ ਤਨਖਾਹਦਾਰਾਂ ਦੀ ਸੀਟਾਂ ਦੀ ਇਹ ਸੇਵਾ ਵਾਲੀਆਂ ਸੀਟਾਂ ਜਿਹਦਾ ਅੰਦਰ ਮਾਇਆ ਦੀ ਭੁੱਖਾ ਉਹ ਤਾਂ ਵੀ ਨਹੀਂ ਆਉਣ ਦੇਣਾ ਚਾਹੀਦਾ ਇਹ ਸੀਟਾਂ ਦੇ ਉੱਪਰ ਉਹੀ ਆਦਮੀ ਇੱਥੇ ਬੈਠ ਕੇ ਕੁਝ ਕਰ ਸਕਦਾ ਜਿਹਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈ ਪਰ ਇਹ ਸਿਆਪਾ ਇਹਨਾਂ ਨੂੰ ਆਪ ਹੈ ਇਹਨਾਂ ਨੂੰ 206 ਕਾਪੜੇ ਦੇ ਦਾਦਾ ਦਾਣਾ ਜਾਪਣੇ ਸ਼ੇਰ ਸਾਲੂਡੀ ਬਖਸ਼ਣਾ ਉਹਨੇ ਘੱਟ ਕੋਈ ਵੀ ਨਹੀਂ ਨਾ ਸਾਰੇ ਪਾਸੇ ਹੀ ਆ ਨਾ ਉਹਨੂੰ ਪਤਾ ਕਿ ਉਹ ਜਿਆ ਬਠਾਲਦਾ ਸਾਡੀ ਨਹੀਂ ਬਣਣੀ ਉਹਨੇ ਗੱਲ ਇੱਥੇ ਫਸੀ ਹੋਈ ਹੈ ਸਾਰੇ ਡਾਗੀ ਨੇ ਆਪਣਾ ਆਪਣਾ ਵਿਚਾਰ ਕਰਦੇ ਨੇ ਇਹਨਾਂ ਲੋਕਾਂ ਸਾਡੇ ਉਹਨਾਂ ਫਿਰ ਇਕੱਠ ਬੁੱਧੂ ਦੀ ਜੱਲਾ ਫਿਰ ਜਿਹੇ ਜਿਆ ਬਠਾਲਦਾ ਉਹਨੇ ਘਟ ਬੁੱਧਵੀ ਮਰਨਾ ਜਹੇ ਜੇ ਪੇਛਾਣ ਲਗਾ ਤੈ ਜਿਹਾ ਪੈਣੀ ਮੁਕੜ ਹੋਰ ਵਧਣ ਗਈ ਦਿਨ ਬਦਲ ਹੈ ਵਹਾਂ 70 ਕੇ ਸਾਲ ਹੈ ਵਹਾਂ 70 ਕੇ ਸਾਲ ਹੈ ਜਿਹੜੇ ਵਹਾਂ 70 ਹੈਗੇ ਉਹਨਾਂ ਦੇ ਵੀ ਤੂੰ ਪ੍ਰਾਣ ਹਲਵਾਣੇ ਸਾਲ ਹੈ ਬਾਹਰ ਵਾਲੇ ਕਾਬੂ ਕਰਨ ਵਾਲਾ ਨਾਸ ਕਰਨ ਵਾਲਾ ਉਹਨਾਂ ਦਾ ਦਾਨ ਕੇ ਦਵਾਈਆ ਮਹਾਮਾਨ ਕੇ ਵਢਈਆ ਦਾਨ ਕੇ ਦਵਾਈਆ ਦਾਨ ਨਹੀਂ ਦੇ ਸਕਦਾ ਕੋਈ ਕੋਈ ਦਾਨ ਬੁਰੀ ਦੇ ਸਕਦਾ ਕੋਈ ਤਾਂ ਇਹਦਾ ਹਰੇਕ ਦਾਦਾ ਬਣਾ ਬੈਠਾ ਉਹ ਕਹਿੰਦੇ ਦਾਨ ਕੇ ਦਵਾਈਆ ਤੂੰ ਦੋ ਨਾ ਜੀ ਤੂੰ ਚਾਹੇ ਗਿਆਨ ਦਾ ਦਾਨ ਹੈ ਚਾਹੇ ਲੋਭ ਦਾ ਦਾਨ ਹੈ ਚਾਹੇ ਕੋਈ ਹੋਰ ਦੀ ਇਹਦਾ ਦਾਨ ਦਾਨ ਕੇ ਦਵਾਈਆ ਦਾ ਤੂੰ ਇਹ ਕਹਿੰਦੇ ਨੇ ਅਸੀਂ ਸਿੱਕੀ ਕਿੱਥੇ ਖੜੀ ਐ ਗੁਰਬਾਣੀ ਕੀ ਕਹਿ ਰਹੀ ਐ ਅਸੀਂ ਕੀ ਬਣ ਰਹੇ ਹਾਂ ਕੀ ਬਲੀ ਬੈਠੇ ਹਾਂ ਗਾੜਗੇ ਤੇ ਭਈਆ ਵਾਹ ਮਾਣ ਕੇ ਬੜਈਆ ਵਾਹ ਮਾਣ ਕੇ ਬੜਈਆ ਵਾਹ ਮਾਣ ਜੂ ਬਿਲੋ ਜੇ ਕਹੇ ਮੇਰਾ ਮੁਝ ਮੇਂ ਕਛ ਨਹੀਂ ਜੋ ਕੁਛ ਐ ਸੋ ਤੇਰਾ ਤੇਰਾ ਤੁਝ ਕੋ ਸੌਂਪਦੇ ਕਿਆ ਲਾਗੇ ਮੇਰਾ ਫੇਰ ਮਾਣ ਕੇ ਬੜਈਆ ਇਹ ਦਾਨ ਕਾ ਆਪਣੇ ਆਪ ਨੂੰ ਨੀ ਬੰਦਦਾ। ਦਾਨ ਦਾ ਦਵਾਈ ਆਪਣੇ ਆਪ ਨੂੰ ਕਿਉਂ ਬੰਦਦਾ? ਬੋਲਣ ਵਾਸਤੇ। ਬੋਲ ਨਹੀਂ ਫੇਰ ਨਹੀਂ ਬੰਦਦਾ ਹਜ਼ਰਗਾਹ 'ਚ ਬੋਲ। ਇੱਥੇ ਮਿਲਦਾ ਇੱਥੇ ਮਿਲਦਾ ਫਿੱਕਾ ਬੋਲ। ਇੱਥੇ ਮਿਲਦਾ ਚਾਰ ਦੰਦਾ ਬੋਲ। ਦਰਗਾਹ ਨਹੀਂ ਮਿਲਦਾ ਹੈ। ਮਹਾਮਾਨ। ਬਾਹ ਮਾਂਡੀ ਮਿਲਦਾ ਬੋਲ ਬੋਲ ਦਰਗਾਹ ਦਾ ਬੋਲ। ਜਿਹੜਾ ਕਹਿੰਦਾ ਮੇਰਾ ਕੁਝ ਨਹੀਂ ਹੈ ਸਭ ਪਰਮੇਸ਼ਰ ਦਾ ਮੈਨੂੰ ਵੀ ਢੇਰ ਵਾਰਾਂ ਬਚਾਲੇ ਵੀਡੀਓ ਬ ਤਨਖਾਹ ਦਿੰਦਾ ਕੋਈ ਆਦਮੀ ਵੰਡ ਰਿਹਾ ਸਰਕਾਰੀ ਮੁਲਾਜ਼ਮ ਨੇ ਪੈਸਾ ਸਰਕਾਰ ਦਾ ਦੇਣ ਵਾਲਾ ਤਨਖਾਹ ਦੇ ਰਿਹਾ ਉਹ ਦਾਨ ਕਰ ਰਿਹਾ ਕੁਛ ਉਹ ਹੱਕਾ ਤਨਖਾਹ ਉਹਨਾਂ ਨੂੰ ਦੇ ਰਿਹਾ ਦੇਣ ਵਾਲੇ ਨੇ ਦਿੱਤੀ ਹੈ ਤੂੰ ਬਚਾਲੇ ਕੌਣ ਹੋਣਾ ਫੇਬ ਨਹੀਂ ਜਾਂਦਾ ਨਾ ਮੈਨੂੰ ਜਿਹੜਾ ਮੇਰੇ ਕੋ ਆ ਗਿਆ ਨਾ ਉਹ ਮੇਰਾ ਹੋ ਗਿਆ ਨਾ ਸਵਾਲ ਤਾਂ ਇਹ ਹੈ ਇਰ ਦੇ ਹੱਥ ਲੱਗ ਗਿਆ ਮੇਰਾ ਹੋ ਗਿਆ। ਇਹਨੇ ਆਲੇ ਨੁੱਕ ਸੱਤੋਕ ਪੈਸੇ ਲੈ ਲੰਦਾ। ਫਿਰ ਸਾਨੂੰ ਵੀ ਆਧਾਰਿਆ ਦਿੰਦਾ ਉਹ। ਮਾਂ ਬਾਪ ਨੂੰ ਦਾਰੇ ਸੱਤ ਫਿਰ ਉਹ ਵੀ ਰੁਪਈਏ ਹੁਣ। ਤੇ ਕਿ ਉਹਦਾ ਜੋ ਹੱਥ ਲੱਗ ਗਿਆ ਉਹਨੂੰ ਦੇਖ ਤੇ ਇੱਕ ਵਾਰ। ਉਹ ਫਿਰ ਹੰਦੇ ਹੋ ਗਏ ਸਾਡੇ ਨਹੀਂ ਰਹੇ। ਆ ਗੱਲ ਇਹਦੀ ਫੜੀ ਹੋਈ। ਉਹ ਫਿਰ ਉਹ ਤੋਂ ਲੈ ਕੇ ਆਪਣਾ ਬਣਾ ਲੈ। ਦਾਤ ਪਿਆਰੀ ਦਾਤਾ ਦਾਤਾ ਦਾਤਾ ਜਦ ਭੁੱਲ ਜਾਂਦਾ دان کے دوئیہ ماں ماں کے بڑھیا ابسان یہ دان کا دوئیہوں مندا رہے پھر ماں ماں بہت جلدا پھر درگاہ مان بھدا ہاں ابسان کے دوئیہ ہیں ابسان کے دوئیہ ابسان مارے ਜਾਂਦੇ ਨੇ جے کوئی مصیبت اਉਂਦੇ ਆسان مارے ਜਾਂਦੇ ابسان مارے گئے ਸੀ ਜਿਹੜੇ ਕਹਿੰਦੇ ਅਨੰਤ ਸਾਬ ਦਾ ਕਿਲਾ ਛੱਡ ਦੋ ਨਾਲ ਦੇ ਆਂਦੇ ਨਹੀਂ ਛੱਡਣਾ ਗੱਲ ਅਸਾਨੇ ਨਾ ਮਾਰ ਹੋਏ ਅਧਾਨ ਮਾਰੇ ਜਾਂਦੇ ਨੇ ਮਸੀਤਾਂ ਦੇ ਬੜੇ ਬੜਿਆਂ ਦੇ ਇਹਦਾ ਅਸਾਨ ਨਾ ਬਾਰੇ ਜਾਂਣ ਮੌਤ ਨਾਲ ਲੜ ਸਕਦੇ ਜਦੋਂ ਅਸਾਨ ਮਾਰੇ ਗਏ ਉਦੋਂ ਹੀ ਮੌਤ ਨਾ ਢਾਲਿਆ ਉਹਨੂੰ ਜੇ ਇਹ ਅਸਾਨ ਨਹੀਂ ਮਾਰੇ ਜਾਂਦੇ ਉਹਦੇ ਤੇ ਕਾਲ ਫਤਿਹ ਨਹੀਂ ਕਰ ਸਕਦਾ ਸ੍ਰੀ ਛੜਰਾ ਵੀ ਪੈ ਜਾਵੇ ਅਸਾਨਾਂ ਦੇ ਵਿੱਚ ਸ੍ਰੀ ਛੜਦੇ ਕਾਲ ਜਿੱਤਿਆ ਗਿਆ ਵਾਹ ਹੋ ਜਸਰੀਰ ਛਟਣਾ ਜਿਹੜਾ ਹੈ ਨਾ ਇਹ ਕਾਲ ਜਿੱਤੇ ਫਤਿਹ ਹੁੰਦੀ ਹੈ ਸਿਰ ਸਾਰਿਆਂ ਨੂੰ ਛੱਡਿਆ ਆਨੰਦ ਕਨੇ ਵੀ ਛੱਡਿਆ ਨਵੇਂ ਪਾਸ ਸਾਰਿਆਂ ਨੂੰ ਛੱਡਿਆ ਨਾ ਬਸ ਆਸਾਨ ਦੇ ਵਿੱਚ ਸਿਰ ਛਟਣਾ ਆਸਾਨ ਤਾ ਮਾਰੇ ਜਾਣ ਇਹ ਮਰਨ ਦੀ ਅਮਰ ਹੋਣ ਦੀ ਨਿਸ਼ਾਨੀ ਹੈ ਤੇ ਵਿੱਚ ਅਮਰ ਅਮਰਾ ਪਦ ਮਰਨਾ ਇਹਦੇ ਚ ਛੁਪਿਆ ਹੈ ਹੋਸ਼ਮਾਰੀ ਜਾਣੀ ਆਸਾਨ ਹਾਂ ਆਸਾਨ ਕਹਿੰਦੇ ਨਹੀਂ ਆਸਾਨ ਹੋਸ਼ ਬਾਹੋਸ਼ ਕਰਨ ਵਾਲਾ ਬਦ ਹੋਸ਼ ਤੋਂ ਬਾਹੋਸ਼ ਕਰਨ ਵਾਲਾ ਆਸਾਨ ਕੇ ਦਵਈਆ ਹਾਂ ਬਦ ਹੋਸ਼ ਹੋਏ ਨੇ ਸਾਰੇ ਦੇ ਲੋਕ ਪਤਾ ਹੀ ਨਹੀਂ ਆਪ ਨੂੰ ਕਹਿੰਦਾ ਬਗਾਲੀ ਚੀਜ਼ ਹੈ ਜੇ ਸਭ ਕੁਝ ਇੱਕ ਪਾਸੇ ਤੋਂ ਕਹੇ ਰੇ ਜੀਵਨ ਪੜਨ ਸਭ ਤੇਰਾ ਦੂਜੇ ਪਾਸੇ ਕਹੇ ਬੰਦਾ ਤਾਂ ਰੋਸਾਨ ਬੇਸਾਨੇ ਨਾ ਇਹ ਵੀ ਪੜ ਕੇ ਆਇਆ ਜੀਓ ਪਿੰਡ ਸਭ ਤੇਰਾ ਕੋਨਾ ਸਭ ਤੇਰੀ ਵਿੜਾਈ ਕੋਈ ਨਾ ਨਾ ਡਾਲੇ ਮੇਰਾ ਤੇ ਦੂਰ ਪਾਸੇ ਮੈਂ ਦਾਰਵੀ ਕਰ ਰਿਆਂ ਰੋਸਾਨ ਰੋਸਾਨ ਕਰਥੇ ਜਿੱਦਾਂ ਰੋਸਾਨ ਆ ਗਏ ਉਦੋਂ ਉਹ ਗੱਲ ਯਾਰ ਉਹ ਕਪੂਟਰ ਉਹ ਲਿਖੀ ਜਾਣੀ ਹੈ ਹਰ ਗੱਲ ਉੱਥੇ ਹੀ ਸਵਾਲ ਨਹੀਂ ਪੈਦਾ ਹੁੰਦਾ ਕਿ ਜੀ ਨੂੰ ਆਪਣੀ ਮਨ ਨੂੰ ਫੇਕਦੇ ਆਪਣੇ ਮਨ ਨੂੰ ਰਖਵਾਲ ਨਾ ਇਹ ਜਮਾਲ ਕਰਦੀ ਹੈ ਇਹ ਥੋੜੀ ਅਵੇ ਰੇ ਜਾ ਕੇ ਲੈ ਜੂ ਫੱਦੀ ਦੋਰੇ ਬੈਂਕ ਵਾਲੇ ਵਰਦੀ ਹੁਣ ਇਹ ਰੇਕ ਨੂੰ ਥੋੜੀ ਵੀ ਚਲਤੇ ਨਹੀਂ ਆ ਲੈ ਮੈਂ ਲੈ ਜਾਂ ਚੱਕ ਤੂੰ ਆਣਾ ਤਾਂ ਨਾ ਦੇਣਾ ਨਾ ਕਟਈਆ ਜਾਲ ਹੈ ਕਟਈਆ ਜੰਮ ਜਾਲ ਹੈ ਆਹ ਜੰਮ ਦਾ ਨਾੜਾ ਗਿਆ ਨਾ ਔਰ ਸਾ ਜੇ ਨਹੀਂ ਮਾਰ ਹੁੰਦੇ ਤਾਂ ਜੰਮ ਜਾਲ ਨਹੀਂ ਫਸਾ ਸਕਦਾ ਜੰਗਲਾ ਜਾਲ बेहोश ਬਸ ਉਸ ਬਸੋਂ ਦਾ ਜਦ ਸੁਰ ਕੈਨੇਡਾ ਡਰ ਗਿਆ ਸੋ ਮਰ ਗਿਆ ਬਸ ਜੇ ਡਰ ਪਹਿ ਨਹੀਂ ਆਈ ਤਾਂ ਮਰਿਆ ਨਹੀਂ ਹੈ ਪੈ ਆ ਗਈ ਪਰਮ ਪਰਮ ਜਾਲ ਸਸ ਗਿਆ ਜਾਲ ਕਾ ਜਾਲ ਪਰਮ ਦਾ ਹੀ ਹੈ ਪਤਈਆ ਜੰਗਲਾ ਹੈ ਕਟਈਆ ਜੰਗਲਾ ਕੇ ਜਤਈਆ ਜੁਦ ਹੁਣ ਜੁਦ ਆਪ ਨਹੀਂ ਜਿੱਤ ਸਕਦੇ ਕਹਿੰਦੇ ਬệਜੀਤ ਮੇਰੀ ਕਲ ਕਰਪਾਖਾਲ ਕਰੀ ਜੋ ਤੱਕ ਜਤਈਆ ਉਹ ਵਿਰੋਧ ਕੇ ਮਟਈਆ ਉਹ ਵਿਰੋਧ ਕੇ ਮਟਈਆ ਜਿਹੜਾ ਵਿਰੋਧ ਦਾ ਪਾਸਾ ਅੰਦਰੋਂ ਅੰਦਰੋਂ ਵਿਰੋਧ ਕੇ ਦਵਾਈਆ ਮਹਾਬੁੱਧ ਕੇ ਹੁੰਦੀ ਹੈ ਵਵੇਖ ਬੁੱਧੀ ਇੱਕ ਬੁੱਧ ਹੁੰਦੀ ਹੈ ਕਿ ਮਹਾਬੁੱਧ ਹੁੰਦੀ ਹੈ ਸੰਸਾਰ ਤੋਂ ਉੱਪਰ ਦੀ ਬੁੱਧ ਬੁੱਧ ਦਾ ਸੰਸਾਰ ਵਿੱਚ ਹੀ ਹੈ ਮਹਾਮੰਤ ਕਹੇ ਦਬਈਆ ਮਹਾਮਾਨੂ ਕੇ ਮਾਨ ਹੈ ਵਾਹਵਾਨੂ ਕੇ ਮਾਨ ਹੈ ਜਿਹੜਾ ਮਹਾਮਾਨ ਹੈ ਨਾ ਇਸ ਸੰਸਾਰ ਦੇ ਵਿੱਚ ਉਹਦਾ ਵੀ ਮਾਨ ਲੋ ਤੂੰ ਤੇ ਗਿਆਨ ਹੂ ਕੇ ਗਿਆਤਾ ਗਿਆਨ ਹੂ ਕੇ ਕੇ ਦਾਤਾ ਵਾਹਬੁੱਧਤਾ ਕੇ ਦਾ ਤਾਂ ਬਣਾਈਆ ਤੈਨੂੰ ਜਿਹਨੇ ਬਣਾਇਆ ਸਭ ਕੁਝ ਉਹਨੂੰ ਕਿਹੜਾ ਗਿਆਨ ਦਾ ਨਹੀਂ ਪਤਾ ਸੰਸਾਰ ਦੇ ਦਾ ਸਾਰਾ ਬਣਾਇਆ ਮਹਾਬੁੱਧ ਦਾ ਕੇ ਦਾਤਾ ਵਾਹ ਮਹਾਬੁੱਧ ਦਾ ਕੇ ਦਾਤਾ ਵਾਹ ਬੁੱਧ ਤਾਂ ਫਿਰ ਉਹ ਵੇਖ ਬੁੱਧੀ ਆ ਗਈ ਮਹਾਬੁੱਧ ਦਾ ਕੇ ਦਾਤਾ ਦੇਵ ਵਾਹ ਬੁੱਧ ਦਾ ਕੇ ਦਾਤਾ ਦੇਵ ਕਾਲ ਹੋਂ ਕੇ ਕਾਲ ਕਾਲ ਹੋਂ ਕੇ ਕਾਲ ਮਹਾ ਕਾਲ ਹੋ ਕੇ ਕਾਲ ਹੈ ਕਾਲ ਹੋਂ ਕੇ ਕਾਲ ਕਾਲ ਹੋਂ ਕੇ ਕਾਲ ਹੈ ਹਾਂ ਕਾਲ ਹਾ ਜੀਬ ਜੀਬ ਨੂੰ ਮਾਰਦਾ ਕਾਲ ਹੈ ਜੀਬ ਜੀਬਾ ਦਾ ਕਾਲ ਪਰ ਇਹਦਾ ਕਾਲ ਕੀ ਹੈ ਵਾਹ ਕਾਲ ਕੀ ਹੈ ਜਵੇਂ ਇੱਕ ਫੌਜ ਲੜਦੀ ਹੈ ਚਲੋ ਖੜੀ ਹੈ ਫੌਜ ਬਾਰਡਰ ਤੇ ਰਾਜਨ ਆਰਡਰ ਦੇ ਤਾਂ ਫਾਇਰ ਕਰ ਦੋ ਪਿੱਛੋਂ ਅਫਸਰ ਨੂੰ ਆਰਡਰ ਦਿੱਤਾ ਹਕੂਮਤ ਦੇ ਅਫਸਰ ਨੇ ਫਾਇਰ ਕਰਾ ਦਿੱਤਾ ਥੱਲੇ ਦੇਖਣ ਨੂੰ ਤਾਂ ਸਪਾਈ ਦੀ ਗੋਲੀ ਨਾ ਗਾਲ ਸਪਾਈ ਮਰ ਗਿਆ ਕਾਲ ਬਣਦੇ ਨਾ ਸਪਾਈ ਉਹਦਾ ਪਰ ਪਿੱਛੇ ਕੌਣ ਮਹਾਕਾਲ ਪਿੱਛੇ ਮਹਾਕਾਲ ਗੋਲ ਉਹਦਾ ਯਾਰਾਂ ਗੋਲੀਆਂ ਚਲਦੀਆਂ ਨਾ ਉਹਦੇ ਆਰਡਰਨ ਇਹ ਤਾਂ ਵਿਚਾਰੇ ਕੇ ਜਲਾ ਰਹੇ ਹਨ ਉਹਦਾ ਹਜ਼ਾਰਾਂ ਜਨ ਲਈ ਹੈ ਇਕਠੀਆਂ ਉਹਦੇ ਹੁਕਮ ਨਾਲ ਇਕਠੀਆਂ ਜਲ ਪਈਆਂ ਸਾਰੀਆਂ ਜ਼ੀ ਬਲੋ ਪਿਛੇ ਵਾਲਾ ਮਜ਼ਾ ਕਾਲ ਹੈ ਵਾਹ ਕਾਲ ਹੁਕੇ ਕਾਲੋ ਉਹਦਾ ਵੀ ਕਾਲ ਹੈ ਵਾਹ ਕਾਲ ਜਿਹੜਾ ਆਪਣੇ ਆਪ ਨੂੰ ਸੁਨੇਹ ਰਿਹਾ ਉਹਦਾ ਵੀ ਕਾਲ ਹੈ ਉਹਦੇ ਨੇਗਾ ਹੰਤੂ ਤੈਨੂੰ ਪ੍ਰੇਰਿਆ ਵੇ ਚਲਵਾ ਦੇ ਉਹਦੇ ਉੱਤੇ ਚਾਬੀ ਤੈਂ ਫੇਰੀ ਹੈ ਤਾਂ ਵਾਹ ਕਾਲ ਹੁਕੇ ਕਾਲ ਹੈ ਉਹਨੇ ਫੌਜ ਨੂੰ ਕਿਹਾ ਹੁਕਮ ਦਿੱਤਾ ਹੈ ਹਰੂਗੇ ਹੁਕਮ ਦੋਏ ਉਹਨੇ ਉੱਤੇ ਸੱਗਰ ਬੈਠਾ ਤੂੰ ਪਿੱਛੇ ਕਿਉਂ ਪਰਵਾਉਣੇ ਨੇ ਸਾਰੇ ਸਾਰਿਆਂ ਦਾ ਟਾਈਮ ਆ ਗਿਆ ਸੀ ਰੋਲ ਪੂਰੀ ਹੋ ਗਈ ਸੀ ਉਹਨੇ ਲੈ ਆਪਣਾ ਛਕ ਲਿਆ ਸੀ ਦਰੋਂ ਪਾਣੀ ਤਾ ਪੂਰਬੀ ਨਾ ਪਾਰ ਪਾਵਾ ਹਿੰਗੁਲਾ ਹਿਮਾਲੇ ਤੇ ਆਵੇਂ ਪੂਰਬੀ ਨਾ ਪਾਰ ਪਾਵੇ ਬੁਰਵਦੇਸੇ ਰਹਿਣ ਵਾਲੇ ਤੇਰਾ ਪਾਰ ਨਹੀਂ ਤੇਰਾ ਪਾਰ ਪਾਇਆ ਉਹਨੇ ਪੂਰਬ ਦੇ ਰਹਿਣ ਵਾਲਿਆਂ ਨੇ ਪਾਰ ਪਾਉਣ ਦੀ ਕੋਸ਼ਿਸ਼ ਕੀਤੀ ਨਹੀਂ ਪਾਇਆ ਨੇ ਇਤਲਾ ਵਾਲੇ ਅਸਾਂ ਨੇ ਉਹ ਵੀ ਧਿਆਨ ਧਿਆਉਂਦੇ ਤੇ ਤੈਨੂੰ ਤੇ ਧਿਆਉਂਦੇ ਗੋਰ ਗੁਰਦੇਜੀ ਕਉਣ گاਵੇਂ ਤੇਰੇ ਨਾਮ ਹੈ ਜਿਹੜੇ ਗੋਰਖਾ ਨੇ ਉਹ ਵੀ ਤੇਰੇ ਨਾਮ ਦੇ ਕੋਲ ਕੋਲ ਦੇ ਸਾਰੇ ਗਾਉਂਦੇ ਨੇ ਗੋਰ ਗੁਰਦੇਜੀ ਕਉਣ گاਵੇਂ ਤੇਰੇ ਨਾਮ ਹੈ ਤੇਰੇ ਨਾਮ ਨਾਲ ਜੁੜ ਕੇ ਗੁਣ ਗੋਦ ਦੇ ਤੇਰੇ ਤੇਰੇ ਨੌਲੇ ਤੇਰੇ ਹੋ ਜਿਵੇਂ ਨੋਰ ਖੇਦੇ ਜਿਵੇਂ ਵਿਚਾਰੇ ਉਹ ਮੈਂ ਕਹੀ ਜਾਂਦੇ ਜੋਗੀ ਜੋਗ ਸਾਧਾ ਹੈ ਜੋਗੀ ਨੇ ਜੋਗ ਸਾਧਣ ਲੱਗੇ ਹੋਏ ਨੇ ਪੌਣ ਸਾਧਨਾਂ ਕਿਤੇ ਇੱਕ ਵੱਧ ਹੈ ਕਈ ਦੇ ਲੱਗੇ ਹੋਏ ਨੇ ਪੌਣ ਸਾਧਣ ਲੱਗੇ ਨੇ ਉਹ ਜਿਹੜੇ ਸਾਹ ਖਿੱਚਦੇ ਨੇ ਫਿਰ ਸਾਹ ਨੂੰ ਰੋਕਦੇ ਨੇ ਪੁਰਾਣੇ ਕਰਦੇ ਨੇ ਮਤਲਬ ਆ ਫਿਰ ਫਿਰ ਹੌਲੀ ਹੌਲੀ ਛੱਡਦੇ ਨੇ ਉਹ ਸਾਧਨਾ ਚ ਏਜ ਲੱਗੇ ਹੋਏ ਨੇ ਉਹ ਵੀ ਜੋਗੀਆਂ ਦੇ ਵਿੱਚੋਂ ਨੇ ਅਰਬ ਕੇ ਅਰਾਧੇ ਤੇਰੇ ਨਾਮ ਹੈ ਤੇ ਵੀ ਨਾਮ ਹੈ ਉਹ ਦੇਖੋ ਵਾਸਤੇ ਅਰਾਧਾ ਅਰਾਧਨਾ ਨਹੀਂ ਜਪਣਾ ਨਹੀਂ ਹੈ ਉੱਤੇ ਅਰਾਧਨਾ ਨਾਮ ਹਾਂ ਅਰਾਧਨਾ ਹੋਰ ਕੀ ਰਾਦਰਾਂ ਕੋ ਗੈਬਾ ਸ਼ਕਤੀ ਗੈਬੀ ਸ਼ਕਤੀ ਹੈ ਉਹਦੇ ਨਾਲ ਜੁੜ ਕੇ ਕਹਿੰਦੇ ਨੇ ਵੀ ਤੂੰ ਕਿਰਪਾ ਕਰ ਬੇਰ ਕਰ ਇਹ ਆਦਰ ਜਪੜਾ ਹੁੰਦਾ ਕੋਈ ਸਾਡੇ ਕੋਲ ਚੀਜ਼ ਹੈਗੀ ਹੈ ਲਿਖਤ ਹੈਗੀ ਹੈ ਉਹਨੂੰ ਸਮਝਣਾ ਉਹ ਜਪੜ ਉਹਨਾਂ ਕੋਈ ਚੀਜ਼ ਤਾਂ ਹੈ ਨਹੀਂ ਕੋਈ ਸਮਝਣ ਵਾਲੀ ਕਿਉਂ ਤਾਂ ਕੋਈ ਹੈ ਨਹੀਂ ਉਹਨੂੰ ਸਮਝ ਜਪਣ ਵਾਲਾ ਉਹ ਕੋਈ ਕੁਝ ਨਹੀਂ ਹੈ ਗੈਬੀ ਸ਼ਕਤੀ ਦਾ ਗਿਆਨ ਜਪਣ ਵਾਸਤੇ ਉਹਨਾਂ ਕੋਈ ਹੈ ਨਹੀਂ ਸਾਧਨ ਗੱਭੀ ਸ਼ਕਤੀ ਬਾਰੇ ਦੱਸਿਆ ਹੋਇਆ ਹੈ ਉਹਨਾਂ ਨੂੰ ਉਹਦੀ ਅਰਾਧਨਾ ਨਹੀਂ ਕਰਦੇ ਜੀ ਅਰਾਧਨਾ ਹਰਾਧਾ ਦੀ ਕਾ ਹਰ ਹਰ ਨਾਮ ਜਪਣਾ ਉਹ ਵਾਲਾ ਜਪਣਾ ਗਿਆਨ ਦਾ ਹੁੰਦਾ ਅਸਲ ਚ ਐਸਾ ਗਿਆਨ ਜਪੋ ਮਨ ਮੇਰੇ ਜਪਣਾ ਗਿਆਨ ਦਾ ਹੀ ਹੁੰਦਾ ਹੈ ਫਰਾ ਕੇ ਫਰੰਗੀ ਮਾਨਾ ਕੰਧਾਰੀ ਕੋਰੇਸੀ ਜਾਨਾ ਫਰਾ ਕੇ ਫਰੰਗੀ ਮਾਨਾ ਫਰਾ ਦੇ ਫਰੰਗੀ ਵੀ ਮੰਨਦੇ ਨੇ ਆ ਜਿਹੜੇ ਜਿਹੜੇ ਉਹ ਤੈਨੂੰ ਮੰਨਦੇ ਨੇ ਕੰਧਾਰੀ ਕੁਰੇਸੀ ਜਨ ਕੁਰੇਸ਼ੀ ਦੇ ਅਧਾਰ ਦੇਣ ਵਾਲੇ ਨੇ ਕੁਰੇਸ਼ੀ ਕੋ ਜਾਤ ਹੈ ਰ ਮੁਸਲਮਾਨਾਂ ਚ ਉਹ ਸਾਰੇ ਜਾਂ ਉਹ ਮੰਨਦੇ ਪੱਛਮ ਦੇ ਰਹਿਣ ਵਾਲੇ ਪੱਛਮੀ ਦੇ ਉਹ ਵੀ ਪਛਾਣਦੇ ਨੇ ਪਛਾਣਨੇ ਹੈ ਉਹ ਆਪਣਾ ਕੰਮ ਦੇ ਵਿੱਚ ਹੀ ਪਛਾਣਦੇ ਨੇ ਜਿਹੜਾ ਕੰਮ ਕਰਦੇ ਨੇ ਉਹ ਕਹਿੰਦੇ ਇਮਾਨਦਾਰੀ ਨਾਲ ਕਰੋ ਬਸ ਇਹ ਕੁਝ ਹੈ ਕੰਮ ਠੀਕ ਕਰੋ ਕਰੈਕਟਰ ਠੀਕ ਚਾਹੀਦਾ ਆਦਮੀ ਦਾ ਪੱਛਮੀ ਨੇ ਜਕਾਮ ਹਨ ਪੱਛਮ ਦੇ ਲੋਕ ਜਿਹੜਾ ਹੈ ਨਾ ਕਰਮ ਕਰਮ ਸਾਡਾ ਠੀਕ ਚਾਹੀਦਾ ਪ੍ਰੈਕਟੀਕਲ ਲੋਕਾਂ ਨਾਲ ਠੀਕ ਵਰਤੋ ਇਹਦੇ ਵਿੱਚ ਸਭ ਕੁਝ ਹੈ ਇਹ ਪੱਛਮ ਦੇ ਕੌਣ ਨੇ ਆਪਣੇ ਅੰਗਰੇਜ਼ ਨੇ ਜਿਹੜੇ ਇਹ ਕਹਿੰਦੇ ਨੇ ਪ੍ਰੈਕਟੀਕਲੀ ਲੋਕਾਂ ਨਾਲ ਤੁਸੀਂ ਚੰਗਾ ਵਰਤੋ ਇਹੀ ਪਰਮੇਸ਼ਰ ਦੀ ਸਿਵ ਲੋਕਾਂ ਦਾ ਭਲਾ ਕਰਨਾ ਲੋਕਾਂ ਦਾ ਭਲਾ ਸੋਚਣਾ ਲਿਜ ਕਾਂ ਵਿਚੋ ਵਿਚ ਇਹ ਚ ਬਸ ਉਹ ਐਸੇ ਪ੍ਰੈਕਟੀਕਲ ਨੇ ਉਹ ਪ੍ਰੈਕਟੀਕਲ ਨੂੰ ਮੰਨਦੇ ਨੇ ਬਾਕੀ ਉਹ ਕਹਿੰਦੇ ਬਾਕੀ ਠੀਕ ਹੈ ਸੇਵਾ ਕਰੋ ਸਾਰਿਆਂ ਦੀ ਪ੍ਰੇਮ ਕਰੋ ਜੇਨ ਪ੍ਰੇਮ ਕੀਓ ਤੇ ਉਹ ਇਹਦੇ ਵਿੱਚ